केआरपी 1550 एएम ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜਬਾਨ ਹਰਜੀਤ ਸਿੰਘ ਗਿੱਲ 11:07 ਮਿੰਟ ਹੋਏ ਨੇ 7 ਫਰਵਰੀ ਦਾ ਦਿਨ ਹੈ ਬਰਾ 2017 ਦਾ ਮੰਗਲਵਾਰ ਹੈ 25 ਮਾਗ ਨਾਨਕਸ਼ਹਿ ਸਮਤ 548 ਨਿਗਾ ਹਾਰਦਿਕ ਸਵਾਗਤ ਹੈ ਸਰੀ ਕਾਦੀ ਹੈ ਕੋ ਕਾਫੇ ਬਣੀ ਪਈ ਹੈ ਅੱਜ ਤਾਂ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਕਿਸਾਨਾਂਾਂ ਗੱਲਾਂ ਬਾਤਾਂ ਜੀ ਸੰਗੀਤ ਸੋਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਦੁਨੀਆ ਦੀਆਂ ਖਬਰਾਂ ਸੁਣਾਉ ਤੇ ਖੁੱਲੇ ਵਿਚਾਰ ਚਰਚਾ ਦੇ ਵਿੱਚ ਤੁਸੀਂ ਸ਼ਾਮਲ ਹੋਣਾ 1843 247 1550 1 ਤੋਂ 2 ਵਜੇ ਤੱਕ ਖਾਸ ਗੱਲਬਾਤ ਕਰਨੀ ਹੈ ਸੌਖੀ ਹੋਣੀ ਹੈ ਪਰ ਸੌਖੀ ਕਰ ਲੈਣੀ ਆਪਾਂ ਨਾਲ ਰਲ ਕੇ ਰਹੋ ਅਕਸਰ ਆਪਾਂ ਵੀਕੈਂਡ ਤੇ ਸੰਸਕਾਰਾਂ ਤੇ ਜਾਂਦੇ ਆ ਤੇ ਬਹੁਤ ਅਲੱਗ ਮਾਹੌਲ ਹੁੰਦਾ ਹੈ ਉੱਥੇ ਉਸੇ ਸੰਦਰਭ ਦੇ ਵਿੱਚ ਗੱਲ ਕਰਨੀ ਹੈ ਕਿ ਮੌਤ ਹੈ ਜਿਹੜੀ ਉਹ ਕੀ ਮੌਤ ਨੂੰ ਕਿਵੇਂ ਲਿਆ ਜਾ ਸਕਦਾ ਜਦ ਕੋਈ ਵਿਛੜਦਾ ਕੋਈ ਉਸ ਸਮੇਂ ਮਨ ਕਿਵੇਂ ਸਮਝਾਇਆ ਜਾ ਸਕਦਾ ਕਹਿਣੀਆਂ ਕਰਨੀਆਂ ਗੱਲਾਂ ਸੌਖੀਆਂ ਕਰਨੀਆਂ ਔਖੀਆਂ ਇੱਕ ਤਾਂ 2 ਵਜੇ ਤੱਕ ਇਸ ਵਿਸ਼ੇ ਤੇ ਮੈਂ ਗੱਲਬਾਤ ਕਰਨੀ ਹੈ ਤੁਹਾਨੂੰ ਤੁਹਾਡੇ ਨਾਲ ਤੇ ਤੁਸੀਂ ਵੀ ਸ਼ਾਮਲ ਹੋਣਾ ਖੁੱਲਕੇ ਇਹ ਗੱਲ ਬਹੁਤ ਕਈਆਂ ਦੇ ਮਨ ਦੇ ਵਿੱਚ ਬਹੁਤ ਦਰਦ ਦਿੰਦੀ ਹੈ ਤੇ ਇਸ ਨੂੰ ਲਈ ਬੈਠਾ ਵੀ ਫਿਕਰੇ ਕੋਈ ਨਹੀਂ ਜਾਣਾ ਤਾਂ ਜਾਣਾ ਹੀ ਹੈ ਪਰ ਇੱਥੇ ਰੰਗਲੀ ਫਲਵਾੜੀ ਦੇਖ ਕੇ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ ਬੋਲੀਆਂ ਚ ਬੰਦਾ ਕਹਿੰਦਾ ਸਵਾਦ ਨੇ ਲੋਕਾਂ ਨੂੰ ਪਏ ਹੋਏ ਆਨੰਦ ਹੈ ਅਗਲਾ ਕਹਿੰਦਾ ਆਨੰਦ ਲਾਓ ਮੰਗਲਾ ਚਾਰ ਕਰੋ ਤੇ ਇਸ ਦੀ ਗੱਲਬਾਤ ਤੇ ਇੱਕ ਤੋਂ 2 ਵਜੇ ਤੱਕ 12 ਤੋਂ 1 ਵਜੇ ਤੱਕ ਇੱਕ ਹੋਰ ਖੁੱਲੀ ਵਿਚਾਰ ਚਰਚਾ ਇਹਨਾਂ ਚੀਜ਼ਾਂ ਦਾ ਖਿਆਲ ਹੁਣ ਤੁਸੀਂ ਕਾਇਮ ਹੋ ਜੋ ਇਹ ਬਰਫ਼ ਹਰ ਸਾਲ ਹੀ ਪਿਆ ਕਰਨੀ ਆ ਹੁਣ ਮੀਟਰ ਮੀਟਰ ਚੜ ਗਈ ਚਿਲਵੈਕ ਦੇ ਵਿੱਚ ਕੱਲ ਔਣਾ ਮੀਟਰ ਦੇ ਨੇੜੇ ਐਬਸਫੋਰਡ ਜਾ ਵੜਿਆ 75 ਸੈਂਟੀਮੀਟਰ ਬਹੁਤ ਹੁੰਦਾ ਲੱਕ ਤੋਂ ਥੱਲੇ ਮਤਲਬ ਪੱਟ ਪੱਟ ਤੱਕ ਜੇ برف ਪੈ ਗਈ ਗੱਡੀਆਂ ਵੀ ਕਿਹੜੀਆਂ ਤੇ ਚਲਾਉਣ ਦਾ ਕਿਵੇਂ ਕੱਲ ਬਹੁਤ ਔਖਾ ਜਿਹੜੀਆਂ ਸੜਕਾਂ ਉੱਥੇ ਲੋਕ ਬਹੁਤ ਬੰਦਾ ਟਿੰਗੜੀ ਟਾਇਰ ਜਿਹੜੇ ਨੇ ਘੁੰਮੀ ਜਾਂਦੇ ਤੇ ਉਹ ਰੇਸ ਤੇ ਰੇਸ ਚੜੀ ਜਾਂਦਾ ਪਤਾ ਨਹੀਂ ਉਹ ਯਾਰ ਗਾਣਾ ਨੂੰ ਨਹੀਂ ਹੁੰਦੀ ਇਹ ਉਹ ਥੱਲੇ ਮੋਸਟਲੀ ਮੁਸ਼ਕਲ ਕੀ ਹੈ ਗਰਮੀ ਵਾਲੇ ਟਾਇਰ ਪਾਈ ਫਿਰਦੇ ਆ ਕਈ ਤਾਂ 184200471550 ਨਾਲ ਹੀ ਰਿਫਿਊਜੀਆ ਦੀ ਗੱਲ ਬਿਨੀ ਪੈਗ ਦੇ ਉੱਪਰਲੇ ਬੰਨੇ 100 ਕਿਲੋਮੀਟਰ ਇੱਕ ਬਾਰਡਰ ਹੈ ਐਮਰ ਸੰਦਾ ਉੱਥੋਂ ਲੋਕ ਟੱਪਣ ਲੱਗ ਗਏ ਕਈਆਂ ਦੀਆਂ ਉਂਗਲੀਆਂ ਗਲ ਜਾਂਦੀਆਂ ਨੇ -30 ਦੇ ਵਿੱਚ ਲੱਖ ਲੱਖ ਸਨੋਹ ਦੇ ਵਿੱਚ ਦੀ ਤੁਰੇ ਆਉਂਦੇ ਆ ਕੁਝ ਅਫਰੀਕਨ ਬੰਦੇ ਉਧਰੋਂ ਬੜੇ ਆ ਛੋਟੀ ਜੀ ਕਮਿਊਨਿਟੀ ਦੇ ਵਿੱਚ ਲੋਕ ਚਾਹ ਪਾਣੀ ਫੜਾਉਂਦੇ ਆ ਉਹਨੂੰ ਗਾਹਾਂ ਫੇਸੀਪੀਐਸਏ ਵਾਲੇ ਲੈ ਜਾਂਦੇ ਆ ਤੇ ਇਸ ਦੀ ਗੱਲਬਾਤ ਹੋਏਗੀ ਕੈਲਗਦੀ ਦਾ ਮੇਅਰ ਐਡਮਿੰਟਨ ਦੇ ਮੇਅਰ ਦਾ ਆੜੀ ਪੂਰਾ ਦੋਨੇ ਰਲ ਕੇ ਸੀਰੀਆਂ ਰੈਫਿਊਜੀ ਹੋਰ ਲੈਉਣ ਦੀਆਂ ਗੱਲਾਂ ਕਰ ਰਹੇ ਨੇ ਪਹਿਲਾਂ ਹੀ ਆਦਮ ਬੋ ਆਦਮ ਬੋ ਹੋਈ ਪਈ ਐ ਉੱਥੇ ਹਾਲ ਪਹਿਲਾਂ ਹੀ ਮਾੜੇ ਐ ਪਰ ਵੱਡੀ ਲੋਕਾਂ ਦੀ ਪਸੰਦ ਵੈਨਕੂਵਰ ਐ ਤੇ ਟ੍ਰਾਂਟੋ ਐ 1-844-247-1550 ਉਹ ਨੇ ਨੰਬਰ ਐ 18442471550 airpyaudio.com ਤੇ ਸਿੱਧਾ ਪ੍ਰਸਾਦ ਸੁਣਦੇ ਹੋ ਤੇ ਨਾਲ ਹੀ ਐਪ ਡਾਊਨਲੋਡ ਕਰ ਤੇ ਪ੍ਰੋਗਰਾਮ ਸਾਰਾ ਜਿਹੜਾ ਹੈ ਤੇ ਬਿਲਕੁਲ ਐਡਿਟ ਕਰਕੇ ਡੇਢ ਘੰਟੇ ਚ ਨਿਵੇਰ ਪਰ ਗੀਤ ਵੀ ਕੱਢ ਦਿੰਦੇ ਆ ਵਿੱਚੋਂ ਯਾਰ ਗੀਤ ਨਾ ਕੱਢਿਆ ਕਰੋ ਗੀਤ ਬਹੁਤ ਔਖੇ ਮੈਂ ਲੱਭ ਕੇ ਲਿਓ ਨਾ ਸਾਰਿਆਂ ਦੇ ਬਰਾਬਰ ਦੇ ਹੋਣ ਗੀਤ ਸੁਣਾ ਦਿਆ ਕਰੋ ਐਨਾ ਨਾ ਰੰਦਾ ਫੇਰੋ ਬਾਲਾ ਬੰਦਾ ਫੇਰਦੇ ਹੋਂ ਕਦੇ ਕਦੇ ਚਲੋ ਤੇ ਫਿਰ ਵੀ ਫੇਰ ਵੀ ਧੰਨਵਾਦ ਹੈ ਤੁਹਾਡਾ ਤੁਸੀਂ ਇਸ ਨੂੰ ਕਰਦੇ ਹੋ 18432471550 ਨੇ ਨੰਬਰ ਹੈ ਤੇ ਨਾਲ ਨਿਮੀ ਡੌੜਾ ਜੀ ਨਾਲ ਗੱਲਬਾਤ ਕਰਿਓ 604440642 info@krpioradiio.com ਉਹਨਾਂ ਦੀ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਡੇ ਸੁਖ ਸੁਨੇਹ ਆਉਂਦੇ ਆ ਜਿੱਥੇ ਗੱਲਬਾਤ ਕਰਕੇ ਮਨ ਸਰਜੰਦਾ ਬਈ ਜੱਗੀ ਕੁਸੇ ਨੇ ਸੰਦੇਹਾਂ ਹੀ ਭੇਜਿਆ ਸਨੇਹਾ ਕਹਿੰਦਾ ਦੇਖਿਓ ਤਿਲਕੇਨਗਰ ਜੋ ਕਹਿੰਦੇ ਬਰਫ ਬਹੁਤ ਪੈ ਗਈ ਤਿਲਕਣ ਵਾਲੀ ਕਹਾਣੀ ਨਹੀਂ ਇੱਥੇ ਤਾਂ ਆਦਤਾਂ ਪੈ ਜਾਣੀਆਂ ਹੌਲੀ ਹੌਲੀ ਸਿੱਖ ਲੋ ਕੇ ਤੇ ਆ ਕਰਿਆ ਨਾਲੋਂ ਚੰਗਾ ਯਾਰ ਇਹ ਪੈ ਜਾਇਆ ਕਰੇ ਕੋਈ ਪ੍ਰੋਬਲਮ ਨਹੀਂ ਮੈਂ ਕੱਲ 58 ਤੇ 173 ਤੇ ਕੱਲ ਨਹੀਂ ਫਰਾਈਡੇ ਨੂੰ ਬਾਈ ਸ਼ੀਨੇ ਨੇ ਮੈਸੇਜ ਭੇਜਿਆ ਕਹਿੰਦਾ 58 ਤੇ 173 ਤੇ ਹੁਣ ਬਾਈ ਜੀ ਬਰਫ ਪੈਣ ਚ ਮੁੰਡੇ ਹੁਣ ਫਰੇਮਰ ਹੋਰ ਪਾਈਪ ਇਕੱਠੇ ਕਰਨ ਲੱਗੇ ਹੋਏ ਨੇ ਕੰਪਰੈਸਰ ਦਾ। ਉਹ ਮੈਂ ਕਿਹਾ ਇਹੀ ਦਿਨੇ ਰੌਣਾ ਪਾਉਂਦਾ ਸੀ ਮੈਂ ਕੰਮ ਕਰਕੇ ਖਾਓ ਕੰਮ ਕਰਕੇ। ਬੇਲੜ ਖਾਣਾ ਕਿਸੇ ਵੀ ਬੰਦਾ ਹੱਕ ਹਲਾਲ ਦੀ ਕਰਕੇ ਖਾਂਦਾ। ਔਰ ਹੱਕ ਹਲਾਲ ਦੀ ਕਰਕੇ ਹੀ ਖਾਣੀ ਚਾਹੀਦੀ ਹੈ। ਸਾਤੋਂ ਕਿਹੜੀ ਰੁੱਤੇ ਦੂਰ ਹੋਇਆ ਹੀ ਰਿਆ? ਸਾਤੋਂ ਕਿਹੜੀ ਰੁੱਤੇ ਦੂਰ ਹੋਇਆ ਹੀ ਰਿਆ? ਢੈੜਾ ਚੱਲਿਆ ਬਲੇਤਾਂ ਦਾ ਰਿਵਾਜ ਵੀ। ਕਹਿਣ ਪਾਸਪੋਰਟ ਨਿੱਕੀ ਜਹੀ ਕਾਪੀ ਨੂੰ ਪਾ ਕੇ ਜੇਬ ਵਿੱਚ ਚੜਿਆ ਜਹਾਜ਼ ਵੇ ਸੀਗੇ ਰੋਟੀ ਜੋਗੇ ਇੱਥੇ ਵੀ ਤਾਂ ਸੀ ਖਰੀਦਨੇ ਕੀ ਹੋਰ ਆਪਾ ਵੇ ਇੱਕ ਮੰਨੀ ਮੇਰੇ ਹਾਣੀਆਂ ਚੰਗੀ ਰੱਖੀ ਆ ਤੂੰ ਵੈਰੀਆ ਲਿਹਾਜ਼ ਵੇ ਮੋੜ ਆਇਆ ਕਰ ਮੰਡੀਆਂ ਬਪੂ ਤੇਰਾ ਵੇਚ ਕੇ ਅਨਾਜ ਵੇ ਮੂਲ ਵੀ ਨਾ ਲੈਂਦੇ ਉਦੋਂ ਹੀ ਜਦੋਂ ਲੱਗਦੇ ਵੇ ਨੂੰ ਵਿਆਜ ਵੇ ਨਵੇਂ ਜੇ ਬ੍ਰੈਂਡ ਪਾਉਣ ਵਾਲਿਆ ਤੇਰੇ ਕੁੜਤੇ ਨੂੰ ਕਰਾ ਅਜੇ ਕਾਜ ਵੇ ਪੱਗ ਬੰਨੇ ਤੇਰਾ ਪੁੱਤ ਸਵਾ 7 ਦੀ ਤੇਰੀ ਧੀ ਜੋਗਾ ਜੋੜੀ ਜਾਵਾ ਦਾਜ ਵੇ ਖੋਲ ਗੁੱਤ ਮੈਂ ਵੀ ਖੋਲ ਗੁੱਤ ਮੈਂ ਵੀ ਜੂੜਾ ਵਾ ਲਿਆ ਤੇ ਮੈਂ ਮੈਂ ਵੀ ਖੁਗੀ ਹੁਣ ਮੈਂ ਵੀ ਆਖਣਾ ਨਹੀਂ ਆਪੇ ਉਦੋਂ ਮੁੜ ਪੀ ਮੈਂ ਵੀ ਆਖਣਾ ਨਹੀਂ ਆਪੇ ਉਦੋਂ ਮੁੜ ਪੀ ਜਦੋਂ ਪੂਰੀ ਹੋਗੀ ਡਾਲਰਾਂ ਦੀ ਭਾਜ ਵੇ ਜਦੋਂ ਪੂਰੀ ਹੋਗੀ ਡਾਲਰਾਂ ਦੀ ਭਾਜ ਵੇ ਸਿੰਘ ਕੁੱਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਸਿਡਨੀ 'ਚ 36 ਡਿਗਰੀ ਸੈਂਟੀਗ੍ਰੇਡ ਹੈ ਪੂਰਾ ਮਗਿਆ ਪਿਆ ਕੰਮ ਠੰਡ ਦੇ ਵਿੱਚ ਨੇ ਵੀ ਅੰਦਰ ਤੜੀ ਹੋਏ ਹੋ ਮੇਰੇ ਵਰਗਾ ਬੈਠਾ ਕਹੀ ਜਾਂਦਾ ਜੇ ਮੈਂ ਇਸ ਰੇਡੀਓ ਤੋਂ ਉੱਠ ਖੜੇ ਆ ਇਹਦਾ ਰੇਡੀਓ ਬੰਦ ਹੋ ਜਾਣਾ ਝੰਡਾ ਗੱਡਿਆ ਹਨ ਉਹ ਨਾ ਕਰਦਣ ਤੇ ਦੇ ਬਹੁਤ ਚੱਲਿਆ ਸੀ ਲੋਕਾਂ ਦੇ ਮਨ ਦੇ ਵਿੱਚ ਬਹਿਮ ਸੀ ਤੇ ਜਿੱਦਣ ਅਸੀਂ ਤੁਰ ਗਏ ਇਹ ਤਾਂ ਮਾਈਕ ਵਿੱਚ ਖੀਸੇ ਜੇ ਪਾ ਕੇ ਚਲੇ ਜਾਣਾ ਪਰ ਗਾਂ ਤੋਂ ਗਾਂ ਪੂਰੇ ਕੈੜੇ ਆਉਂਦੇ ਆ ਤਿਰਸ਼ੇ ਜਿਹੜੇ ਬੜਾਂਗਾ ਅਗਲਾ ਜਿਹੜਾ ਪੂਰਾ ਕੈੜਾ ਆਉਣਾ ਹੈ ਐ ਸਿਰੇ ਦਾ ਚੰਗਾ ਟ੍ਰੈਂਡ ਕਰਕੇ ਕੋਈ ਬਿਠਾਉਣਾ ਜਿਹੜਾ ਐਨ ਜੜ ਨੂੰ ਪਾਵੇ ਹੱਥ ਸਾਰੇ ਰੰਗ ਹੋਣ ਕਹਿੰਦਾ ਨੋਟ ਬਾਲਾ ਮੁੱਦਾ ਬਾਲਾ ਵੱਡਾ ਮੁੱਦਾ ਨਹੀਂ ਕੁਝ ਦਿਨਾਂ ਦੀ ਦਿੱਕਤ ਜ਼ਰੂਰ ਹੈ ਹਾਸੇ ਕਿਹੜੇ ਦੇ ਸਟੇਟਸ ਪਾਏ ਜਾ ਰਹੇ ਨੇ ਸੁਗਲ ਸੱਤਾ ਵੀ 라ਜਮੀ ਆ ਦੁੱਦੀ ਤੋਂ ਪੰਦਰੀ ਫੜ ਕੇ ਚਾਹ ਗੁਰਦੇ ਜਵਾਕਰ ਦੀਆਂ ਫੀਸਾਂ ਤਾਰ ਨਾਲ ਹੌਲ ਕਾਲਾ ਤਨ ਕਿੱਥੇ ਐ ਤਕੜ ਸ਼ਾਹੂ ਕਰਾ ਦੇ ਵੇ ਨੇ 트럼ਪ ਅਮਰੀਕੀਆਂ ਦਾ ਮੁੱਦਾ ਤੁਸੀਂ ਗੇੜੇ ਨਾਲ ਬਾਦਲ ਨੂੰ ਵੋਟ ਪਾਉਨੇ ਅਗਲੇ ਨੇ 트럼ਪ ਨੂੰ ਪਾਤੀ ਅਹਿਮ ਮਸਲਾ ਐਸਵਾਈਐਲ ਐ ਆਉਂਦੀਆਂ ਨਸਲਾਂ ਚ ਮੁੱਦਾ ਮੱਝ ਅਤੇ ਦੋਆਬਾ ਨਹਿਰੀ ਪਾਣੀ ਦੀ ਘਟ ਵਰਤੋਂ ਕਰਦਾ 15 ਨਹਿਰੀ ਪਾਣੀ ਦੀ ਘਟ ਵਰਤੋਂ ਕਰਦਾ 15 15 ਦੀਆਂ ਮੱਛੀਆਂ ਉਹ ਧਾਰ ਮਾਰਦੀਆਂ ਮੋਟਰਾਂ ਇਸਲੇ ਪਾਣੀ ਚੰਗੇ ਐ ਡਾਕਟਰ ਜ਼ਮੀਨਾ ਨੀਰੇ ਦਿਨਾ ਚ ਆਉਂਦੇ ਐ ਤੂੰ ਡਾਕਟਰ ਨਾਲ ਵੱਡੀ ਚਲ ਪਿੱਛੇ ਬਰਸੀਮ ਕਹਦਾ ਭਾਈ ਪਿੱਛੇ ਹੀ ਆਇਆ ਨਾਲ ਹੀ ਉਗਦਾ ਆਉਂਦਾ ਮਾਲਵਾ ਸਾਰਾ ਬੰਦੇ ਨੂੰ ਫਿਰਨੇ ਤੇ ਖੜਕੇ ਪੁੱਛ ਲੈਂਦਾ ਜਗਰਾ ਚ ਦੀ ਨਿਗਾਹ ਤਾਂ ਨਹੀਂ ਮਾਰੀ ਹੋਣੀ ਸੂਏ ਚ ਪਾਣੀ ਆ ਗਿਆ ਕਿ ਨਹੀਂ ਜਰ ਅਗਲਾ ਅੱਗੋਂ ਕਹਿੰਦਾ ਆਇਆ ਨਹੀਂ ਫਿਰ ਮੂਰ ਲਾ ਫਿਰ ਟ੍ਰੈਟ ਜੋੜੀਏ ਜਰ ਤੇ ਮੋਟਰਾਂ ਮੂਹਰੇ ਲਫਾਫਾ ਪੈਦ ਚੜ੍ਹ ਕੇ ਉੱਚੇ ਫਾੜਾਂ ਨੂੰ ਪਾਣੀ ਲੱਗਦੇ ਆ ਜਿਹਦਾ ਨਹੀਂ ਫੋਹ ਪੈਂਦਾ ਉਹ ਹਾਰ ਕੇ ਸਰੋਗਵਾਰਾ ਬੀਜ ਦਿੰਦਾ ਛੱਟੇ ਵਰਤੇ ਜਾਂਦੇ ਹੇਠਲੇ ਪਾਣੀ ਬੇਹਦ ਮਾੜੇ ਨਮੀ ਮੋਟਰ ਤੇ ਡੂੜ ਹਾਥੀ ਦੇ ਕੰਨ ਵਾਂਗੂ ਫੜਕਦਾ ਵੀ ਕਿਤੇ ਪਾਣੀ ਬਾਹਲਾ ਮੜਾ ਨਾ ਨਿਕਲ ਜੇ ਝੋਨੇ ਲੱਗੇ ਵੇ ਆ ਪਰ ਹੇਠਲੇ ਪਾਣੀ ਨੂੰ ਬਾਹਣਾ ਦੀ ਜਖੜਾ ਪੱਟਤੀ ਹੁਣ ਲੀਡਰ ਲੀਡਰਾਂ ਦਾ ਗੇੜੇ ਦੇਰ ਦਾ ਟਾਈਮ ਆ ਪਾਰਕਿਆਂ ਨੂੰ ਛੱਡ ਕੇ ਪੰਜਾਬ ਨੂੰ ਵੇਖਣਾ ਫਰਾਣੇ ਨੇ ਟੱਕ ਲਾਇਆ ਫਰਾਣੇ ਨੇ ਦਸਤੇ ਕੀਤੇ ਆ ਗੱਲਾਂ ਦਾ ਸਮਾਂ ਨਹੀਂ ਕੈਪਟਨ ਬਾਦਲ ਤੇ ਆਣ ਵਾਲੇ ਤਿੰਨੇ ਮੂਰੇ ਲੱਗਣ ਸਾਰਾ ਪੰਜਾਬ ਮਗਰ ਖੜਾ ਹੈ ਨਹੀਂ ਫਿਰ ਜਿਹੜਾ ਕੰਮ ਨੀਲੀਏ ਚਿੱਟੀਆਂ ਪੱਗਾਂ ਵਾਲੇ ਨਹੀਂ ਕਰਦੇ ਉਹ ਕੰਮ ਕੇਸਰੀ ਪੱਗਾਂ ਵਾਲੇ ਸਿਰੇ ਲਾਉਂਦੇ ਆ ਇਤਿਹਾਸ ਗਵਾਹ ਹੈ ਪੰਜਾਬ ਜਿੰਦਾਬਾਦ ਉਦਾਸਿਓਂ ਐਉਂ ਕਹਿੰਦਾ ਵਪਾਰਕ ਸਦੇਸ਼ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜਿੱਥੇ ਵੀ ਬੈਠੇ ਹੋ ਮੌਸਮ ਬਹੁਤ ਵਧੀਆ ਰੀਜ਼ਿੰਗ ਹੈ ਨਹੀਂ ਜ਼ੀਰੋ ਤੇ 1 ਦੇ ਨੇੜੇ ਘੁੰਮ ਰਿਹਾ ਹੈ ਬਰਫ਼ ਜਿੱਥੇ ਖੜੀ ਹੈ ਉੱਥੇ ਖੜੀ ਹੈ ਸ਼ਰਬ ਜਿਹੜੇ ਬਾਹਰ ਨੇ ਬਣੇ ਉਹਨਾਂ ਤੇ ਗਰਾ ਲੱਗਿਆ ਪਿਆ ਬਰਫ਼ ਦਾ یوں ਹੋਵੇ ਤੇ ਹਲਾਇਓ ਨਾ ਆਪੇ ਜਦਨ ਗਿਰਜੂ ਫੇਰ ਹੈ ਨਹੀਂ ਵਧੀਆ ਲੱਗਦੇ ਫੋਟੋਆਂ ਖਿੱਚ ਕੇ ਪਿੱਛੇ ਭੇਜ ਦਿਓ ਪੰਜਾਬ ਨੂੰ ਇਹ ਇਸ ਬਰਫ਼ ਚ ਲੱਗੇ ਹੋਏ ਆ ਹੁਣ ਮਸਾ ਸੂਤ ਆਊਗਾ ਚਾਹ ਪਾਣੀ ਤੇ ਇਹ ਕਹਾਣੀ ਮਸਾ ਕਿਉਂਕਿ ਇਹ ਗੱਲ ਬੜੀ ਉੱਥੇ ਜੇ ਕਿਸ ਨੂੰ ਪਤਾ ਨਾ ਬੱਲਾ ਬੱਲਾ ਬੱਲਾ برف ਕਿੰਨੀ ਪਈ ਆ ਤੁਹਾਡੇ ਉਈਓ ਚੌਂਦੀ ਲਾ ਦੋ ਇੱਥੋਂ ਭੇਜ ਕੇ ਕਹਾਂ ਦੇਖ ਲੈ ਐਸ ਜੀਆਂ ਬਰਸਾਂ 'ਚ ਕੰਮ ਕਰਨਾ ਪੈਂਦਾ ਬਾਈ ਸਿਆ ਉੱਥੇ برف ਵੇਖਣ ਨੂੰ ਮਨਾਲੀ ਕੁਲੂ ਮਨਾਲੀ ਨੂੰ ਚੜ ਜਾਂਦੇ ਉੱਪਰ ਨੂੰ ਸ਼ਿਮਲੇ 4 4 ਇੰਚ برف ਹੁੰਦੀ ਆ ਉਹਦੇ ਤੇ ਚਿਲਕੀ ਜਾਂਦੇ ਆ ਉਹਦੀਆਂ ਹੀ ਬਟਬਟ ਕੇ ਗੋਲ ਇੱਕ ਦੂਜੇ ਨੂੰ ਸਿੱਟੀ ਜਾਂਦੇ ਆ ਭਗਾ ਕੇ ਸਾੜੀਆਂ ਨਾਲ ਕਈ ਭੱਜੀ ਫਿਰਦੀਆਂ ਥੱਲੇ ਸਪੋਰਟ ਸ਼ੂ ਪਾਈ ਪੈਂਟ ਕੋਟ ਨਾਲ ਵੀ ਉੱਥੇ ਪਾਉਂਦੇ ਆ ਸਪੋਰਟ ਸ਼ੂ ਇੱਥੇ ਵੀ ਪਾਉਂਦੇ ਆ ਨਾਲ ਫਿਰ ਕੋਟ ਦੇ ਬਾਹਰ ਦੀਆਂ ਜੇਬਾਂ 'ਚ ਦੋਨੇ ਕੋਟ ਪੈਂਟ ਤਾਂ ਪਾਇਆ ਹੁੰਦਾ ਨਾਲ ਮੋਤੀਆ ਪੱਗ ਬੰਨੀ ਹੁੰਦੀ ਆ ਧਾਰੀਆਂ ਕੋਟ ਪੈਂਟ ਹੁੰਦਾ ਥੱਲੇ ਚਿੱਟੇ ਸ਼ੂ ਹੁੰਦੇ ਆ ਨਾਈਕੀ ਦੇ ਦੋਨੇ ਜੇਬਾਂ 'ਚ ਦੋਨੇ ਹੱਥ ਫੰਡ ਨਾਲ ਥੀਆਂ ਮੀਚ ਲੈਂਦੇ ਆ ਇੰਉਂ ਲੱਗਦਾ ਜਿਵੇਂ ਆਦਤ ਸੇਰ ਦਾ ਬੱਟਾ ਦੋਨੇ ਜੇਬਾਂ 'ਚ ਪਾਇਆ ਹੋਵੇ ਫੇਰ ਐਨ ਠੰਡ 'ਚ ਖੜੇ ਬਾਹਰ ਮਾੜੀ ਮਾੜੀ ਜੇ ਧੁੰਦ ਹੋਵੇ ਤਰੇਲ ਜੀ ਦਾੜੀ ਤੇ ਨਮਕ ਲੱਗ ਜਾਂਦਾ ਪਾਣੀ ਤੇ ਸੂਰ ਚੜਦੇ ਨੇ ਫਿਰ ਉਹ ਸੋਨੇ ਵਾਂਗੂ ਚਮਕਦੇ ਫਿਰ ਢੀਕਦੇ ਨੇ ਕਈਆਂ ਨੂੰ ਰਾਤ ਨੂੰ ਘੋਰ ਜੇ ਹੁੰਦੀ ਐ ਵਧਿਆ ਹੁੰਦਾ ਕੰਮ ਫਫੜ ਵਿਗੜ ਜਾਂਦਾ ਫਫੜ ਨੂੰ ਅੰਦਰਲੀ ਬੈਲ ਉਹ ਕਹਿੰਦਾ ਵੇ ਦਰਾਮੂਰੇ ਖੜਾਓ ਵੱਡੀ ਵਾ ਨਾ ਫਫੜਾ ਬਾਸ ਚ ਲੈ ਆਣਾ ਬਾਸੇ ਕੀਤੀ ਐ ਵਿਆਹ ਵਿਆਹ ਵਾਲੇ ਮੁੰਡੇ ਨੂੰ ਕੱਲੀ ਐਂਬੈਸਟਰ ਉਹ ਮੈਂ ਤਾਂ ਨਹੀਂ ਜਾਂਦਾ ਫਿਰ ਲੈ ਜਾਓ ਜਨ ਤੋਂ ਬਿਨਾ ਪਤੀਜਾ ਪਰਲੇ ਬੰਨੇ ਕਹਿੰਦਾ ਔਖੇ ਸੌਕੇ ਨੂੰ ਨੰਦਾਂ ਤੱਕ ਲੈ ਕੇ ਚੱਲੋ ਨੰਦਾਂ ਤੋਂ ਬਾਅਦ ਇਹਨੂੰ ਪੁੱਛਾਂਗੇ ਅੰਦਰਲੇ ਧਰਮਸ਼ਾਲਾ ਦੇ ਕੁੰਜੇ ਲਾ ਕੇ ਕਿਉਂ ਫੁੱਫੜਾ ਕਿਵੇਂ ਆ? ਮੁੜ ਕੇ ਫੁੱਫੜਾ ਜਦ ਫੁੱਫੜ ਆਉਂਦਾ ਹੈ ਗਵਾਰੇ ਦੇ ਸਿੱਟੇ ਵਾਂਗੂ ਹਿਲਦਾ ਹੁੰਦਾ ਜਦ ਉਹਨੂੰ ਘਰ ਨੂੰ ਲੈ ਕੇ ਆਉਂਦੇ ਆਥ। ਭੂਆ ਉੱਥੇ ਆਉਂਦਿਆਂ ਨੂੰ ਕਹਿੰਦੀ ਤੁਹਾਡਾ ਫੁੱਫੜ ਵੇ? ਉਹ ਕਹਿੰਦਾ ਫੁੱਫੜ ਭੂਆ ਖਿੰਡਿਆ ਪਿਆ ਤੂੰ ਜਲੇਬੀਆਂ ਆਪਣੀਆਂ ਖਾ ਤੈਂ ਤੋਂ ਤਿੰਦੇ ਲੈਣੇ ਆ ਕਈ ਭਤੀਜੇ ਭੱਜ ਕੇ ਪੈਂਦੇ ਆ ਫੇ। ਕਿਉਂਕਿ ਉਹਨਾਂ ਨੂੰ ਔਖਾ ਲੱਗਦਾ ਵੀ ਘਰੇ ਸਾਡੇ ਕੇ ਭੂਆ ਫੁੱਫੜ ਦਾ ਹਾਲ ਆਮ ਨਹੀਂ ਉੱਥੇ ਪੁੱਛਿਆ ਜਾਂਦਾ ਬੰਦਿਆਂ ਦੇ ਵਿੱਚ ਘਰ ਵਾਲਾ ਬੈਠਾ ਹੋਵੇ ਕਦੇ ਆ ਕੇ ਨਹੀਂ ਦੂਰੋਂ ਹੌਲੀ ਜੇ ਹੱਥ ਮਾਰ ਕੇ ਆ ਗੱਲ ਸੁਣਿਓ ਜੀ ਇਉਂ ਕਹਿ ਕੇ ਸੱਦਦੇ ਐ ਫੇ ਕੰਨਾਂ 'ਚ ਕੁਸਰ-ਮੁਸਰ ਕੁਸਰ-ਮੁਸਰ ਕਾਦੀ ਹੁੰਦੀ ਆ ਪੈਸੇ ਟੁੱਟੇ ਲੈਣੇ ਹੁੰਦੇ ਆ ਜਿਹੜੇ ਸ਼ਗਨਤੇ ਪਾਉਣੇ ਹੁੰਦੇ ਆ ਹੋਰ ਕਾਬਾळा ਨਹੀਂ ਹੁੰਦਾ ਫੇ ਖੀਸੇ 'ਚੋਂ ਕੱਢ ਕੇ ਦਿੰਦੀ ਬੀਬੀਆਂ ਸਮੀੱਚ ਦੇ ਵਿੱਚੋਂ ਬਾਹਰਲੇ ਖੀਸੇ 'ਚੋਂ ਕੱਢ ਕੇ ਕਹਿੰਦਾ ਮੇਰੇ ਕੋਲ ਨਹੀਂ ਹੈਗੇ ਤੂੰ ਹੀ ਦੇਖ ਮੈਂ ਦੇਖਾਂ ਜੀ ਫੇਰ ਉੱਥੇ ਖੜੇ ਹੀ ਤਜੋਰੀ ਫੋਲਦੇ ਆ ਇੱਧਰ ਉੱਧਰ ਵੀ ਨਹੀਂ ਹੁੰਦੇ ਹੇਜਾ ਪਿੰਡਾਂ ਦਾ ਕੰਮ ਹੈ ਇੱਕ ਹੋਰ ਚੱਲਣ ਦੇ ਸਾਜ ਰਹੀ ਕੁਦਾ ਕਹਿੰਦਾ ਕਹਿੰਦਾ ਸਾਡੇ ਪਿੰਡ ਚ ਬਲ ਮੈਂ ਤੇ ਮੈਂ ਮੈਂ ਮੁਲਖ 10ਵੀਂ ਚ ਹੀ ਰਿਟਾਇਰਮੈਂਟ ਲੈ ਜਾਂਦਾ ਵਿੱਚ ਵਿੱਚ ਕਈ ਬਾਹਲਾ ਜ਼ੋਰ ਮਾਰ ਕੇ ਆਸ ਨਾਲ 12ਵੀਂ ਕਰਕੇ ਸਾਡੇ ਆਲਾ ਨਿੱਕਾ ਕਰਨਾ ਬੋਰਡ ਦੀ 10ਵੀਂ ਚ ਖਾਸੇ ਨੰਬਰ ਕੁੱਟ ਗਿਆ ਭਰਾਵਾ ਸਾਡੇ ਫੁੱਫੜ ਅਰ ਨੇ ਤਾਏ ਨੂੰ ਸਲਾਹ ਦਿੱਤੀ ਪ੍ਰਧਾਨ ਨਿੱਕਾ ਹਸ਼ਿਆਰ ਨਾਨ ਮੈਡੀਕਲ ਰਖਾ ਦੇ 11ਵੀਂ ਬਾਰ ਵਿੱਚ ਚੱਕ ਚਕਾ ਕੇ ਨਿੱਕੇ ਦਾ ਨਾਨ ਮੈਡੀਕਲ ਦਾਖਲਾ ਭਰਾਤਾ ਤਿਆਰ ਗਿਆ ਨੇ ਸਾਰੇ ਪਿੰਡ ਚ ਫੁੱਲ ਚਰਚਾ ਸ਼ਹਿਰੋਂ ਕਿਤਾਬਾਂ ਲਿਆਤੀਆਂ ਸਾਜਾਂ ਨੂੰ ਨਾਨ ਮੈਡੀਕਲ ਦੀਆਂ ਪੰਸੇਰੀ ਪੰਸੇਰੀ ਪੱਕੇ ਦੀਆਂ ਕਿਤਾਬਾਂ ਭਘੋਰ ਪੜਨ ਵਾਲੀ ਜਨਤਾ ਨੇ ਪਹਿਲੀ ਵਾਰੀ ਫਿਜ਼ਿਕਸ ਕੈਮਿਸਟਰੀ ਦਾ ਨਾਮ ਸੁਣਿਆ ਸੀਗਾ ਨਿੱਕਾ ਸਕੂਲੋਂ ਆ ਕੇ ਮੰਜੇ ਤੇ ਲੱਤਾਂ ਢਾਕੇ ਝੋਲਾ ਖੋਲ ਕੇ ਪੜਨ ਬਹਿ ਜਾ ਕਰੇ ਤਿਆਰ ਕੰਮ ਨੂੰ ਆਖਿਆ ਕਰ ਨਿੱਕਾ ਰੋਜ਼ ਅੱਗੇ ਮੂਹਰੇ ਉਹ ਕਹਦਾ ਕਹੇ ਨਹੀਂ ਤਾਇਆ ਨਮੈਰੀਕਲ ਕੱਢਣੇ ਆ ਮੈਂ ਤਾਂ ਸਾਰੇ ਪਿੰਡ ਨੂੰ ਹਮਦਰਦੀ ਵੀ ਨੰਮੈਰੀਕਲ ਫਸ ਗਿਆ ਯਾਰ ਹੁਣ ਨਹੀਂ ਨਿਕਲਦੇ ਮੁਲਕ ਪਤਾ ਲੈਣ ਆਇਆ ਕਰੇ ਕਿਵੇਂ ਹੋਇਆ ਨਿੱਕਿਆਂ ਨੰਮੈਰੀਕਲਾਂ ਦਾ ਕਦ ਨਿਕਲਣਗੇ ਇਹ ਤਾਂ ਨਿਕਲਦੇ ਨਿਕਲਦੇ ਨਿਕਲਣਗੇ ਚਾਚਾ ਇੱਕ ਦਿਨ ਕਹਿੰਦਾ ਨਿੱਕਿਆ ਨੀਰਾ ਪੁੱਤਰ ਇੰਜਣ 'ਤੇ ਪਾਣੀ ਪਾ ਦੇ ਯਾਰ ਨਿੱਕਾ ਕਹਿੰਦਾ ਨਹੀਂ ਤਾਇਆ ਨੰਮੈਰੀਕਲ ਕੱਢਣੇ ਆ ਤਾਇਆ ਨੂੰ ਹਰਖ ਚੜ ਗਿਆ ਪ੍ਰੋਜੈਕਟ ਬੈਕ ਕਰਕੇ ਨਿੱਕੇ ਦੇ ਮੰਜੇ ਨਾਲ ਲਾ ਲਿਆ ਸੀਰੀ ਸਾਡੇ ਸਵਾਗੇ ਵਾਲੇ ਸੰਗਲ ਚੱਕੀ ਹੋਂ ਪਾਇਆ ਕਹਿੰਦਾ ਨਿੱਕਿਆ ਪਾਰਟ ਉਚੋਂ ਖਿੱਚ ਕੇ ਨੰਮੈਰੀਕਲ ਕੱਢੀਏ ਤੇਰੇ ਬਹੁਤ ਛੱਟ ਕੀਤਾ ਆ ਕਿ ਦੋ ਸਿਆਣੇ ਬੰਦਿਆਂ ਨੇ ਤਾਇਏ ਨੂੰ ਸਮਝਾਇਆ ਕਹਿੰਦੇ ਆ ਤਾਇਏ ਨੂੰ ਪਾਣੀ ਪੂਣੀ ਪਿਆ ਕੇ ਠੰਡਾ ਕੀਤਾ ਸਾਰਿਆਂ ਨੇ ਸਾਡੇ ਵਾਲਾ ਸਲਫਿਊਰਿਕ ਐਸਿਡ ਤੇ ਇਹੋ ਜਿਹਾ ਹੁੰਦੇ ਆ ਪਿੰਡਾਂ ਆ ਕਿੁੱਦਾ 블ੌਟਿੰਗ ਪੇਪਰ ਦਾ ਨਾਮ ਲੈ ਲੈ ਕੇ 5-500 ਰੁਪਈਆ ਲੈ ਜਾਂਦੇ ਰਹੇ ਨੇ ਬਸ ਪਿਆ ਤੋਂ ਲੋਕ ਹੋਸਟਲ ਨੂੰ ਸ਼ਾਹੀ ਚੂਸ ਨੂੰ ਬੜੀ ਗੱਲ ਕਹਿ ਦੇਣਾ ਵੀ ਪੇਪਰ ਲੈਣਾ ਬਾਪੂ ਉਹ ਕਹੇ ਹਵੇ ਚੀਜ਼ ਮਹਿੰਗੀ ਹੋਈ ਆ ਹਾਸਾ ਨਾਮਾ ਲੱਗੂ ਕਿੰਨੇ ਕ ਲੱਗਣਗੇ 500 ਨਾਲ ਸਰਜੂ ਮਹੀਨੇ ਦੀਆਂ ਕੇ ਫਿਰ ਕੇ ਲੈ ਜਾਣਾ ਫਿਰ ਅਗਲੀ ਵਾਰ ਹੋਰ ਡਰਾਫਟਰ ਲੈਣਾ ਵਾਲੀ ਮਸ਼ੀਨ ਜੀ ਸਟੇਨ ਅਰਗਾ ਲੱਗਦਾ ਸੀ ਹੱਥ ਚ ਫੜ ਕੇ ਜਦ ਨੂੰ ਲਈ ਫਿਰਦੇ ਸੀ ਸੈਮੈਸਟਰ ਪਹਿਲਾ ਹੀ ਹੋਣਾ ਪਹਿਲਾ ਹੀ ਨੀਲੇ ਕੋਟ ਤੇ ਇੰਜੀਨੀਅਰਸ ਥੱਲੇ ਹਲੇ ਪਹਿਲਾ ਹਲੇ ਨਾਨ ਮੈਡੀਕਲ ਦਾ ਪਹਿਲਾ ਸੈਮੈਸਟਰ ਹੁੰਦਾ ਨੀਲੇ ਕੋਟ ਪਹਿਲਾਂ ਸਮਾਉਣੇ ਤੇ ਬਾਹਰ ਨ ਬੰਨੇ ਫਿਰ ਕਾਲਜ ਦਾ ਨਾਮ ਥਲੇ ਇੰਜੀਨੀਅਰਸ ਲਿਖ ਕੇ ਪਹਿਲਾ ਕਢਾਉਣਾ ਸੱਚੇ ਥਲੇ ਨਾਲ ਚਾਰ ਚਾਰ ਇਉਂ ਹੀ ਇੱਥੇ ਫਿਰਦੇ ਆ ਚਾਰ ਚਾਰ ਸਾਲ ਦੀਆਂ ਡਿਗਰੀਆਂ 9-9 ਸਾਲ ਚ ਕਰਕੇ ਆਏ ਚੰਡੀਗੜ੍ਹੋਂ ਗੱਲਾਂ ਸੁਣ ਲਾ ਨਾਬੇ ਦੇ ਗੱਬੇ ਦੀਆਂ ਸੁਣਾਉਂਦੇ 11:27 ਮਿੰਟ ਹੋ ਗਏ ਹੁਣ ਖਬਰਾਂ ਵੱਲ ਨੂੰ ਹੋਮਾਂ ਮਾਹੌਲ ਥੋੜਾ ਜਿਹਾ ਠੀਕ ਕਰਦਾ ਤੁਹਾਡਾ ਇੱਕ ਅੱਜ ਖਬਰ ਸੁਨੇਹਾ ਮੈਂ ਪੜ੍ਹੀ ਫੋਟੋਆਂ ਵੀ ਪਾਈਆਂ ਵੀ ਆ ਦੁਨੀਆ ਦੁਖੀ ਯਾਰ ਕਿੰਨੀ ਹੈ ਨਹੀਂ ਮੈਂ ਹੈਰਾਨ ਹੈ ਸਰਬੀਆ ਦੀ ਰਾਜਧਾਨੀਆ ਬੈਲਗ੍ਰੇਡ ਉਈਓ ਖਖੜੀਆਂ ਕਰੇ ਲਿਆ ਇਹਨਾਂ ਦੇਸ਼ਾਂ 'ਚ ਹੈ ਹੀ ਕੁਛ ਨਹੀਂ ਲੜਾਈਆਂ ਨੇ ਬਿੰਨੇ ਪਿਆ ਉਹਨਾਂ ਕੋਲ ਕੱਖ ਨਹੀਂ ਹੈ ਉੱਥੇ ਠੂਠੇ ਨਾਲ ਕਨਾਲ ਖੜਕਦਾ ਹੈ ਉੱਥੇ 8000 ਬੰਦਾ ਰੈਫਿਊਜੀ ਇੱਕ ਵੇਅਰ ਦੇ ਵਿੱਚ ਰਹਿ ਰਿਹਾ ਨਾ ਵੇਅਰ ਦੇ ਉਹਦੇ ਵਾਰੀਆਂ ਗਰੀਲਾ ਹੀ ਹੈ ਗਰੀਲਾ ਵੀ ਜੰਗਾਲ ਲੱਗਿਆ ਉਹ ਜਿਹੀਆਂ ਬਿਲਡਿੰਗਾਂ ਜਹ ਜੀਆਂ ਜਿੱਥੇ ਬਾਲਾ ਕ੍ਰਾਈਮ ਹੋਵੇ ਜਿਵੇਂ ਡੀਟ੍ਰੋਇਡ ਦੇ ਡੀਟ੍ਰੋਇਡ ਦੇ ਬਾਹਰਲੇ ਬੰਨੇ ਕੋਈ ਪੁਰਾਣੀ ਕੰਪਨੀ ਦਾ ਵੇਅਰ ਹਾਊਸ ਪਿਆਵੇ 8000 ਹਜ਼ਾਰ ਦਾ ਧੂਣੀਆਂ ਲਾਈਆਂ ਹੋਈਆਂ ਇਹਦੇ ਵਿੱਚ ਇੱਕ ਅਫਰਾਜ਼ ਅਲੀ ਜਿਹੜਾ ਪਾਕਿਸਤਾਨ ਤੋਂ 16 ਸਾਲ ਦਾ ਘਰੋਂ ਤੁਰਿਆ ਤੇ ਹੁਣ 17.5 ਦਾ ਹੋ ਗਿਆ ਉਹ ਕਹਿੰਦਾ ਹੁਣ ਦਾਹਾਂ ਕਿਵੇਂ ਕਹਿੰਦਾ ਬਸ ਬੈਠੇ ਆ ਇੱਥੇ ਸੀਰੀਆ ਦੇ ਨੇ ਇਰਾਕ ਦੇ ਨੇ ਅਫਗਾਨਿਸਤਾਨ ਦੇ ਨੇ 10 10000 0 14 14000 ਕੈਨੇਡੀਅਨ ਲੈ ਕੇ ਮਿਡਲ ਈਸਟ ਦੇ ਰਾਹੀ ਵੈਲਕਮ ਤੇ ਤੁਰਕੀ ਦੇ ਰਾਹੀ ਇੱਥੇ ਭਾਰਤੇ ਬੰਦੇ ਹੁਣ ਇਹ ਬਾਰਡਰ ਤੇ ਬੈਠੇ ਆ ਬਈ ਯੂਰਪ ਖੁੱਲਣਾ ਬਰਮੇ ਆਰਗਿਆਂ ਨੇ ਮੋਗੇ ਜਦ ਕੋਈ ਕਹਿਣਾ ਸੀ ਮੁੰਡਾ ਬਲੈਟ ਤੇ ਉਹ ਕਹਿੰਦਾ ਲਾਣੇਦਾਰਾ ਹੁਣ ਬਲੈਟ ਨਹੀਂ ਸਾਰਾ ਯੂਰਪ ਖੁੱਲਾ ਹੈ ਚ ਜੇ ਵੜ ਗਿਆ ਸਾਰੇ ਯੂਰਪ ਚ ਹੈ ਹੁਣ ਰੇਟ ਸਾਡਾ 10 ਤੋਂ ਲੈ ਕੇ 18 ਲੱਖ ਹੋ ਗਿਆ ਇੱਕ ਵੀਜ਼ੇ ਨਾਲ ਇਹ ਸਾਰੇ ਯੂਰਪ ਚ ਨਾ ਹੁਣ ਯੂਰਪ ਦਾ ਪਤਾ ਬਾਗੇ ਉਹਨੂੰ ਹੀ ਹਾਂ ਪਤਾ ਦੇ ਜੰਗਲਾਂ ਨੇ ਬਬਰ ਪੁੱਤ ਖਾ ਲਏ ਉੱਥੇ ਸੋ ਇਹ 8000 ਬੰਦਾ ਯੂਰਪੀਅਨ ਯੂਨੀਅਨ ਦੇ ਬਿਲਕੁਲ ਦਰਵਾਜੇ ਤੇ ਬੈਠਾ ਦਿਹਾੜੀ ਚ ਇੱਕ ਵਾਰ ਇਹਨਾਂ ਨੂੰ ਰੋਟੀ ਮਿਲਦੀ ਆ ਬੈਲਗਰੇਡ ਦਾ ਮੇਨ ਰੇਲਵੇ ਸਟੇਸ਼ਨ ਆ ਬਾਹਰਲੇ ਬੰਨੇ ਪਾਈਪ ਜਿਹੜੇ ਟੁੱਟੇ ਹੋਏ ਨੇ ਜਿਵੇਂ ਆਪਾਂ ਪੀਟਰ ਨੂੰ ਪਾਣੀ ਪਾਉਣ ਵਾਲੇ ਆਪਣੇ ਪਾਈਪ ਟੁੱਟੇ ਹੁੰਦੇ ਟਰੈਕਟਰ ਨਿੰਘ ਜੇ ਇਹੋ ਜਿਹੇ ਟੁੱਟੇ ਹੋਏ ਪਾਣੀ ਨੇ ਉਹਦੇ ਵਿੱਚ ਉਹਦੇ ਨਾਲ ਪੰਪਿੰਦੇ ਆ ਤੇ ਬਾਹਰਲੇ ਬੰਨੇ ਅੱਗ ਬਾਲ ਕੇ ਡਰਮ ਰੱਖੇ ਹੋਏ ਨੇ ਵੱਡੇ ਤੇਲ ਦੇ ਉਹਦੇ ਵਿੱਚ ਗਰਮ ਕਰਕੇ ਨੰਗੇ ਬਾਹਰ ਹੀ ਨਹਾਉਂਦੇ ਆ ਬਾਹਰ -15 ਡਿਗਰੀ ਟੈਂਪਰੇਚਰ ਬੁਰਾ ਹਾਲ ਬਣ ਕੇ ਦਿਹਾੜੇ ਆ ਤੇ ਇਉਂ ਲੱਗਦਾ ਜਿਵੇਂ ਆਪਣੀ ਲੈਂਡਫਿਲ ਡੈਲਟਾ ਦੇ ਵਿੱਚ ਉਹ ਜਹਾ ਏਰੀਆ ਜਿੱਥੇ ਉਹ ਬੈਠੇ ਆ ਬਚਾਰੇ ਹੁਣ ਇਹਨਾਂ ਨੂੰ ਵੇਖ ਕੇ ਡਰ ਲੱਗਦਾ ਹੈ ਇਹਨਾਂ ਨੂੰ ਵੇਖ ਕੇ ਇੰਨੂੰ ਲੱਗਦਾ ਵੀ ਇਦੋਂ ਕਹਾ ਕਿੱਥੇ ਡਾਕਟਰ ਇੱਕਾ ਬੰਦਾ 8000 ਆ ਕਿਸੇ ਨੂੰ ਉਲਟੀਆਂ ਨੇ ਕਿਸੇ ਨੂੰ ਕੁਛ ਆ ਕਿਸੇ ਨੂੰ ਕੁਛ ਆ ਤੇ ਝਾਕਦੇ ਆ ਵੀ ਕਦ ਸਾਨੂੰ ਖੁੱਲੇ ਕਾਸੀ ਟੁੱਟੇ ਹੋਏ ਜਿਹੜੇ ਨੇ ਜੁੱਤੀਆਂ ਨੇ ਕੱਪੜੇ ਫਟੇ ਹੋਏ ਨੇ ਵਿਚਾਰੇ ਕਾਦੇ ਤੁਰੇ ਹੋਏ ਸੋ ਕਿੱਥੇ ਤਾਂ ਇਹ ਲੋਕ ਨੇ ਜਿਹੜੇ ਦੁਖੀ ਨੇ ਕਿਤੇ ਉਹਨੇ ਜਿਹਨਾਂ ਨੂੰ ਇੱਥੇ ਹੁਣ ਜਸਟਨ ਟਰੂਡੋ ਕਹਿੰਦਾ ਮੇਰਾ ਸਰਦਾ ਹੀ ਨਹੀਂ ਸੱਦੇ ਬਿਨਾ ਤੇ ਉਹਨਾਂ ਨੂੰ ਆਉਂਦਿਆਂ ਨੂੰ 45 4500 ਡਾਲਰ ਚੜੇ ਮਹੀਨੇ ਠੋਕਦੇ ਐ ਤੇ 12 ਮਹੀਨੇ 50000 ਡਾਲਰ ਦੇ ਕੇ ਫਿਰ ਕਹਿੰਦੇ ਹੁਣ ਕਿਵੇਂ ਆਉਂ ਨਾ ਮਾਂ ਤਾਂ ਨਾ ਮੈਂ ਨਹੀਂ ਕੰਮ ਕਰਨਾ ਕੰਮ ਆਉਂਦਾ ਨਹੀਂ ਸਾਨੂੰ ਤਾਂ ਹੀ ਮੈਂ ਗੱਲ ਕੀਤੀ ਸੀ ਵੀ ਵਰਦੀ ਬਰਸ ਦੇ ਵਿੱਚ 6:30 ਵਜੇ ਮੁੰਡੇ 58 ਐਵੇਂ 173 ਤੋਂ ਪਾਈਪ ਇਕੱਠੇ ਕਰਨ ਲੱਗੇ ਹੋਏ ਸੀ ਇਓ ਹੁੰਦੇ ਨੇ ਕੰਮ ਜਿਨ੍ਹਾਂ ਨੇ ਕਰਨੇ ਨੇ ਲਿਆਓ ਸੱਦੋ ਪਰ ਕੰਮ ਤਾਂ ਉਹਨਾਂ ਕਰਾਓ ਆ ਪੁੱਛੋ ਬੈਲਗ੍ਰੇਡ ਵਾਲੀ ਅੱਜ ਫੋਟੋਆਂ ਤੁਸੀਂ ਵੇਖਿਓ ਸੀਬੀਸੀ ਤੇ ਕਿਤੇ ਪਾ ਕੇ ਕਾਲਜਾ ਮੂੰਹ ਨੂੰ ਆਉਂਦਾ ਵੀ ਯਾਰ ਫੇਰ ਵੀ ਇਨਸਾਨ ਨੇ ਆਹ ਜਿਹੜੀ ਦੁੱਖੀ ਗੱਲ ਹੈ ਪਿਛਲੇ ਦਿਨੀ ਸੱਤਾਂ ਦਿਨਾਂ ਚ 2000 ਬੰਦਾ ਰੈਸਕਿਊ ਕੀਤਾ ਮੈਡੀਟੇਰੀਅਨ ਸੀ ਦੇ ਵਿੱਚ ਇਟਲੀ ਨੇ ਤੇ ਸਪੇਨ ਨੇ ਰਲ ਕੇ ਜਿਹੜੇ ਲਿਵੀ ਆਲੇ ਪਾਸਿਓਂ ਬੜੇ ਰਬੜ ਦੀਆਂ ਕਿਸ਼ਤੀਆਂ ਦੇ ਵਿੱਚ ਸਾਰੇ ਸਬਸਾਰ ਆ ਸਾਰੇ ਅਫਰੀਕਨ ਨੇਸ਼ਨ ਦੇ ਬੰਦੇ ਸਿਆਹ ਰੰਗ ਦੇ ਬੰਦੇ ਜਿਹੜੇ ਪਤਾ ਨੀ ਕਿਹੜੇ ਦੇਸ਼ ਤੋਂ ਤੁਰਿਆ ਲਿਬੀਆ ਕਾਦਾ ਅਨਸਟੇਬਲ ਕੀਤਾ ਹੁਣ ਰੋਂਦੇ ਆ ਹੁਣ ਕੁਸ ਦਿੰਦੇ ਆ ਅੱਖਾਂ 'ਚ ਫਰਾਂਸ ਵਾਲੇ ਹੁਣ ਲੱਗੂ ਸੇਖ ਨਾ ਹੁਣ ਪਤਾ ਲੱਗੂ ਤੇ ਕੀ ਗਦਾਫੀ ਦੀ ਉਹਨਾਂ ਨੂੰ ਹਲਾ ਕੇ ਹੁਣ ਖੱਟਿਆ ਕੀ ਆ ਹੁਣ ਪਤਾ ਲੱਗੂ ਹੁਣ ਭੂਕ ਦੇ ਐਟਲੀ ਵਾਲੇ ਵੀ ਹੁਣ ਅਸੀਂ ਇਹਨਾਂ ਨੂੰ ਕੀ ਕਰੀਏ ਹਲੇ ਤਾਂ ਸਿੱਧੇ ਆਉਂਦੇ ਆ ਹਲੇ ਤਾਂ ਤੁਸੀਂ ਰੋਕਦੇ ਹੋ ਜਿੱਦਣ ਭੁੱਖਮਰੀ ਫੈਲੀ ਜਾਦ ਆਉਣਗੇ ਨਾ ਵਸ਼ਕਰਾਂ ਮਾਰਦੇ ਫਿਰ ਕਿਹਨੂੰ ਰੋਕੋਗੇ ਤੇ ਕੀ ਕਰੂੰ ਉਧਰ ਤਾਂ ਦੁਨੀਆ ਬੈਠੀ ਆ ਕਿੱਡਾ ਕੰਟੀਨੈਂਟ ਆ ਸਾਰੇ ਤੁਰਪੇ ਰਹਿਣਗੇ ਕਿੱਥੇ ਆ ਕੇ ਉਹ ਲੋਕ ਤਾਂ ਹੀ ਕਹੀਦਾ ਕਿ ਬਸ ਕੌਮਾਂ ਨੂੰ ਜਦਾ ਝਾੜ ਦਿੱਤਾ ਹੁਣ ਉੱਥੇ ਖਖੜੀਆਂ ਕਰੇਲੇ ਹੋਏ ਲੋਕ ਨੇ ਉਹਨਾਂ ਦੇ ਵਿੱਚ ਕਲੱਖ ਨਹੀਂ ਠੀਕ ਹੈ ਬਹੁਤ ਵਾਰ ਕਿਹਾ ਸੁਦਾਮ ਹਸੈਨ ਮਾਰਦਾ ਸੀ Kurds ਨੂੰ ਗੈਸ ਛੜਦਾ ਸੀ ਪਰ ਮਾਰਦਾ ਕੌਣ ਨਹੀਂ ਇਹ ਦੁਨੀਆ ਦੇ ਵਿੱਚ ਛੜਦਾ ਕੌਣ ਹੈ ਫੈਟਰਨ ਕਲੀਨਜ਼ਿੰਗ ਦੇ ਥੱਲੇ ਲੋਕਾਂ ਨੇ ਪੰਜਾਬ ਦੇ ਵਿੱਚ ਐਡਾ ਜ਼ੋਰ ਹੁਣ ਵਧਾਇਆ ਹੋਇਆ ਤੁਸੀਂ ਸਾਡੇ ਚੋਂ ਸਾਡੇ ਤੁਸੀਂ ਸਾਡੇ ਚੋਂ ਹਿੰਦੂ ਤਵਾ ਦਾ ਸਿਰ ਤੇ ਇੱਥੇ ਕਈ ਰਾਤ ਨੂੰ ਕਰਕੇ ਗਲਾ ਕਹਿੰਦੇ ਨੇ ਤੰਗੀ ਕੀ ਹੈ ਸਿੱਖ ਉੱਥੇ ਜੀ ਸੀਐਮ ਹੋਣਾ ਕਿਉਂ ਚਾਹੀਦਾ ਸੇਕ ਨਹੀਂ ਨਾ ਲੱਗਿਆ ਹੋਇਆ ਜਾਂ ਡਾਂਗਾ ਵਰਦੀਆਂ ਸੀ ਲਾਲ ਬੰਨ੍ਹ ਲਈ ਜਦ ਕੰਮ ਠੀਕ ਹੋ ਗਿਆ ਦਾੜੀ ਰੱਖ ਕੇ ਨੀਲੀ ਰੱਖ ਲਈ ਇੱਥੇ ਆ ਕੇ ਘਰੜ ਹੋ ਗਏ ਰਾਤ ਨੂੰ ਵੀਕੇ ਭਾਰਤ ਡਾਲਰਾਂ ਦੀ ਤੇ ਫਿਰ ਰੇਡੀਓ ਤੇ 20-20 ਮਿੰਟ 15-15 ਲਾਉਂਦੇ ਆ ਖੁੱਲਾ ਛੱਡਦੇ ਆ ਉਹਨਾਂ ਨੂੰ ਬੋਲੋ ਜਿਹੜਾ ਬੋਲਣਾ ਕਿਉਂਕਿ ਐਂਟੀ ਸਿੱਖ ਖਤਮ ਕਰਨ ਇੱਕ ਤਾਂ ਪਾਣੀ ਆ ਨਾ ਜਿਹੜਾ ਸਾਹਮਣੇ ਆ ਉਹ ਤਾਂ ਪਾਣੀ ਹੈ ਪਾਣੀ ਤਾਂ ਮੁੱਕ ਰਿਹਾ ਮੈਂ ਦੱਸਿਆ ਸੀ ਨਾ ਇੱਕ ਦਿਨ ਜਿਹੜੇ ਖੁੱਲੇ ਅਕਲੀਨਿੰਗ ਤੁਹਾਡੇ ਘਰਾਂ 'ਚ ਪੁੱਤ ਦਿੰਦੇ ਆ ਇਨਾਂ ਦਾ ਵੀ ਖੁਰਾਕ ਖੋਜ ਲੱਭੋ ਇਹ ਕਾ ਕਿੱਥੋਂ ਪੁੱਤ ਲਿਆ ਕੇ ਦਿੰਦੇ ਆ ਦਿਓ ਅਕਲਾਂ ਉੱਥੇ ਲੋਕਾਂ ਨੂੰ ਸਨੇਹਾ ਦਿਓ ਜੇ ਪੁੱਤ ਕਾਬਲ ਨਹੀਂ ਉਹਦੇ ਨਾਲੋਂ ਕਿਸੇ ਦਾ ਜਵਾਕ ਰਿਸ਼ਤੇਦਾਰੀ ਦੇ ਵਿੱਚੋਂ ਘਰੇ ਲਿਆ ਕੇ ਪਰ ਕਿਸੇ ਦਾ ਪਾਲੋਗੇ ਤੁਹਾਨੂੰ ਪਤਾ ਹੀ ਨਹੀਂ ਉਹਦਾ origin ਕਿੱਥੇ ਕਿਉਂਕਿ ਨਾ ਤੁਹਾਨੂੰ ਪਾਰਦਰਸ਼ੀਆ ਨਾ ਕੋਈ ਉੱਥੇ ਅਕਾਉਂਟੇਬਿਲਟੀ ਆ ਨਾ ਕੋਈ ਕਹਾਣੀ ਹੈ ਜਦ ਪਤਾ ਆਪਣੇ ਆਲਾ ਕੰਮ ਲਖਤੇ ਜ਼ਿਕਰ ਕੰਮ ਠੀਕ ਨਹੀਂ ਜਿਹਨੇ ਇਨਸਾਨ ਵਧਾਉਣੀ ਆਗਾਹਾਂ ਦੇਖੋ ਇਹ ਵੀ ਜ਼ੁਲਮ ਹੈ ਹੁਣ ਪੁੱਤ ਚ ਫੇਰ ਫੇਰ ਹੈ ਘਰੇ ਬਹਿ ਕੇ ਦਾਦੀਆਂ ਪੋਤੇ ਗੱਲਾਂ ਮਾਵਾ ਪਿਓ ਕਰਦੇ ਆ ਵੀ ਹੁਣ ਹੀਲਾ ਕੀ ਕਰੀਏ ਜੇ ਕਿਤੇ ਨੂਚ ਨੁਸਕੁੰਦਾ ਤੀਜੇ ਦਿਨ ਰੋਲਾ ਪਾ ਲੈਣਾ ਸੀ ਅਸੀਂ ਤਾਂ ਭਾਈ ਬੇਲ ਗਾਹਾਂ ਵਧਾਉਣੀ ਐ ਅਸਤੇ ਫਿਰ ਹੋਰ ਹੀਲਾ ਕਰਦੇ ਆ ਕੋਈ ਉਹ ਢਿੱਡ ਚ ਮੁੱਕੀਆਂ ਦੇ ਦੇ ਕੇ ਪੇਟੀਆਂ ਵਾਲੇ ਢਕੇ ਰੋਂਦੀਆਂ ਵੀ ਹੁਣ ਇੱਕ ਹੋਰ ਲੈਉਣਗੇ ਵਿਹੋਰ ਜਿੱਥੇ ਪੁੱਤ ਡਾਊਨ ਐ ਉੱਥੇ ਫਿਰ ਕਹਿੰਦੇ ਨੇ ਚੱਲੀਏ ਨੇੜੇ ਕਲੀਨਿਕ ਤੇ ਕਰੀ ਪਤਾ ਟੈਸਟੂਬ ਦਾ ਕਿਉਂ ਕਰਦੇ ਆ ਜਿਵੇਂ ਬੋਰ ਦਾ ਸਮਾਨ ਖਰੀਦਣ ਜਾਣਾ ਹੁੰਦਾ ਉਥੇ ਫਿਰ ਕੀ ਕਰਦੇ ਆ ਜਿਹੜਾ ਘਰੇ ਕੁਦਰਤੀ ਤਰੀਕੇ ਦੇ ਨਾਲ ਵੇਲ ਨੀ ਵਧਾ ਰਿਹਾ ਉੱਥੇ ਜਾ ਕੇ ਪੜ ਨਹੀਂ ਪੱਟਣ ਲੱਗਿਆ ਉੱਥੇ ਤੁਹਾਨੂੰ ਪਤਾ ਹੀ ਨਹੀਂ ਵੇਲ ਕਿਹਦੀ ਵਧਣੀਆਂ ਘਰੇ ਆ ਕੇ ਸਿਆਣੇ ਹੋ ਜਾਓ ਪਿਛਲੇ ਵਾਲਿਆਂ ਨੂੰ ਦੱਸੋ ਕੁਝ ਜਿੱਪੀ ਗਰੇਵਾਲ ਦਾ ਗੀਤ ਸੁਣੋ ਪ੍ਰਭਜੋਤ ਸਿੰਘ ਜੀ ਤੁਸੀਂ ਏਰ ਤੇ ਆਨਲਾਈਨ ਨੰਬਰ 2 ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਫਤੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਸਿੰਘ ਸਾਹਿਬ ਜਿਤਾ ਗੱਲਬਾਤ ਕਰ ਰਹੇ ਸੀ ਪਹਿਲਾਂ ਜਿਹੜੀ ਚਿੱਠੀ ਪੜ੍ਹੀ ਆਪਣੇ ਕੋਲ ਬਾਈਕੋ ਦੇਵੀ ਵਾਹ ਕਮਾਲ ਲਿਖੀ ਆ ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜੀ ਤੇ ਜਿਹੜਾ ਆਪਾਂ ਰਿਪੋਰਟੀਆਂ ਵਾਲੀ ਗੱਲ ਕਰਦੇ ਸੀ ਦੇਖੋ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਵੀ ਜਿਹੜੇ ਰਿਪੋਰਟੀ ਆ ਉਹ ਹਾਲਾਤ ਕਰੀਏਟ ਕਰਦੇ ਆ ਕੋਈ ਆਪਣੀ ਚੋਇਸ ਨਾ ਨਹੀਂ ਬਣਦਾ ਜਿੱਦਾਂ ਵੈਨਕੂਵਰ ਤੇ ਜਿਹੜੀ ਆਪਣੀ ਕੈਨੇਡਾ ਤੇ ਜਿਹੜੀ ਸਪੈਸ਼ਲੀ ਪ੍ਰੋਬਲਮ ਹੈਗੀ ਰਿਫਿਊਜ਼ੀਆਂ ਦੀ ਬਿਲਕੁਲ ਇਸ ਸਮੱਸਿਆ ਹੁਣ ਗੱਲ ਇਹ ਆ ਕਿ ਉਹ ਰਿਫਿਊਜ਼ ਆਏ ਆ ਸਮੱਸਿਆ ਇਹ ਨਹੀਂ ਹੈਗੀ ਸਮੱਸਿਆ ਇਹ ਆ ਉਹਨਾਂ ਨੂੰ ਹੈਂਡਲ ਕਿਸ ਤਰ੍ਹਾਂ ਕੀਤਾ ਜਾ ਰਿਹਾ ਜੇ ਤਾਂ ਸਰਕਾਰ ਵਾਕਿਆ ਹੀ ਚਾਹੁੰਦੀ ਆ ਉਹਨਾਂ ਦੀ ਹੈਲਪ ਕਰਨੀ ਤਾਂ ਫੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਵੀ ਦੁਜਾ ਕਿਨਾਂ ਆ ਗਿਆ ਉਹਨਾਂ ਨੂੰ ਅਕਮੋਡੇਸ਼ਨ ਦੇ ਦਿੱਤੀ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਹੁਣ ਅਸੀਂ ਵੀ ਜੇ ਜਾ ਕੇ ਨਾ ਇੱਥੇ ਦੇਖਦੇ ਸੀ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਉਦੋਂ ਬਹੁਤ ਐਨ ਇੰਪਲੋਇਮੈਂਟ ਹੁੰਦੀ ਸੀ ਤਾਂ ਉਦੋਂ ਜਿਹੜੇ ਨਹੀਂ ਕੰਮ ਕਰਦੇ ਸੀ ਉਹਨਾਂ ਨੂੰ ਇਹਦਾ ਕੀਤਾ ਜਾਂਦਾ ਸੀ ਇੱਕ ਪੇਪਰ ਦਿੱਤਾ ਜਾਂਦਾ ਸੀ ਉਹਦੇ ਵਿੱਚ ਕਾਲਮ ਹੁੰਦੇ ਸੀ ਦਿਹਾੜੀ ਵਿੱਚ 20 25 ਸਹੀ ਜਾ ਕੇ ਐਪਲੀਕੇਸ਼ਨਾਂ ਡ੍ਰੌਪ ਕਰਕੇ ਉੱਥੋਂ ਤੁਸੀਂ ਉਹਨਾਂ ਨੂੰ ਲਿਖ ਕੇ ਦਿੰਨੇ ਆ ਪਿਆ ਮੈਨੂੰ ਕੰਮ ਨਹੀਂ ਮਿਲਿਆ ਇਸ ਕਰਕੇ ਮੈਨੂੰ ਜਿਹੜੀਆਂ ਐਨ ਦਿੱਤੀ ਜਾਵੇ ਜਿੱਦਾਂ ਅਮਰੀਕਾ ਦੇ ਵਿੱਚ ਮੈਂ ਰਹਿ ਕੇ ਆਇਆ ਹੈਗਾ ਉੱਥੇ ਹੁੰਦਾ ਸੀ ਜੇ ਪੈਸੇ ਦਿੱਤੇ ਜਾਂਦੇ ਸੀ ਤਾਂ ਪੈਸੇ ਨਹੀਂ ਦਿੱਤੇ ਜਾਂਦੇ ਸੀ ਫੂਡ ਸਟੈਂਪਾਂ ਦਿੱਤੀਆਂ ਜਾਂਦੀਆਂ ਸੀ ਉਹਦੇ ਵੱਟੇ ਵਿੱਚ ਉਹ ਖਾਣਾਕ ਮਿਲਦੀ ਸੀ ਖਾਣ ਨੂੰ ਹੁਣ ਜਦੋਂ ਅਸੀਂ ਕਿਸੇ ਦੇ ਜੇਬ 'ਚ ਜਿੱਦਾਂ ਪੈਸੇ ਪਾ ਦਿੰਨੇ ਆ ਗ੍ਰੈਂਡ ਬਾਗ ਜਿਹੜਾ ਰਹਿائش ਆ ਫ੍ਰੀ ਦਿੱਤੀ ਹੋਆ ਤੇ ਭਾਵੇਂ ਉਹ ਮੈਨੂੰ ਵੀ ਦੇਣੀ ਸ਼ੁਰੂ ਕਰ ਤੇ ਉਹ ਦਰਜਾਨਾ ਇਹੋ ਹੀ ਆ ਕਿ ਮੈਂ ਵੀ ਜਾ ਕੇ ਨਾ ਗੱਲ ਗਾਰਜਾ ਜਾਣਾ ਮੈਂ ਕੰਮ ਕਰਕੇ ਤਾਂ ਮੈਨੂੰ ਵੀ ਉਹ ਜਾ ਕੇ ਨਾ ਆਰਾਮ ਦੀਆਂ ਖਾਣ ਦੀ ਆਦਤ ਪੈ ਜਾਣੀ ਆ। ਤੋਂ ਸਿਸਟਮ ਨੂੰ ਜੇ ਆਪਾਂ ਸਦਾਰੀਏ ਤਾਂ ਬਹੁਤ ਵਧੀਆ ਗੱਲ ਆ। ਕਮਜ਼ੋਰੀਆਂ ਸਾਡੇ ਹੁਣ ਰਪਿਉ ਨੂੰ ਇਹ ਕਹਿ ਕੇ ਵੀ ਇਹ ਇੱਥੇ ਸਮੱਸਿਆ ਹੈਗੀ ਐ ਇਸ ਕਰਕੇ ਉਹਨਾਂ ਦੀ ਹੈਲਪ ਨਹੀਂ ਕਰਨੀ ਇਹ ਮਾੜੀ ਗੱਲ ਆ। ਇਸ ਗੱਲ ਤੋਂ ਆਪਾਂ ਨੂੰ ਗਰੇਜ਼ ਕਰਨਾ ਚਾਹੀਦਾ। ਸਮੱਸਿਆ ਦਾ ਹੱਲ ਕਰਨਾ ਚਾਹੀਦਾ। ਬਾਕੀ ਤੁਸੀਂ ਮੌਤ ਦੀ ਗੱਲ ਕੀਤੀ ਸੀ। ਮੈਂ ਤਾਂ ਇਹੋ ਹੀ ਸੋਚਦਾ ਜੀ ਕਿ ਜਿਹੜੀ ਆ ਨਾ ਕਿਸੇ ਵੀ ਗੱਲ ਦਾ ਸਮੱਸਿਆ ਜਦੋਂ ਆਪਾਂ ਅਕਸੈਪਟ ਕਰ ਲੈਂਦੇ ਪਿਆ ਜਿਹੜੀ ਆ ਇਹਦਾ ਤੇ ਜਿਹੜਾ ਮੌਤ ਨੂੰ ਮੰਨਣਾ ਬਹੁਤ ਸੌਖਾ ਹੋ ਜਾਂਦਾ ਜੇ ਆਪਾਂ ਇਹ ਜੀਣਾ ਆ ਤੇ ਫਿਰ ਮੌਤ ਤੋਂ ਡਰ ਲੱਗਦਾ ਮੈਨੂੰ ਤਾਂ ਇਹੋ ਅਨੁਭਵ ਹੈਗਾ ਜੀ ਜਦੋਂ ਦੁਜਾ ਮੰਨ ਲਿਆ ਕਿ ਮਰਨਾ ਤਾਂ ਇੱਕ ਦਿਨ ਹੈਗਾ ਹੀ ਆ ਜਦੋਂ ਇਸ ਗੱਲ ਨੂੰ ਆਪਾਂ ਦਿਲ 'ਚ ਬਿਠਾ ਲਿਆ ਉਹਦੀ ਗੱਲ ਕਰਾਂਗੇ ਜੀ 1 ਤੋਂ 2 ਵਜੇ ਤੱਕ ਫੇਰ ਆਇਓ ਫੇਰ ਸਵਾਰ ਕੇ ਕਰਾਂਗੇ ਗੱਲ ਥੈਂਕ ਯੂ ਜੀ ਜੀ ਧੰਨਵਾਦ ਜੀ ਸਤਿ ਅਵਤਾਰ ਸਿੰਘ ਜੀ ਲਾਈਨ ਨੰਬਰ 4 ਹਾਂਜੀ ਕੋਹਾਗੁਰ ਜੀ ਖਾਲਸਾ ਵੈਰ ਫਰਦਾ ਜੀ ਕੋਹਾਗੁਰ ਖਾਲਸਾ ਵੈਰ ਜੀ ਕੀ ਜੀ ਪੰਜਾਬ ਦੇ ਪਾਣੀ ਦੇ ਬਾਈਲ ਪੈ ਲੈਸ਼ਰ ਦਾ ਜਤੋਂ ਵਿੱਚ ਮਦਾ ਲੜਕੀ ਜਨ ਖਰਾਬ ਹੋਇਆ ਫਰਦਾ ਆਇਆ ਪਾਣੀਆ ਵਿੱਚ ਪਸੇ ਫਾਨਾ ਠੋਲਦਾ ਹੈ ਬਰਮ ਕੀ ਮੈਂ ਤੇ ਮੇਰੇ ਚਾਹ ਨਾਲ ਚਾਹ ਪੀਂਦਾ ਸੀ ਇਹ ਜਾਂ ਉਹ ਸਾਡੇ ਸੂਰਜਾਲ ਪਾਤਾ ਇਹ ਜੇ 22 24 9:00 ਦੇ ਪੀਡੀਐ ਫੇਰ ਮਾਰਨਗੇ ਮੈਨੂੰ ਚਿੰਤਾ ਲੱਗੀ ਵੀ ਅਸੀਂ ਹੋ ਕੀ ਰਿਹਾ ਤੇ ਅਸੀਂ ਕਿਹੜੇ ਪਾਸੇ ਜਾਈਏ ਅਸੀਂ ਆ ਪਉਣੀ ਕੋਈ ਸਾਡੇ ਸੁਣਦਾ ਹੀ ਨਹੀਂ ਇਹ ਬਾਤੇ ਲੋਕੋ ਸੋਚੋ ਬੇਸਾਨਾ ਕੀ ਹੋ ਰਿਹਾ ਇਹ ਨੂੰ ਕੀ ਨਾ ਕਰਦੇ ਉਸੇ ਵਾਹਿਗੁਰੂ ਹੀ ਹਰ ਗੱਲ ਵਿੱਚ ਹੋਮੇ ਤੇ ਹੀ ਹੋਣੇ ਆ ਵੀ ਜੇ ਹੁੰਦਾ ਕੋਈ ਰੋੜਾ ਪਾਪਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਚਾਹ ਛਕੋ ਚੜ੍ਹਦੀ ਕਲਾ ਚ ਰਹੋ ਪੀਰ ਸਿੰਘ ਜੀ ਤੁਸੀਂ ਇਰਤੇ ਹੋ ਅਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਜਿਹੜਾ ਰਫਿਜੀਏ ਦਾ ਆਪਣੀ ਗੱਲ ਆ ਤੇ ਉਹਨਾਂ ਨੂੰ ਇੱਥੇ ਲਿਆਂਦਾ ਜਾਂਦਾ ਤਾਂ ਉਹੋ ਲਿਆ ਕੇ ਉਹਨਾਂ ਨੂੰ ਅਹ ਕਾਫੀ ਜਾਨੀ ਕਿ ਪੈਸਾ ਕਾਰ ਬੈਠਣ ਦੇ ਜਾਂਦੇ ਆ ਜੇ ਉਹਨਾਂ ਦੇ ਬੱਚੇ ਹੈਗੇ ਆ ਪਤਾ ਅਲਾਨਸ ਕਈ ਕੁਝ ਉਹਨਾਂ ਦੀਆਂ ਮੈਡੀਕਲ ਫ੍ਰੀ ਪਤਾ ਨਹੀਂ ਕਿੰਨਾ ਕੁਝ ਉਹਨਾਂ ਨੂੰ ਫ੍ਰੀ ਦਿੱਤਾ ਜਾਂਦਾ ਪਰ ਜਿਹੜੇ ਅਸਲੀ ਰਫਿਜੀ ਹੈਗੇ ਆ ਉਹ ਤਾਂ ਇੱਕ ਵੀ ਨਹੀਂ ਇੱਥੇ ਪਹੁੰਚਿਆ ਉਹ ਤਾਂ ਵਿਚਾਰੇ ਬੇੜੀਆਂ ਰਾਹੀਂ ਬੋਟਾ ਰਾਹੀਂ ਉਹ ਉਸਮੰਤਰਾ ਦੇ ਵਿੱਚ ਡੁੱਬ-ਡੁੱਬ ਕੇ ਤੇ ਆਪਣੇ ਕਿਸੇ ਕਿਸੇ ਕਿਨਾਰੇ ਲੱਗ ਗਏ ਉਹ ਅਸਲੀ ਰਫੂਜੀ ਹੈਗੇ ਦੇਸ਼ਾਂ ਦੀ ਵੱਡੇ ਤੁਸੀਂ ਕਹਿੰਦੇ ਤਰਨਾਰ ਦੇਸ਼ ਹੈਗੇ ਆ ਉੱਥੋਂ ਸ਼ਿਪਾਂ ਰਾਹੀਂ ਉੱਥੋਂ ਆਪਣੇ ਹਵਾਈ ਆ ਜਾ ਸਿੱਧੀ ਚੱਕ ਕੇ ਲਿਆਉਂਦੇ ਆ ਉਹਨਾਂ ਨੇ ਮਾਰਕਿੰਗ ਕੀਤੀ ਹੁੰਦੀ ਉਹਨਾਂ ਦੀ ਉਹ ਪਹਿਲਾਂ ਹੀ ਆਪਣੇ ਨਾਲ ਲੋੜਿਆਂ ਦਾ ਪੈਸਾ ਲੈ ਕੇ ਇੱਥੇ ਆ ਪਰ ਇਹ ਉਹਨਾਂ ਮਾਇਆ ਨੂੰ ਉਸ ਪੈਸੇ ਨੂੰ ਨਹੀਂ ਵਰਤਣ ਦਿੰਦੇ ਆਪਣਾ ਹੋਰ ਕੋਲੋਂ ਦਿੰਦੇ ਉਹਨਾਂ ਨੂੰ ਤੁਸੀਂ ਦੇਖੋ ਇੱਥੇ ਰਿਫਿਊਜੀ ਜਿਹੜੇ ਆਏ ਆ ਉਹਨਾਂ ਦੇ ਬਾਰੇ ਵਿੱਚ ਆਮ ਜਨਤਾ ਦੇ ਕੋਲ ਪੁੱਛੋ ਕਿ ਉਹ ਜਿਹੜੀਆਂ ਕਿਉਂਕਿ ਉੱਥੇ ਤਾਂ ਟੈਕਸੀਆਂ ਵੀ ਮਰਜ਼ੀ ਚੱਲਦੀਆਂ ਹੈਗੀਆਂ ਉਹ ਇੱਥੇ ਆਉਂਦੇ ਆ ਤਾਂ ਉਹ ਛੋਟੀ ਗੱਾਰ ਲੈਣੀ ਨਹੀਂ ਪਸੰਦ ਕਰਦੇ ਵੱਡੀਆਂ ਗੱਾਰਾਂ ਲੈ ਕੇ ਫਿਰਦੇ ਆ ਸੋ ਉਹਨਾਂ ਕੰਮ ਕਰਨ ਦੀ ਜ਼ਰੂਰਤ ਨਹੀਂ ਇਹਨਾਂ ਦੇਸ਼ਾਂ ਨੂੰ ਪਤਾ ਹੁੰਦਾ ਆ ਕਿ ਇਹਨਾਂ ਕੋਲ ਬਹੁਤ ਮਾਇਆ ਹੈਗੀ ਆ ਪਰ ਇਹ ਉਹਨਾਂ ਤੋਂ ਲੈਂਦੇ ਨਹੀਂ 70s ਦੇ ਵਿੱਚ ਜਦੋਂ ਯੂਗਾਂਡਾ ਤੋਂ ਨਿਕਲੇ ਹੈਗੇ ਪਾਰਟੀ ਲੋਗ ਉਹਨਾਂ ਨੂੰ ਵੀ ਇਦਾਂ ਲਿਆ ਕੇ ਉਹਨਾਂ ਨੇ ਇੰਗਲੈਂਡ ਵਿੱਚ ਜਦੋਂ ਬਠਾਲਿਆ ਤਾਂ ਉੱਥੇ ਆ ਕੇ ਬੜਬੜੀਆਂ ਉਹਨਾਂ ਨੂੰ ਹੋਟਲਾਂ ਮੋਟਲਾਂ ਵਿੱਚ ਰੱਖਿਆ ਤਾਂ ਥੋੜੇ ਚਿਰ ਬਾਅਦ ਹੀ ਜਦੋਂ ਕਿਤੇ ਘਰ ਕੋਈ ਲੱਗਣਾ ਕੈਸ਼ ਹੀ ਖਰੀਦ ਲੈਣਾ ਫਿਰ ਲੋਕਾਂ ਨੇ মিডিਏ ਨੇ ਰੌਲਾ ਪਾਇਆ মিডিਏ ਦਾ ਬਹੁਤ ਵੱਡਾ ਹੱਥ ਹੁੰਦਾ ਇਹਨਾਂ ਚੀਜ਼ਾਂ ਦੇ ਪਿੱਛੇ ਤੁਸੀਂ ਦੇਖਦੇ ਹੋ ਸਮੁੰਦਰ ਦੇ ਵਿੱਚ ਬੇੜੀ ਡੁੱਬੀ ਹੈਗੀ ਆ ਡੁੱਬਣ ਤੋਂ ਬਾਅਦ ਉਸ ਦੇ ਵਿੱਚ ਇੱਕ ਮੁੰਡਾ ਨਿਕਲ ਕੇ ਬਾਹਰ ਲਿਆਂਦਾ ਜਾਂਦਾ ਤਾਂ ਉਤੋਂ ਹੀ ਫੋਟੋ ਖਿੱਚ ਕੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਜਦ ਕਿ ਇਹਨਾਂ ਨੂੰ ਪੁੱਛਿਆ ਜਾਵੇ ਬੇੜੀ ਕਿਸੇ ਨੇ ਦੱਸ ਕੇ ਹੋਣ ਠੈਲੀ ਸੀ ਜਾਂ ਉਹਨਾਂ ਦੇ ਵਿੱਚ ਜਿਹੜੇ ਡੁੱਬੇ ਬੰਦੇ ਉਹ ਕਿਸੇ ਨੇ ਦੱਸੇ ਪੁੱਛੇ ਸੀ ਉਹ ਜਿਹੜੀ ਬੱਚੇ ਦੀ ਬਲਾਈ ਇੱਕ ਲੀਬੀਆ ਦੇ ਵਿੱਚੋਂ ਔਰਤ ਦੀ ਬਲਾਈ ਕਦੇ ਕੁਵੇਤ ਵਿੱਚੋਂ ਇੱਕ ਅੰਬੈਸਟਰ ਦੀ ਕੁੜੀ ਦੀ ਬਣਾਈ ਇਹ ਮੀਡੀਆ ਨੇ ਬਹੁਤ ਵੱਡੇ ਸਟੰਟ ਹੈਗੇ ਆ ਇਰਾਕ ਦੇ ਵਿੱਚੋਂ ਇੱਕ ਕੁੜੀ ਦੀ ਹਸਪੀਟਲ ਦੇ ਵਿੱਚੋਂ ਬਣਾਈ ਸੋ ਇਹ ਲੋਕਾਂ ਨੂੰ ਮਗਰ ਲਾਉਣ ਦੇ ਝਾਂਸੇ ਹੁੰਦੇ ਆ ਜਦੋਂ ਇਕਵਾ ਡੌਰਚੋਂ ਕੱਢੇ ਆ ਕੋਲੰਬੀਆ ਜੋ ਕੱਢੇ ਆ ਉਹਨਾਂ ਲੋਕਾਂ ਲਈ ਆ ਕਿ ਕੈਨੇਡਾ ਅਸ਼ੀਆ ਇਹ ਬੜੀਆਂ ਵੱਡੀਆਂ ਕਹਾਣੀਆਂ ਹੈਗੀਆਂ ਪਰ ਜਿਹੜਾ ਹੁਣ ਇਹ ਦਾ ਗੱਲ ਹੈਗੀ ਆ ਜਰਮਨੀ ਨੇ ਜਦੋਂ ਰਫਿਊਜੀ ਲਏ ਹੈਗੇ ਪਹਿਲੀਆਂ 70s ਦੇ ਵਿੱਚ ਉਹਨਾਂ ਨੇ ਲੱਗਦੇ ਹੀ ਉਹਨਾਂ ਨੂੰ ਤੰਬੂ ਦੇ ਉੱਤੇ ਦੇ ਨਾਲ ਲੱਗਦੇ ਹੀ ਉਹਨਾਂ ਨੂੰ ਕਾਰਡ ਦੇ ਉੱਤੇ ਤਾਂ ਕਿਹਾ ਜੀ ਕੰਮ ਕਰੋ ਜਾ ਕੇ ਪੈਸੇ ਨਹੀਂ ਅਸੀਂ ਦੇਣੇ ਕੰਮ ਕਰੋ ਕਮਾਓ ਤੇ ਆਪਣਾ ਖਾਓ ਕੋ জবਾਂ ਵੀ ਦੇਣੇ ਆ ਹੁਣ ਕੈਨੇਡਾ ਦੇ ਵਿੱਚ ਲਿਆ ਕੇ ਇਹਨਾਂ ਰਫਿਊਜੀਆ ਨੂੰ ਇਹਨਾਂ ਦੇ ਕੋਲੋਂ ਕੰਮ ਨਹੀਂ ਕਰਾਇਆ ਜਾ ਰਿਹਾ ਮੈਨੂੰ ਨਹੀਂ ਸਮਝ ਆਉਂਦੀ ਕਿਹੜੀ ਗੱਲ ਤੋਂ ਜੇ ਉਹਨਾਂ ਨੂੰ ਨਹੀਂ ਆਉਂਦਾ ਉਹਨਾਂ ਨੂੰ ਕੋਈ ਐਸੇ ਕੰਮ ਜਿਹੜੇ ਆ ਜਿਹੜੇ ਲੇਬਰ ਜਿਹੜੀ ਕਿ ਸਕਿਲਡ ਲੇਬਰ ਨਹੀਂ ਉਹਦੇ ਥੱਲੇ ਕਰ ਸਕਦੇ ਆ ਜੇ ਹੋਰ ਦੇਸ਼ਾਂ ਤੋਂ ਕੇ ਕੰਮ ਕਰਾਇਆ ਜਾਂਦਾ ਖੇਤਾਂ ਵਿੱਚ ਕਰਾਇਆ ਜਾਂਦਾ ਕਈ ਨਕਲੋਂ ਕਿਉਂ ਨਹੀਂ ਜੇਕਰ ਆਪਾਂ ਇਹ ਲੱਲਨੇ ਆ ਤੇ ਅਸੀਂ ਬ੍ਰਿਟਨ ਦੇ ਵਿੱਚ ਦੇਖਿਆ ਹੈਗਾ ਆ ਤੇ ਜਿਹੜੇ ਲੋਕ ਵੈਲਫੇਅਰ ਤੇ ਬੈਠੇ ਸੀ ਉਹਨਾਂ ਨੂੰ ਮੁੜ ਕੇ ਕੰਮਾਂ 'ਚ ਪਾਉਣ ਦੇ ਲਈ ਉਹਨਾਂ ਨੇ ਕੀ ਹੱਥ ਘੰਡੇ ਵਰਤੇ ਉਹਨਾਂ ਨੂੰ ਇੱਕ ਖਾਸ ਕਿਸਮ ਦੀਆਂ ਵੈਸਟ ਪਾਲਟੀਆਂ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਆਮ ਉਹਨਾਂ ਦੇ ਆਲੇ ਦੁਆਲੇ ਵੈਲਫੇਅਰ ਦੇ ਜਾਓ ਜਾਂ ਕਿਤੇ ਹੋਰ ਥਾਂ ਤੇ ਜਾਓ ਜਿੱਥੋਂ ਜਾ ਕੇ ਤੁਸੀਂ ਸਫਾਈ ਕਰੋ ਉਹਨਾਂ ਨੂੰ ਸ਼ਰਮ ਆਉਣ ਲੱਗ ਪਈ ਕਿ ਹੈ ਅਸੀਂ ਜੇ ਸਫਾਈ ਕਰਕੇ 8 ਘੰਟੇ ਬਾਹਰ ਹੀ ਰਹਿਣਾ ਤੇ ਪੈਸੇ ਵੇ ਮਿਲਣੇ ਆ ਉਸ ਚੋਂ ਪਰ ਕੰਮਾਂ ਜਾਣ ਲੱਗ ਪਏ ਸੋ ਇਹ ਚੀਜ਼ ਹੈਗੀ ਹੈ ਇੱਥੇ ਇਹਨਾਂ ਨੂੰ ਸਰਕਾਰ ਨੂੰ ਸਾਨੂੰ ਥੋੜਾ ਜਿਆਦਾ ਯੋਰ ਪਾਉਣਾ ਚਾਹੀਦਾ ਵੀ ਇਹਨਾਂ ਲੋਕਾਂ ਨੂੰ ਤੁਸੀਂ ਕੰਮ ਤੇ ਲਾਓ ਤੁਸੀਂ ਇਹਨਾਂ ਵਿਹੜੜਾਂ ਨੂੰ ਨਾ ਇਸ ਪਾਸੇ ਲਾਓ ਜਦੋਂ ਵਿਹਲਾ ਬੰਦਾ ਹੋ ਜਾਂਦਾ ਉਹਨੂੰ ਫੇਰ ਸ਼ਰਾਰਤਾਂ ਬਹੁਤ ਸਿਰ ਲਾ ਪੈਂਦੀਆਂ ਉਹ ਫੇਰ ਆਪਣੀਆਂ ਸ਼ਰਾਰਤਾਂ ਦੇ ਨਾਲ ਦੂਸਰਿਆਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਤੇ ਫੇਰ ਨਾਮ ਬਦਨਾਮ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਵਾਸਤੇ ਮੈਂ ਸੋਚਦਾ ਹੈਗਾ ਵੀ ਇਹ ਵੈਲਫੇਅਰ ਸਿਸਟਮ ਜਿਹੜਾ ਹੈਗਾ ਆ ਜਸਟਨ ਟਰੀਡੋ ਹੋਣਾ ਨੂੰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਮਜਬੂਰ ਕਰਨਾ ਚਾਹੀਦਾ ਤੇ ਇਹਨਾਂ ਨੂੰ ਜਿੱਦਾਂ ਦਾ ਕੰਮ ਹੈਗਾ ਜੇ ਨਹੀਂ ਤੁਸੀਂ ਇਹਨਾਂ ਨੂੰ ਇੰਨੇ ਪੈਸੇ ਦੇਣੀ ਦੇਣੀ ਇਹਨਾਂ ਨੂੰ ਕੋਈ ਇਹ ਫੈਕਟਰੀ ਦੇ ਵਿੱਚ ਭੇਜੋ ਜਿੱਥੇ ਇਹਨਾਂ ਨੂੰ ਸਖਲਾਈ ਮਿਲੇ ਕਿ ਉਹਨਾਂ ਫੈਕਟਰੀ ਵਾਲਿਆਂ ਨੂੰ ਕਹੋ ਕਿ ਤੁਸੀਂ ਕੁਝ ਨਹੀਂ ਦੇਣਾ ਅਸੀਂ ਦੇ ਰਹੇ ਹਾਂ ਪਰ ਇਹਨਾਂ ਨੂੰ ਦਿਓ ਤੇ ਮੁੜ ਕੇ ਕੰਮ ਤੇ ਲਾਓ ਪਰ ਆਹ ਕੰਮ ਨਾ ਕਰੋ ਕਿ ਜਿਹੜਾ ਤੁਸੀਂ ਇੱਕ ਸਵੇਰ ਤੋਂ ਇੱਕ ਇਨਸਾਨ ਉੱਠਿਆ ਹੈ ਉਹ ਜਾ ਕੇ ਪੂਰੀ ਮਿਹਨਤ ਕਰ ਰਿਹਾ ਉਹ ਆਪਣਾ ਤਨਮਨ ਤੋੜ ਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਰਿਹਾ ਤੇ ਉਹ ਪੈਸੇ ਇਹਨਾਂ ਲੋਕਾਂ ਘਟਕ ਮਾਰਿਆ ਉਹਨਾਂ ਦੇ ਦਿਗਾਂ ਦੇ ਵਿੱਚ ਨਫ਼ਰਤ ਨੂੰ ਇਹਨਾਂ ਲਈ ਫਾਇਦਾ ਪਹਲਾਓ ਸੋ ਇਹਨਾਂ ਨੂੰ ਮੁੜ ਕੇ ਕੰਮ ਤੇ ਲਾਓ ਤਾਂ ਕਿ ਜੇ ਲੋਕ ਆਪਣਾ ਤੇ ਇਸ ਦੇਖਤਾ ਬਰਾ ਕਰ ਸਕਣ ਤੁਹਾਡਾ ਬਹੁਤ ਬਹੁਤ ਸਨਹਿਾ ਦੀਆਂ ਐਪਲੀਕੇਸ਼ਨਾਂ ਮੁੰਡਿਆਂ ਨੇ ਜਿਹੜੇ ਰਿਫਿਊਜੀ ਇੱਥੇ ਆਏ 2013 ਦੀਆਂ ਉਹਨਾਂ ਨੇ ਦੇ ਲਈ ਪਹਿਲਾਂ 4-5 ਸਾਲ ਵੇਟ ਰਿਫਿਊਜੀ ਸਟੇਟਸ ਤੇ ਹੀ ਕੰਮ ਕਰਨਾ ਹੈ ਐਕਸੈਪਟ ਹੋ ਗਿਆ ਉਹਦੇ ਬਾਅਦ ਪੀਆਰ ਲਈ ਹੁਣ 3-3 ਸਾਲ ਹੋ ਗਏ ਹਲੇ ਤੱਕ ਉਹਨਾਂ ਦੀ ਪੀਆਰ ਨਹੀਂ ਹੋਈ ਐਕਸੈਪਟ ਕਰ ਲਏ ਰਿਫਿਊਜੀ 2013 ਦੀਆਂ ਐਪਲੀਕੇਸ਼ਨਸ ਨੇ ਇੱਕ ਜਿਹੜਾ ਬਣਿਆ ਬਣਾਇਆ ਹੀ ਔਰ ਇਹ ਇਹ ਵੀ ਗੱਲ ਪੱਕੀ ਹੈ ਜਿਹੜੇ ਆ ਰਹੇ ਨੇ ਬੰਦੇ ਇਹ ਅਸਲ ਦੇ ਲੈਪੋ ਤੇ ਜਾਂ ਬਰਵਾਦੀ ਵਾਲੇ ਏਰੀਏ ਦੇ ਦੀਆਂ ਪਹਿਲਾਂ ਹੀ ਜਿਹੜੇ ਲਿਬਨਾਨ ਦੇ ਵਿੱਚ ਤੁਰਕੀ ਦੇ ਵਿੱਚ ਬੈਠੇ ਸੀ ਮੋਸਟਲੀ ਜਿਹੜੇ ਸੀਨੀਅਰ ਰਿਫਿਊਜੀ ਕਹਿ ਕੇ ਆਪਾਂ ਲੈ ਰਹੇ ਹਾਂ ਲਿਬਨਾਨ ਦੇ ਵਿੱਚ ਜਿਹੜੇ ਪਹਿਲਾਂ ਹੀ ਬੈਠੇ ਸੀ ਉਥੋਂ ਚੱਕ ਕੇ ਅਸੀਂ ਇੱਥੇ ਨੂੰ ਲੈ ਕੇ ਆ ਰਹੇ ਹਾਂ ਉਹਨਾਂ ਕੋਈ ਉਹਨਾਂ ਦੇ ਅਗੇਂਸਟ ਨਹੀਂ ਹੈ ਕੋਈ ਧਰਮ ਦੀ ਗੱਲ ਨਹੀਂ ਕੋਈ ਦਵਾਰਾਂ ਦੀ ਨਹੀਂ ਗੱਲ ਪਰ ਜਦ ਬੰਦਾ ਸੇਫ ਜਗ੍ਹਾ ਤੇ ਆ ਗਿਆ ਉਹ ਕੰਮ ਕਿਉਂ ਨਹੀਂ ਕਰਦਾ ਜਿਹੜੇ ਬੰਦੇ ਟੈਕਸ ਪੇਅਰ ਨੇ ਉਹ ਉਹਨਾਂ ਦਾ ਕੀ ਹੀਨਾ ਬਣੂ ਉਹ ਕਿੱਥੇ ਜਾ ਕੇ ਖੜਨਗੇ ਉਹ ਮੈਂ ਉਹਨਾਂ ਦੀ ਜ਼ਿੰਦਗੀ ਕਲ ਨੂੰ ਅਲਡੇਜ ਜਾਂ ਕੋਈ ਇਹੋ ਜਿਹਾ ਕੁਝ ਉਹਨਾਂ ਦਾ ਅੱਜ ਤੋਂ ਅੱਗੇ ਜਿਹੜਾ ਬੰਦਾ ਲੱਖ ਚੋਂ 40000 ਡਾਲਰ ਟੈਕਸ ਦੇ ਰਿਹਾ ਉਦਾ ਹੱਕ ਬਣਦਾ ਉਹ ਨਾ ਪਰ ਵੋਟਾਂ ਦੀ ਰਾਜਨੀਤੀ ਦੇ ਪਾਲ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਹਾਂਜੀ ਸਤਿ ਆ ਅੱਗੇ ਵੀ ਹੋਈ ਸੀਗੀ ਤੇ ਮੈਂ ਤਾਂ ਇਹ ਕਹਿੰਦਾ ਇਹਨਾਂ ਨੂੰ ਜ਼ਿਆਦਾ ਉਹਨਾਂ ਦੇ ਮੁਲਕ 'ਚ ਚਾਹੀਦੀ ਆ ਜਿਹੜੇ ਇੱਥੇ ਆਏ ਹੋਏ ਆ। ਇਹ ਟਰੂਡੋ ਆਪਣੇ ਗਾਹਾਂ ਦੇ ਫਿਊਚਰ ਲਈ ਬੰਦ ਕਰ ਦਰਾ ਗਾਹਾਂ ਹਰ ਜਾਣਾ। ਇਹ ਆਪਣੇ ਪੇਂਡੀਆਂ ਦੇ ਹਿੱਸਾਂ ਕਰਦਾ ਏਦਾਂ ਨਹੀਂ ਹੋ ਸਕਦੀ ਮੈਂ ਤਾਂ ਇੰਨੀ ਗੱਲ ਕਹਿਣੀ ਸੀ ਚੰਗਾ ਧੰਨਵਾਦ ਜੀ ਉੰਨੀ ਵਾਲੀਆਂ ਜਿਹੜੀਆਂ ਨੇ ਉਹ ਅਲੱਗ ਹੋਣ ਗਿਆ ਵਰਗੇ ਜਿਹੜੇ ਉਮੀਦਵਾਰ ਨੇ ਕੈਨੇਡੀਅਨ ਵੈਲਿਊਜ਼ ਦੀਆਂ ਗੱਲਾਂ ਕਰਦੇ ਲੋਕਾਂ ਨੇ ਇੱਕ ਪਾਸੇ ਨੂੰ ਉਲਟ ਜਣਾ ਤੁਸੀਂ ਵੇਖਿਓ ਅਗਲੀ ਅਗਲਾ ਜਿਹੜਾ ਪੈਂਤੜਾ ਇੱਥੇ ਕੀ ਹੋਣਾ ਔਰ ਜੇ ਰੱਬ ਨਾ ਕਰੇ ਕੋਈ ਅਜਿਹੀ ਘਟਨਾ ਹੋ ਗਈ ਜਿਸ ਦੇ ਕੋਈ ਨ ਫਿਲਟਰ ਕਰਕੇ ਕੋਈ ਫਿਲ ਰਿਫਿਊਜੀ ਤੇ ਜਿਹੜਾ ਕਿਸੇ ਉੱਥੇ ਅਤਵਾਤੀ ਸੰਗਠਨ ਦੇ ਨਾਲ ਹੋਇਆ ਤੇ ਕੋਈ ਗਲਤ ਗੱਲ ਹੋ ਗਈ ਜਿਸ ਤਰ੍ਹਾਂ ਬਾਕੀ ਦੇਸ਼ਾਂ ਯੂਰਪ ਚ ਹੋ ਰਹੀ ਹੈ ਫਿਰ ਬਹੁਤ ਵੱਡੀ ਇਹ ਮੁਸ਼ਕਲ ਹੋਣੀ ਹੈ ਦੂਸਰੇ ਸੇਮ ਟੋਕਨ ਡੋਨਲਡ 트੍ਰੰਪ ਵੱਲੋਂ ਪਿਛਲੇ ਦਿਨੀ ਸੈਂਟਰਲ ਕਮਾਂਡ ਦੇ ਵਿੱਚ ਕੱਲ ਲਈ ਜਿਹੜਾ ਬਿਲਕੁਲ ਹੀ ਸਾਰਾ ਇਸਲਾਮ ਦੇ ਨਾਲ ਅੱਤਵਾਦ ਨੂੰ ਜੋੜ ਕੇ ਗੱਲਾਂ ਕਹਿਣੀਆਂ ਉਹ ਬਿਲਕੁਲ ਗਲਤ ਨੇ ਹਿਰਦੇ ਵਿਦਕ ਨੇ ਉਹ ਨਹੀਂ ਗੱਲ ਹੋਣੀ ਚਾਹੀਦੀ ਧਰਮ ਦੇ ਨਾਲ ਉਸ ਨਹੀਂ ਜੋੜਨਾ ਚਾਹੀਦਾ ਸਾਰਾ ਧਰਮ ਉਸ ਲਈ ਜ਼ਿੰਮੇਵਾਰ ਨਹੀਂ ਕੁਝ ਜਸਤੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਪਰ ਉਹ ਹੁਣ ਬਿਲਕੁਲ ਧਰਮ ਦੇ ਨਾਲ ਉਸ ਲਾ ਰਿਹਾ ਉਹ ਵੀ ਅੱਗ ਦੇ ਨਾਲ ਖੇਡਣ ਦੀ ਗੱਲ ਹੈ ਇੰਦਰਪ੍ਰੀਤ ਸਿੰਘ ਟਵਾਣਾ ਲਾਈਨ ਨੰਬਰ 3 ਅਨੁਸਾਰੀ ਗੱਲ ਸਾਹਿਬ ਤੁਸੀਂ ਸਭ ਦੇਖੋ ਜਿਹੜਾ ਇਹ ਕੈਨੇਡੀਅਨ ਹੁਣ ਇਮੀਗ੍ਰੇਸ਼ਨ ਦਾ ਰੌਲਾ ਨਾ ਆਪਾਂ ਪਹਿਲਾਂ ਇੰਗਲੈਂਡ 'ਚ ਵੀ ਦੇਖਦੇ ਰਹੇ ਇਮੀਗ੍ਰੇਸ਼ਨ ਜਦੋਂ ਉੱਥੇ ਕਿਰਾਈਸਿਸ ਆਇਆ ਲੋਕ ਜਦੋਂ ਆਉਂਦੇ ਭੀੜ ਵੱਧ ਗਈ ਸੜਕਾਂ ਤੇ ਉਹਨਾਂ ਨੇ ਇਮੀਗ੍ਰੇਸ਼ਨ ਜਮੇ ਕਟ-ਆਫ ਕਰਤੀ ਨਾ ਤੁਸੀਂ ਇਹ ਵੀ ਦੇਖ ਲਿਓ ਹੁਣ ਅਮਰੀਕਾ ਨੇ ਬੰਦ ਕਰਤਾ ਤੇ ਹੌਲੀ-ਹੌਲੀ ਇਹ ਨਾ ਹੋਵੇ ਕਿ ਕੈਨੇਡਾ 'ਚ ਜਿਹੜੇ ਬੰਦੇ ਲੀਗਲ ਆ ਰਹੇ ਨੇ ਉਹਨਾਂ ਦਾ ਵੀ ਕਟ-ਆਫ ਲੱਗ ਜਾਏ ਨਾ ਉਹਨਾਂ ਦੀ ਵੀ ਕੱਲ ਨੂੰ ਮਤਲਬ ਕਟਾਈ ਜਾਵੇ ਕਿ ਇਹ ਬੰਦੇ ਜਾਂ ਆਪਾ ਅਪਲਾਈ ਕਰਦੇ ਦੇਖਦੇ ਹਾਂ ਕਿੰਨੇ ਕਿੰਨੇ ਸਾਲ ਲੱਗਦੇ ਨੇ ਜਿਹੜੇ ਬੰਦੇ ਲੀਗਲੀ ਅਪਲਾਈ ਕਰਦੇ ਨੇ ਉਹ ਸਾਰਾ ਬੈਕਲੌਗ ਇਸੇ ਗੱਲ ਕਰਕੇ ਲੱਗ ਰਿਹਾ ਮਤਲਬ ਆਪਾਂ ਰਿਫਿਊਜੀ ਨਹੀਂ ਹੋਰ ਵੀ ਕਿੰਨੇ ਰਾਹ ਨੇ ਜਿਵੇਂ ਹੁਣ ਖਬਰ ਨਸ਼ਰ ਹੋ ਗਈ ਹੋਰ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਬਿਨੇ ਤੋਂ ਰਾਹ ਖੁੱਲ ਹੈ ਨੂੰ ਭੱਜ ਲੋ ਸਾਰੇ ਤੇ ਉਹ ਹੈਗੇ ਵੀ ਸਾਰੇ ਸਵਾਲੀਆ ਤੋਂ ਜਿੱਥੋਂ ਕਿ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਉਸੇ ਪੁਲਿਸ ਵਗੈਰ ਵੈਰੀਫਿਕੇਸ਼ਨ ਲੈਣੀ ਹੈ ਜਿੱਥੇ ਆਲਰੇਡੀ ਸਾਰਾ ਕ੍ਰਾਈਸਿਸ ਹੈ ਉੱਥੋਂ ਕਿਵੇਂ ਪੁਲਿਸ ਦੀ ਉਹਨਾਂ ਦੀ ਵੈਰੀਫਿਕੇਸ਼ਨ ਕਰਾ ਲੈਣਗੇ ਉਹ ਜਿਹੜਾ ਸਿਸਟਮ ਹੀ ਸਾਰਾ ਕਰਪਟ ਹੈ ਨਾ ਤੇ ਇਸ ਗੱਲ ਕਰਕੇ ਟਰੂਡੋ ਇਸ ਵਾਰੀ ਕਿਉਂਕਿ ਹੁਣ ਲੈ ਰਹੀ ਹੈ ਉਹ ਉੱਪਰ ਜਾ ਰਿਹਾ ਸਭ ਤੋਂ ਜਿਹੜੀ ਉਹਨਾਂ ਦੀ ਰੇਟ ਆਪਣੇ ਕੰਜ਼ਰਵਟਿਵ ਦੀ ਮੈਂ ਉਹਦੇ ਸਟੈਟਸ ਕੱਢ ਕੇ ਦੇਖਿਆ ਜੀ ਉਹ ਸਭ ਤੋਂ ਜ਼ਿਆਦਾ ਲੋਕ ਉਹਨੂੰ ਮਤਲਬ ਪਹਿਲੇ ਨੰਬਰ ਤੇ ਜਾ ਰਿਹਾ ਹੁਣ ਤੁਸੀਂ ਦੇਖ ਲਓ ਲੋਕਾਂ ਦੀ ਸੋਚ ਜੇ ਲੋਕ ਉਧਰ ਨੂੰ ਪ ਤਾਂ ਮੈਨੂੰ ਨਹੀਂ ਲੱਗਦਾ ਟਰੂਡੋ ਸਾਹਿਬ ਉਹਨਾਂ ਦੇ ਲੋਕਾਂ ਨੇ ਪਾਇਆ ਕਮੈਂਟ ਜਿਹੜੇ ਲੋਕਾਂ ਨੇ ਕਹਿੰਦੇ ਉਹ ਮੋਫਲੀ ਦੇ ਛਿਲਕੇ ਵਾਂਗ ਹੈ ਟਰੂਡੋ ਆਲ ਦਾਲੇ ਘੁੰਮਦਾ ਰਿਹਾ ਤੇ ਉਹ ਉਹਨੇ ਕੀਤਾ ਇਕਨੋਮੀ ਵਿਰੋਧੀ ਨੇ ਗੱਲਾਂ ਕਰਨੀਆਂ ਨੇ ਪਰ ਕੁਝ ਗੱਲਾਂ ਹੁਣ ਘੁੰਮਣਾ ਦੇਸ਼ ਵੱਲ ਧਿਆਨ ਦੇਣਾ ਚਾਹੀਦਾ ਜੀ ਔਰ ਮੈਨੂੰ ਥੋੜਾ ਜਿਹਾ ਵੀ ਸਾਨੂੰ ਡਰ ਲੱਗਣ ਲੱਗ ਗਿਆ ਪਰ ਜਿਹੜੇ ਮੁਸਲਮਾਨ ਵੀ ਨੇ ਨਾ ਮੁਸਲਮ ਕੰਟਰੀਆਂ ਵੀ ਇਹਨਾਂ ਨੂੰ ਵੀ ਇਹ ਬੰਦਿਆਂ ਨੂੰ ਮਤਲਬ ਧਰਮ ਚੋਂ ਖਾਰਜ ਕਰਨਾ ਚਾਹੀਦਾ ਜੀ ਥੋੜਾ ਜਿ ਥੋੜਾ ਜਿਹਾ ਲੱਗੇ ਕਿ ਹਾਂਜੀ ਇਹ ਵੀ ਕਿਸੇ ਇਸ ਪਾਸੇ ਸਟੈਪ ਲੈ ਰਹਿਣ ਚਾਹੇ ਕੁਝ ਨਹੀਂ ਕਰ ਸਕਦੇ ਪਰ ਇਹਨਾਂ ਦੇ ਸਾਹੀ ਇਮਾਮ ਤਾਂ ਉਹਨਾਂ ਨੂੰ ਕਰ ਸਕਦੇ ਨੇ ਵੀ ਸਾਡੇ ਧਰਮ ਚੋਂ ਬਰਖਾਸਤ ਨੇ ਬੰਦੇ ਬੰਦੇ ਕ੍ਰਿਮਨਲ ਨੇ ਇਦਾਂ ਵੀ ਖੁੱਲ ਕੇ ਨਹੀਂ ਆ ਰਹੇ ਮੁਲਕ ਤਾਂ ਹੀ ਲੋਕ ਫਿਰ ਇਹਨਾਂ ਨੂੰ ਮੌਕਾ ਮਿਲਦਾ ਦੂਜਿਆਂ ਨੂੰ ਕਹਿਣ ਦਾ ਧੰਨਵਾਦ ਵੀਰ ਜੀ ਧੰਵਾਦ ਜੀ ਕੁਲਜਿੰਦਰ ਸਿੰਘ ਲਾਈਨ ਨੰਬਰ 4 ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼ਕਾਲ ਜੀ ਬਾਈ ਜੀ ਆਹ ਜੀ ਬਈ ਕੰਦਲੇ ਕੁਜੀ ਆ ਰਹੇ ਨੇ ਠੀਕਾ ਚਲੋ ਵੀਰ ਆਪਾਂ ਕਹਿੰਦੇ ਕੰਮ ਨਹੀਂ ਕਰਦੇ ਹੋ ਜਵਾਕ ਵੀ ਨੇ ਤੋਂ ਜਿਹੇ ਮਾਹੌਲ ਦੇ ਨੇ ਜੇ ਹੁਣ ਕਈ ਬੰਦੇ ਕਹਿ ਰਹੇ ਨੇ ਉਹਦੇ ਜਿਹੇ ਜੇ ਮਾਹੌਲ ਨੇ ਤੋਂ ਉਹਨਾਂ ਨੂੰ ਨਿੰਦਣਾ ਜਾਂ ਸਲਾਹਣਾ ਦਾ ਕੋਈ ਹੈ ਨਹੀਂ ਗੱਲ ਉਹਦਾ ਜਿਹੇ ਜੇ ਹਣ ਨੇ ਹੋ ਜਿਆ ਗਿਆ ਤੇ ਪਰ ਉਹਦਾ ਵੀ ਹੱਲ ਕੀ ਹੋ ਸਕਦਾ ਹੌਲੀ ਹੌਲੀ ਵੀ ਹੋਊਗਾ ਸਰਕਾਰਾਂ ਇੰਨੀਆਂ ਤੇ ਕੋਈ ਵੀ ਨਹੀਂ ਹੁੰਦੀ ਵੀ ਘਰੇ ਬੈਠਾ ਨੂੰ ਮੌਤ ਲਈ ਜਾਣ ਉਹ ਤਾਂ ਸਾਲ ਪਰ ਵਾਸਤੇ ਹੈਗਾ ਫਿਰ ਜੇ ਉਹਨਾਂ ਸਾਲ ਤੇ ਇੱਕ ਸਾਲ ਕਲਿੰਦਰ ਸਿੰਘ ਡਾਲਰ ਥੋੜਾ ਕੰਮ ਕਰਨ ਨੂੰ ਮੈਨੂੰ ਦੱਸੋ ਕਿਹੜੀ ਭਾਸ਼ਾ ਦੀ ਲੋੜ ਹੈ ਜੀ ਲੇਬਰ ਕਰਨੀ ਆ ਕਿਉਂ ਨਹੀਂ ਕੰਮ ਕਰ ਸਕਦੇ ਹੋ 40000 ਕਿਤੇ ਇੱਕ ਪਰਿਵਾਰ ਥੋੜਾ 50000 ਪਰਿਵਾਰ ਹੈ ਇਹਨੇ ਦੇ ਲਏ ਉਹ ਪੈਸੇ ਤੁਹਾਡੇ ਮੇਰੀ ਜੇਬ ਚੋਂ ਜਾਣੇ ਨੇ ਉਹੀ ਉਹ ਤਾਂ ਠੀਕ ਹੈ ਜੀ ਜਾਣੇ ਆ ਪਰ ਫਿਰ ਕੈਨੇਡੀਅਨ ਸਟੈਂਡਰਡ ਆ ਉਹ ਬਰਾਬਰਤਾ ਰੱਖੋ ਜਾਨਾ ਸਟੈਂਡਰਡ ਆ ਕੈਨੇਡੀਅਨ ਆ ਕੈਨੇਡੀਅਨ ਸਟੈਂਡਰਡ ਆ ਕੱਲ ਨੂੰ ਗਲਕ ਕਿੰਨਾ ਚਿਰ ਦੇਰ ਚ ਲੋਕ ਦੇਣਗੇ ਪੈਸੇ ਕਿਸੇ ਨੂੰ ਇਮੀਗ੍ਰੇਸ਼ਨ ਦੇਣੀ ਬਹੁਤ ਵੱਡਾ ਇੱਕ ਗਿਫਟ ਆ ਮੇਰੇ ਖਿਆਲ ਵਿੱਚ ਨਹੀਂ ਉਹ ਤਾਂ ਬਾਈ ਜੀ ਗੱਲ ਹੈਗੀ ਆ ਪਰ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਜਿੱਥੋਂ ਇਹ ਬੰਦੇ ਕੱਢ ਕੇ ਲੈਂਦੇ ਹੁਣ ਇਹਨਾਂ ਅਮੀਰ ਦੇਸ਼ਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਆ ਸਾਰਿਆਂ ਦੀ ਬਿਲਕੁਲ ਪਰ ਉਹਨਾਂ ਲੈਣ ਦਾ ਉਹ ਆ ਕੇ ਕੰਮ ਕਿਉਂ ਨਹੀਂ ਕਰ ਸਕਦੇ ਨਹੀਂ ਮੈਂ ਨਹੀਂ ਕਹਿੰਦਾ ਲਿਉਣ ਦੀ ਪਰ ਉਹ ਕੰਮ ਕਿਉਂ ਨਹੀਂ ਕਰ ਸਕਦੇ ਆ ਕੇ ਮੈਨੂੰ ਇਹ ਸਮਝਾਓ ਇੱਕ ਰਿਸਟ ਪੋਸਟ ਬੰਦਾ ਉਹ ਕੰਮ ਕਿਉਂ ਨਹੀਂ ਕਰ ਸਕਦਾ ਉਹ ਮੈਂ ਕਹਿ ਰਿਹਾ ਪੀਲਿਆਂ ਨੂੰ ਦਿਖ ਜੂ ਵੀ ਕਹਿ ਰਿਹਾ ਮੈਂ ਮੈਂ ਲਿਉਣ ਦੇ ਖਿਲਾਫ ਨਹੀਂ ਮੈਂ ਕੰਮ ਲਈ ਉਹ ਕਹਿ ਰਿਹਾ ਹੋਰ ਨਹੀਂ ਕੁਝ ਕਹਿ ਰਿਹਾ ਮੈਂ ਤੇ 3.5 ਕਰੋੜ ਟੋਟਲ ਬੰਦਾ ਬਹੁਤ ਵੱਡਾ ਦੇਸ਼ ਹੈ ਉਹਨਾਂ ਨੂੰ ਮੈਂ ਕਹੇ ਉਹੀ ਕਹਿ ਰਿਹਾ ਮੇਜਰ ਟਾਊਨ ਜਿਹੜੇ ਸ਼ਹਿਰ ਨੇ ਜਿੱਥੇ ਇੰਚਾਂ ਦੇ ਹਿਸਾਬ ਨਾਲ ਜ਼ਮੀਨ ਮਿਲਦੀ ਹੈ ਉੱਥੇ ਉਹਨਾਂ ਨੂੰ ਉਹ ਘਰ ਦੇ ਕੇ ਰੱਖਿਆ ਜਾ ਰਿਹਾ ਤੇ ਲੋਕਲ ਜਿਹੜੇ ਬੰਦੇ ਇੱਥੇ ਦੇ ਨੇ ਜਿਹੜੇ ਕਿਸੇ ਕਾਰਨ ਕਰਕੇ ਘਰੋਂ بے ਹੋ ਗਏ ਉਹ ਜਿਹੜੇ ਨੇ ਉਹ ਕੋਈ ਅਹਲੀਆਂ ਚ ਪਿਆ ਕੋਈ ਕਿਤੇ ਪਿਆ ਉਹਨਾਂ ਨੂੰ ਸੋਸ਼ਲ ਹਾਊਸਿੰਗ ਦੀ ਗੱਲ ਨਹੀਂ ਮੁੱਖ ਮੰਤਰੀ ਸਾਡੀ ਵੀ ਕਹਿ ਰਹੀ ਹੈ ਮੈਂ ਤਾਂ ਬਹੁਤ ਖੁਸ਼ ਹਾਂ ਕਿ ਰਿਫਿਊਜੀ ਲਿਆ ਕੇ ਤੇ ਜਿਹੜੇ ਇੱਥੇ ਬੈਠੇ ਆ ਜਿਨ੍ਹਾਂ ਦੇ ਪਰਿਵਾਰ ਟੁੱਟ ਗਏ ਕੋਈ ਮੀਆਂ ਬੀਬੀ ਅਲੱਗ ਹੋ ਗਏ ਉਹਨਾਂ ਨੂੰ ਮਦਦ ਕਿਹਨੇ ਦੇਣੀ ਆ ਜਿਹੜੇ ਟੈਕਸ ਪੇਅਰ ਨੇ ਸਿਰਫ ਵੋਟਾਂ ਦੀ ਰਾਜਨੀਤੀ ਇਹਦੇ ਵਿੱਚ ਹੋਰ ਕੁਝ ਨਹੀਂ ਠੀਕਾ ਕੈਨੇਡੀਅਨ ਸਟੈਂਡਰਡ ਹੈ ਅਸੀਂ ਹਿਊਮਨ ਰਾਈਟਸ ਦੇ ਬਹੁਤ ਵੱਡੇ ਰੰਬਰਦਾਰ ਆ ਰਹਿਣਾ ਵੀ ਚਾਹੀਦਾ ਜਰੂਰਤਾਂ ਦਾ ਬੰਦਾ ਉਹਨਾਂ ਦੀ ਬਾਹ ਫੜਨੀ ਚਾਹੀਦੀ ਮੇਰਾ ਤਾਂ ਇੱਕੋ ਹੀ ਤਰਕ ਆ ਜਦੋਂ ਮਹੀਨਾ ਖੰਡ ਰਹਿ ਗਏ ਤੁਹਾਡੇ ਮੇਰੇ ਰਿਸ਼ਤੇਦਾਰ ਮਾਮੇ ਭੂਆ ਦੇ ਪੁੱਤ ਰਿਸ਼ਤੇਦਾਰ ਅਸੀਂ ਪੰਜਵੇਂ ਦਿਨ ਕਿਵੇਂ ਬੈਂਚ 'ਚ ਬਿਠਾ ਕੇ ਲੈ ਜੰਨੇ ਆ ਭਈ ਇਹ ਕਿਉਂ ਨਹੀਂ ਸਕਦੇ ਕੰਮ ਬੰਦੇ ਜਿਹੜਾ ਅਡਲਟ ਹੈ ਬੱਚੇ ਨਾ ਜਾਣ ਘਰ ਵਾਲੀਆਂ ਨਾ ਜਾਣ ਉਹ ਬੱਚੇ ਸਾਹਮਣ ਜਿਹੜਾ ਅਡਲਟ ਹੈ 20 ਸਾਲ ਤੋਂ ਉੱਪਰ ਉਹ ਕੰਮ ਤੇ ਜਾਵੇ ਕਿਉਂ ਨਾ ਜਾਵੇ ਉਹ ਰਾਜਦੀਪ ਸਿੰਘ ਦੀ ਲਾਈਨ ਨੰਬਰ 5 ਸਰੋਗਿਲ ਤਾਂ ਜਤੀਆ ਸਤਿ ਸ੍ਰੀ ਅਕਾਲ ਜੀ ਤਾਂ ਗੱਸਾ ਵੀ ਨਾ ਜਿਹੜੀ ਆਪਾਂ ਗੱਲ ਕਰ ਰਹੇ ਆ ਇਹ ਧਾਰਮਿਕ ਰੌਲਾ ਨਹੀਂ ਹੈਗਾ ਇਹ ਹੈ ਸਾਰਾ ਇਕਨੋਮੀ ਦੇ ਪਿਛੇ ਰੌਲੇ ਪੈ ਰਹੇ ਆ ਹੁਣ ਜਾਰਡਨ ਤੋਂ ਸਾਰੇ ਰਿਫਿਊਜੀ ਚੱਕੇ ਜਾ ਰਹੇ ਆ ਔਰ ਮਿਲਟਰੀ ਟਰਾਂਸਪੋਰਟ ਪਲੇਨ ਨੇ ਜਿਹੜੇ ਉਹ ਲਿਆ ਲਿਆ ਫਿੱਟ ਰਹੇ ਇਹਨਾਂ ਨੂੰ ਇੱਥੇ ਉਹ ਕਿਹਾ ਸਵਾਲ ਹੀ ਖੜਾ ਹੁੰਦਾ ਵੀ ਕੀ ਇਹ ਗਵਰਨਮੈਂਟ ਨੂੰ ਇੱਥੇ ਉਹਨਾਂ ਨੂੰ ਲਿਆ ਕੇ ਪਤਾ ਲੱਗਿਆ ਵੀ ਓਹੋ ਯਾਰ ਕੰਮ ਨਹੀਂ ਕਰਦੇ ਅਜੇ ਹੁਣ ਕੀ ਕਰੀਏ ਤੁਹਾਨੂੰ ਲੱਗਦਾ ਵੀ ਗਵਰਨਮੈਂਟ ਨੂੰ ਪਤਾ ਪਤਾ ਵੀ ਇਹਨੇ ਇੱਥੇ ਆ ਕੇ ਲੱਗਦਾ ਵੀ ਇਹ ਕੰਮ ਨਹੀਂ ਕਰਦੇ ਉਹ ਤਾਂ ਹੁੰਦਾ ਉਹਨਾਂ ਨੂੰ ਵੀ ਕੀ ਹੁੰਦਾ ਕੀ ਨਹੀਂ ਸਾਰਾ ਕੁਝ ਹੁੰਦਾ ਸਕਰੀਨਿੰਗ ਹੁੰਦੀ ਆ ਸਭ ਕੁਝ ਹੁੰਦਾ ਓਕੇ ਹੁਣ ਗੱਲ ਇਹ ਆ ਵੀ ਦੂਸਰੇ ਪਾਸੇ ਦੇਖਣ ਵਾਲੀ ਗੱਲ ਇਹ ਆ ਵੀ ਇਸ ਟਾਈਮ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਯੰਗ ਪੋਪੂਲੇਸ਼ਨ ਕਿਹੜੇ ਮਲਕਾਂ ਕੋਲ ਕਿਹੜੇ ਕਲਚਰਾਂ ਕੋਲ ਕਿਹੜੇ ਕੰਟਰੀਆਂ ਕੋਲ ਔਰ ਸਭ ਤੋਂ ਜ਼ਿਆਦਾ ਏਜਿੰਗ ਪੋਪੂਲੇਸ਼ਨ ਆ ਉਹ ਕਿਹੜੇ ਕੰਟਰੀਆਂ ਕੋਲ ਆ ਵੈਸਟਰਨ ਕੰਟਰੀਆਂ ਕੋਲ ਏਜਿੰਗ ਪੋਪੂਲੇਸ਼ਨ ਆ ਯੰਗ ਪੋਪੂਲੇਸ਼ਨ ਕੋਲ ਆ ਠੀਕ ਹੈ ਜੀ ਕੋਈ ਕਿਹਾ ਪਕਾ ਨਹੀਂ ਵੀ ਰਿਫਿਊਜੀ ਇੱਥੇ ਲਿਆਂਦੇ ਜਾ ਰਹੇ ਆ ਕਿਉਂ ਲਿਆਂਦੇ ਜਾ ਰਹੇ ਆ ਡੋਨਲਡ ਟਰੰਪ ਸਿਰਫ ਪੋਲਿਟਿਕਸ ਕਰ ਰਿਹਾ ਕੋਈ ਰਿਫਿਊਜੀ ਨਹੀਂ ਬੰਦ ਕਰਨੀ ਉਹਨਾਂ ਨੇ ਉਹ ਮੁਸਲਮਾਨਾਂ ਨੂੰ ਮਾਰਾ ਕਹਿ ਕੇ ਉਹਨੇ ਵੋਟਾਂ ਲਈਆਂ ਨੇ ਸੋ ਲੋਕਾਂ ਨੂੰ ਉਹਨਾਂ ਨੇ ਖੁਸ਼ ਰੱਖਣਾ ਪੈਣਾ ਕੋਈ ਵੀ ਕੰਟਰੀ ਇਹਨਾਂ ਬੇਫਿਕੂਰ ਨਹੀਂ ਹੁੰਦਾ ਹੈਗਾ ਜਿਹੜੇ ਰਿਫਿਊਜੀ ਜਾਂ ਇਮੀਗ੍ਰੇਸ਼ਨ ਹੁੰਦੀ ਆ ਹਿਜਰਤ ਹੁੰਦੀ ਆ ਉਹ ਕਿਸੇ ਵੀ ਕੰਟਰੀ ਲਈ ਇੱਕ ਐਸੈਟਸ ਹੁੰਦੇ ਆ ਉਹਦੀ ਕਮੋਡਿਟੀ ਹੁੰਦੀ ਆ ਉਹ ਜਿਨ੍ਹਾਂ ਨੇ ਆਉਣੇ ਉਸ ਟਾਈਮ ਦੇ ਵਿੱਚ ਰੈਵਨਿਊ ਜਨਰੇਟਰ ਬਣਨਾ ਹੁੰਦਾ ਉਕਿ ਜੇ ਮੈਂ ਪਹਿਲਾਂ ਭਾਈ ਸਾਹਿਬ ਕਹਿ ਕੇ ਜਾਈਆ ਵੀ ਉਹਨਾਂ ਨੇ ਕਰ ਦੇਣਾ ਕਈ ਵਾਰੀ ਕੀ ਹੁੰਦਾ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਗਵਰਨਮੈਂਟ ਦਾ ਟਾਰਗੇਟ ਉੱਤੇ ਹੁੰਦਾ ਗਵਰਨਮੈਂਟਾਂ ਹਮੇਸ਼ਾ 100 200 ਸਾਲ ਸੋਚਦੀਆਂ ਨੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਟਾਰਗੇਟ ਹੁੰਦੀਆਂ ਨੇ ਕਈ ਵਾਰੀ ਗਵਰਨਮੈਂਟਾਂ ਦਾ ਸੋ ਉਹਨਾਂ ਨੂੰ ਇੱਥੇ ਰੱਖਣ ਲਈ ਇੱਥੇ ਦੀ ਅ ਉਹਨਾਂ ਦੀ ਜਿਵੇਂ ਕਹਿੰਨ ਲੋ ਵੀ ਇੱਥੇ ਦੀ ਸੁਖ ਦੀ ਬਿਮਾਰੀ ਲਾਉਣ ਲਈ ਉਹਨਾਂ ਨੂੰ ਇਹ ਇੱਕ ਤਰ੍ਹਾਂ ਦਾ ਨਸ਼ਾ ਟਾਈਪ ਹੁੰਦਾ ਵੀ ਜਿਵੇਂ 40 42 ਜੇ ਤੁਸੀਂ ਕਹਿੰਦੇ ਉਹ ਵੀ ਜਾਂਦਾ ਇਕ ਤਰ੍ਹਾਂ ਓਕੇ ਹੁਣ ਆ ਗੱਲ ਇਹ ਆ ਵੀ ਜੇ ਆਪਾਂ ਇਹ ਗੱਲ ਕਹਨੇ ਆ ਵੀ ਉਹਨਾਂ ਨੂੰ 40 42000 ਜਾਂਦਾ ਵੀ ਉਹ ਕੰਮ ਕਰਨ ਉਹਨਾਂ ਨੂੰ ਕੰਮ ਕਰਨਾ ਪੈਣਾ ਜੇ ਨਹੀਂ ਕਰਨਗੇ ਆਪਾਂ ਨੂੰ ਪਤਾ ਵੀ ਗੌਰਮੈਂਟਾਂ ਹੌਲੀ ਹੌਲੀ ਕੱਟ ਦਿੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਸਿਰਫ ਨਸ਼ੇ ਤੇ ਟਾਈਮ ਲਈ ਲਾਉਣ ਨੂੰ ਹੁੰਦਾ ਇਹ 21 ਸੈਂਚਰੀ ਦੇ ਵਿੱਚ ਜਦੋਂ ਸਾਰੀ ਦੁਨੀਆ ਦੇ ਵਿੱਚ ਆਪਣੀਆਂ ਆਪਣੀਆਂ ਕੰਪਨੀਆਂ ਲੋਕਾਂ ਨੇ ਚੀਪ ਲੇਬਰ ਕਰਕੇ ਖਾਸ ਕਰਕੇ ਅਮਰੀਕਾ ਦੀਆਂ ਜਿਹੜੀਆਂ ਚਾਈਨਾ ਗਈਆਂ ਹੋਈਆਂ ਨੇ ਉਹ ਉਹਨਾਂ ਨੇ ਪਿੱਛੇ ਤਾਂ ਬੁਲਾਉਣੀਆਂ ਨੇ ਕੱਪੜੀਆਂ ਤਾਂ ਆਉਣਗੀਆਂ ਜੇ ਉਹ ਉੱਥੇ ਦੀ ਚੀਪ ਲੇਬਰ 'ਤੇ ਕੰਪਨੀ ਇੱਥੇ ਅਮਰੀਕਾ ਦੇ ਵਿੱਚ ਲੋਪਰ ਚੀਪ ਕੰਪਥੋਗੇ। ਔਰ ਜਦੋਂ ਤੁਸੀਂ ਇਹ ਨਹੀਂ ਕਿ ਕੋਹੜੇ ਉਹਦੇ ਨਾਲ ਕੀ ਹੁੰਦਾ ਜੀ ਲੋਕਲ ਜਿਹੜੀ ਕੰਜ਼ਮਪਸ਼ਨ ਤੇ ਬੇਸਡ ਜਿਹੜੀ ਆਪਾਂ ਹੁਣ ਤੱਕ ਕੰਜ਼ਿਊਮ ਹੀ ਕੀਤਾ ਨਾ ਕੰਟਰੀਆਂ ਨੇ। ਇਨ੍ਹਾਂ ਕੰਟਰੀਆਂ ਨੇ ਹੁਣ ਤਾਂ ਕੰਜ਼ਿਊਮ ਕੀਤਾ ਡਾਲਰ ਇਹਨਾਂ ਨੇ ਆਪ ਰੱਖਿਆ ਹੁਣ ਕੀ ਹੋਣਾ? ਹੁਣ ਇਹ ਚੀਪ ਲੇਬਰ 'ਤੇ ਕੰਟਰੀਆਂ ਤੋਂ ਚੱਕ ਇੱਥੇ ਲਿਆਉਣੀਆਂ। ਹੁਣ ਇਹਨਾਂ ਨੇ ਇੱਥੇ ਮੈਨੂਫੈਕਚਰਿੰਗ ਬਣਾਉਣੀ ਆ ਵੈਸਟਰਨ ਕੰਟਰੀਆਂ ਨੇ ਸਾਰਿਆਂ ਨੇ। ਸੋ ਕਹਿਣ ਦਾ ਮਤਲਬ ਇਹ ਇੱਥੇ ਲਿਵਿੰਗ ਆਫ ਸਟੈਂਡਰ ਔਰ ਇਹ ਪ੍ਰੀਪਲਾਨ ਦਾ ਸਾਰਾ ਕੁਝ ਆਪਾਂ ਕਿਸੇ ਨੂੰ ਕਹਿਣ ਦਾ ਕੁਝ ਨਹੀਂ ਚੇਂਜ ਹੋਣਾ ਆਪਾਂ ਮੁਸਲਮਾਨੀ ਇਥੇ ਇੱਕ ਭੈਣ ਜੀ ਆਏ ਉਹ ਕਹਿੰਦੇ ਜੀ ਢਿੱਡ ਕੱਢੀ ਫੜਦੀਆਂ ਨੇ ਤਾਂ ਜਵਾਕ ਜੰਮੀਆਂ ਜਾਂਦੀਆਂ ਨੇ ਗਲਤ ਆ ਇਹ ਵੀ ਆਪਾਂ ਆਪਣੀਆਂ ਜਨਾਨੀਆਂ ਦੋ ਦੋ ਜੋਬਾਂ ਤੇ ਲਾਈਆਂ ਹੋਈਆਂ ਨੇ ਇਹਨਾਂ ਦੀਆਂ ਬੈਟਰੀਆਂ ਮੁੱਕੀਆਂ ਹੋਈਆਂ ਨੇ ਅਗਲੀਆਂ ਜਵਾਕ ਜੰਮ ਰਹੀਆਂ ਨੇ ਜੰਮਣ ਤੋਂ ਤੁਹਾਨੂੰ ਕੋਈ ਰੋਗ ਦਾ ਤੁਸੀਂ ਜੰਮ ਲਓ ਹਮ ਹਮ ਦੇਖੀਏ ਪਰ ਜੇ ਤੁਸੀਂ ਕਹੋ ਵੀ ਉੱਥੇ ਵਾਲਾ ਚੀਪ ਲੇਬਰ ਵਾਲਾ ਜਿਹੜਾ ਸਟੈਂਡਰਡ ਆ ਇੱਥੇ ਸੈੱਟ ਹੋ ਜੂ ਮੈਨੂੰ ਨਹੀਂ ਲੱਗਦਾ ਇੱਥੇ ਸੈੱਟ ਹੋ ਜੂ ਇੱਥੇ ਦੇ ਫੇਰ ਵੀ ਕੋਈ ਪ੍ਰੋਟੋਕਾਲ ਨੇ ਕੋ ਮਿਨਿਮਮ ਵੇਜਸ ਨੇ 10 ਡਾਲਰਾਂ ਤਾਂ ਉੱਥੇ ਦਿਹਾੜੀ ਦੇ ਮਿਲਦੇ ਆ ਬੰਦੇ ਨੂੰ 500 ਰੁਪਈਆ ਦਿਹਾੜੀ ਦਾ ਮਿਲਦਾ ਭਾਰਤ ਤੇ ਚੀਨ ਦੇ ਵਿੱਚ ਇੱਥੇ 10 ਡਾਲਰ ਘੰਟੇ ਦੇ ਮਿਲਦੇ ਆ ਸਟਿਲ ਚੀਨ ਤੋਂ ਫੇਰ ਬੰਗਲਾਦੇਸ਼ ਤੋਂ ਵੀਅਤਨਾਮ ਤੋਂ ਭਾਰਤ ਤੋਂ ਚੀਜ਼ਾਂ ਤਾਂ ਉੱਥੋਂ ਹੀ ਆਉਣੀਆਂ ਇਹ ਠੀਕ ਹੈ ਇਹਦੇ ਪਿੱਛੇ ਰਾਜਨੀਤੀ ਵੀ ਹੈ ਡ੍ਰੰਪ ਦੇ ਮੈਂ ਪਹਿਲਾਂ ਤੁਹਾਡੀ ਠੀਕ ਮੰਨਦਾ ਵੀ ਜਿਹੜੀਆਂ ਗੱਲਾਂ ਕਹਿ ਕੇ ਉਹਨੇ ਵੋਟਾਂ ਲਿਆਂ ਲੋਕ ਖੁਸ਼ ਕਰਨੇ ਨੇ ਲੋਕ ਅਗੇਂਸਟ ਨਹੀਂ ਕਰਨੇ ਉਹਨੇ ਉਹ ਕਰ ਵੀ ਹੋ ਰਿਹਾ ਪਰ ਜਿਹੜਾ ਵੀ ਇਹ ਬੰਦੇ ਆ ਰਹੇ ਨੇ ਪਹਿਲੀ ਤਾਂ ਗੱਲ ਇਹ ਹੈ ਕਿ ਸੀਰੀਆ ਤੁਸੀਂ ਆ ਰਹੇ ਹੋ ਇਹ ਲੈਪੋ ਦੇ ਵਿੱਚੋਂ ਨਹੀਂ ਕਿਸੇ ਨੂੰ ਚੱਕ ਕੇ ਲਿਆ ਰਹੇ ਜਾਰਡਨ ਤੇ ਲੈਬਨਾਨ ਦੇ ਵਿੱਚ ਜਿਹੜੇ ਵਰਿਆਂ ਦੇ ਲੋਕ ਰਹਿ ਰਹੇ ਨੇ ਉੱਥੋਂ ਉੱਥੇ ਵੀ ਕਿਉਂਕਿ ਆਪਾਂ ਨੂੰ ਇੱਥੇ ਬੈਠਿਆਂ ਨੂੰ ਨਾ ਪਤਾ ਲੱਗਦਾ ਯਮੇ ਜਗਾੜ ਫਿੱਟ ਕਰਕੇ ਸਾਡੇ ਇੱਥੇ ਕੰਸਲਟੈਂਟ ਨੇ ਆ ਐਲ ਵੀ ਪੈਸੇ ਵਾਲੇ ਬੰਦੇ ਇਹ ਆ ਰਹੇ ਨੇ ਆ ਰਹੇ ਨੇ ਤੁਸੀਂ ਐਲ ਦੇ ਏਰੀਆ ਦੇ ਵਿੱਚ ਸਪੈਸਿਫਿਕ ਇੱਕ ਕਮਿਊਨਿਟੀ ਆ ਉਹ ਦੇਖਣ ਨੂੰ ਉਸ ਤਰ੍ਹਾਂ ਹੀ ਬੁਰਕੇ ਵਗੈਰਾ ਪਾ ਕੇ ਰੱਖਦੀਆਂ ਮੂੰਹ ਕਰਕੇ ਟੱਕ ਕੇ ਰੱਖਦੀਆਂ ਬਹੁਤ ਸਨੱਖੇ ਰੋਕ ਨੇ ਉੱਥੇ ਪੁੱਛਿਓ ਉਹਨਾਂ ਨੂੰ ਉਹ ਪੈਸੇ ਕਿਵੇਂ ਖਰਚਦੇ ਨੇ ਲੋਕ ਉਹ ਵੀ ਕਿਸੇ ਸਮੇਂ ਰਿਫਿਊਜ ਚੈਕੂ ਕਿ ਆਏ ਹੋਏ ਨੇ ਜੇ ਤੁਸੀਂ ਕਹੋ ਵੀ ਸਿੱਧੀ ਲਾਈਨ ਚ ਲਾ ਕੇ ਕੋਈ ਮੁਸਲਮ ਦੇਸ਼ਾਂ ਦੇ ਵਿੱਚੋਂ ਕੋਈ ਇਮੀਗ੍ਰੇਸ਼ਨ ਲੈ ਲੂ ਭੁੱਲ ਜਾਓ ਆਹੀ ਕੁਛ ਹੋਣਾ ਇਹ ਤਾਂ ਤੁਰੇ ਜਿਹੜੀ ਮੈਂ ਬੈਲਗ੍ਰੇਡ ਦੀ ਗੱਲ ਕੀਤੀ ਹੈ 8000 ਬੰਦਾ ਬੈਠਾ ਸਰਬੀਆ ਦੇ ਵਿੱਚ ਜਿੱਥੇ ਉੱਥੇ ਸਰਬੀਆ ਲੋਕਾਂ ਨੂੰ ਖਾਣ ਨੂੰ ਕੁਝ ਨਹੀਂ ਉਹ ਸਿਰਫ ਯੂਰਪ ਵੱਲ ਚਾਕਦੇ ਆ ਯੂਰਪ ਦੇ ਵਿੱਚ ਕ੍ਰਾਈਸਿਸ ਨੇ ਗਲਤੀਆਂ ਤਾਂ ਕੀਤੀਆਂ ਹੋਏ ਵੈਸਟ ਨਹੀਂ ਜਦੋਂ ਅਨਡਰਸਟ ਕੀਤਾ ਹੈ ਦੇਸ਼ਾਂ ਨੂੰ ਲੋਕ ਤੁਰਪੇ ਉੱਥੋਂ ਲੈਓ ਮੈਂ ਫੇਰ ਹੱਕ ਤੇ ਉਹੀ ਆ ਜਿਵੇਂ 84 ਚ ਸਾਡੀਆਂ ਬਾਹਾਂ ਫੜੀਆਂ ਇਹਨਾਂ ਦੇਸ਼ਾਂ ਨੇ ਅਸੀਂ ਇੱਥੇ ਆਏ ਪਰ ਕੰਮ ਤੇ ਹੁਣ ਨਾਲ-ਨਾਲ ਇੱਕ ਲਿਸਨਰ ਮੁੰਡਾ ਦੱਸ ਰਿਹਾ ਕਹਿੰਦਾ ਮੈਨੂੰ 7 ਸਾਲ ਹੋ ਗਏ 25 30 ਲੱਖ ਮੈਂ ਦੇ ਕੇ ਆਇਆ 4 ਸਾਲ ਮੈਨੂੰ ਰਿਫਿਊਜੀ ਐਕਸੈਪਟ ਨਹੀਂ ਕੀਤਾ 3 ਸਾਲ ਹੋ ਗਏ ਮੈਨੂੰ ਪੀਆਰ ਨਹੀਂ 90 ਸਾਲ ਦਾ ਮੇਰਾ ਪਿਓ ਹੈ ਉਹ ਮੈਨੂੰ ਦੇਖਣ ਨੂੰ ਤਰਸਦਾ ਪਰਿਵਾਰ ਦੇ ਮੇਰੇ 3 4 ਜੀ ਪਿੱਛੋਂ ਪੂਰੇ ਹੋ ਗਏ ਸਿਰਫ ਇੱਕ ਜ਼ਿੰਦਗੀ ਪਰਿਵਾਰ ਦੀ ਤੇ ਆਪਣੀ ਸੈੱਟ ਕਰਨ ਲਈ ਮੈਨੂੰ 7 ਸਾਲ ਹੋ ਗਏ ਖੂਚ ਪੈ ਗਿਆ ਮੇਰਾ ਸਾਰਾ ਕੁਝ ਨਾ ਮੈਂ ਗਾਂ ਜੋਗਾ ਨਾ ਮੈਂ ਪਛਾਹ ਇੱਕ ਨਹੀਂ ਹੈ ਇਹ ਇਹਦੇ ਇੱਕ ਤਾਂ ਤੁਹਾਡੇ ਦੇਸ਼ ਦੇ ਵਿੱਚ ਆਰਥਿਕਤਾ 'ਚ ਹਿੱਸਾ ਪਾ ਰਿਹਾ ਬੰਦਾ ਉਹਨੂੰ ਤੁਸੀਂ ਪੀਆਰ ਨਹੀਂ ਦੇ ਰਹੇ ਸੇਮ ਟੋਕਨ ਤੇ ਨੈਨੀਜ਼ ਆਈਆਂ ਨੇ ਉਹ ਤੁਹਾਡੀ ਆਰਥਿਕਤਾ 'ਚ ਹਿੱਸਾ ਪਾ ਰਹੀਆਂ ਟੈਕਸ ਪੇਅਰਜ਼ ਨੇ ਉਹ ਦਿਨ ਰਾਤ ਕੁੜੀਆਂ ਤੁਰੀਆਂ ਫਿਰਦੀਆਂ ਕੰਮ ਕਰਦੀਆਂ ਕਦੇ ਕਿਸੇ ਰੈਸਟੋਰਾਂ ਉਹਨਾਂ ਦੇ ਘਰ ਵਾਲੇ 7-7 ਸਾਲ ਹੋ ਗਏ ਪੰਜਾਬ 'ਚ ਬੈਠਿਆ ਤੇ ਜਵਾਕ ਉਹਨਾਂ ਦੇ ਪਿੱਛੇ ਵੱਡੇ ਹੋ ਰਹੇ ਉਹਨਾਂ ਨੂੰ ਤੁਸੀਂ ਇਮੀਗ੍ਰੇਸ਼ਨ ਹੀ ਦੇ ਰਹੇ ਸਾਡੇ ਕੋਲ ਸਟਾਫ ਨਹੀਂ ਸਾਡੇ ਕੋਲ ਇਹ ਨਹੀਂ ਤੇ ਇਹ ਸਪੈਸ਼ਲ ਮਿਸ਼ਨ 'ਚ ਸਪੈਸ਼ਲ ਜਿਸ ਤਰ੍ਹਾਂ ਦੱਸ ਕੇ ਗਏ ਰਾਜਦੀਪ ਸਿੰਘ ਹੁਣੀ ਜਹਾਜ਼ਾਂ 'ਚ ਭੜ-ਭੜ ਕੇ ਤੁਸੀਂ ਬੰਦੇ ਲਿਆ ਰਹੇ ਹੋ ਜਿਹੜੇ ਤੁਹਾਡੇ ਹਿੱਸਾ ਪਾਰਨ ਦੇਸ਼ 'ਚ ਉਹ ਕਿੱਥੇ ਜਾਣਗੇ ਫਿਰ ਇਹ ਨਮਾ ਜਿਹੜਾ ਕੰਮ ਸ਼ੁਰੂ ਹੋਇਆ ਸੀਰੀਆ ਦੀ ਵਾਰ ਕਿਤੇ ਹੁਣ ਟਰੂਡੋ ਦੇ ਵੇਲੇ ਲੱਗਿਆ ਸੀਰੀਆ ਦੀ ਵਾਰ 5 ਸਾਲ ਦੀ ਲੱਗੀ ਹੋਈ ਹੈ ਸੇਪਨ ਹਾਰਪੁਰ ਮੇ ਕਿਉਂ ਨਾ ਲੈ ਆਂਦੇ ਔਰ ਨੈਕਸਟ ਜਿਹੜੀ ਇਲੈਕਸ਼ਨ ਹਨ 19 ਦੀ ਲੜੀਓ ਇਸ ਗੱਲ ਤੇ ਜਾਣਿਆ ਤੁਸੀਂ ਵੇਖਿਓ ਗੋਡੇ ਲੱਗਦੇ ਇਸ ਦੇਸ਼ ਚ ਜਿਹਨਾਂ ਵੀ ਤਿੱਖੇ ਤੇਵਰ ਟਰੰਪ ਵਾਂਗੂ ਕੱਢ ਲਏ ਇਹ ਦੇਸ਼ ਚ ਉਹਦੀ ਸਰਕਾਰ ਬਣੂ ਤੁਸੀਂ ਇਥੇ ਮੈਂ ਇਥੇ ਰੱਬ ਸੁੱਖ ਰੱਖੇ ਸਾਹ ਚੱਲਦੇ ਰਹਿਣ ਤੁਸੀਂ ਵੇਖਿਓ 19 ਦੀਆਂ ਇਲੈਕਸ਼ਨਾਂ ਕਿੱਧਰ ਨੂੰ ਜਾਣੀਆਂ ਮਨਤਾਜ ਜੀ ਲਾਈਨ ਨੰਬਰ 2 ਸਤਿ ਸ੍ਰੀ ਅਕਾਲ सिक्काल मोंताज जी मैं काफी दिनों से बहुत आपके प्रोग्राम में यह बात सुनती हूं और मेरे को मौका नहीं मिला फोन करने के लिए आज मैं सुनी मैं बोली में फोन करूं अभी जो पहले कॉलर आया था वो सही बोला कि बच्चे सरकार लेती है फिर ये जो रिफ्यूजी से वो खुद काम नहीं करते पर ऐ वो ਇਤਨੇ ਸਾਲ ਕੇ साल के बाद देखते हैं कि ये बच्चे बड़े होंगे करेंगे अभी देखो कोई अपना मुल्क छोड़ के रिफ्यूजी जैसे आया है आप कहते महीने में काम करें एक तो भाषा नहीं जाने एक तो शौक होता है अपना गांव दुख होता है अपना देश छोड़ के आए हैं तो ये सब टाइम क्या आपके पंजाबी इधर आए हैं बिना भाई कजिन उसके ਕੋਰ कोर सिंह करके गुस्से हैं वो वो क्या सही किए हैं हमको नहीं पता है हमको सब पता है मेरी फ्रेंड से उसका हस्बैंड डिसेबिलिटी में ऐसा ही वेलफेयर पे इतने टाइम से पड़ा है वाइफ पड़ी है सब लेते हैं इधर हम खाली रिफ्यूजीस को ब्लेम वो लोग पहले प्रैक्टिस करें क्या बोलते हैं क्योंकि पंजाबी भी गुस्से है ये मुल्क में शादी करके कितना गलती करके बहुत बुरी बात है कि एनकरेज करना वो बोलना किसी का ऐसा ही बस ममता जी ममता जी सुनो सुनो मेरी बात अभी आप मेरी सुनो आपने बोल दिया जो बोलना था सुनो मेरी बात एक पंजाबी नहीं सब लोग आना चाहते हैं और मैं किसी को नहीं बोल रहा ओ भाई डोंट दे वर्क भाई दे कैनट वर्क मेरा मेरा बात ही जो आप बोलते हो सुनो सुनो मेरी बात सुनो दोनों ना बोलो मैं फिर आप की सुनूंगा दूसरे एक हफ्ते में हम लोग कैसे काम शुरू कर लेते हैं हम लोग भी काम करते हैं ना जे लोग कौन सी मुश्किल है वो तो घर छोड़ के 3 साल हो गए लेबनान में बैठे हैं सब कुछ उसको उनको उन, उनके लिए तो सबसे खुशी की बात ये है कि वो इस कंट्री में they will work if they don't work they will when no will no sari mein sari mein aao aap aap sari mein aao main dikhaunga aap mere sath set karna time jo pehle aaye hue hain 5 5 saal ke dikhaunga aapko kaise mein kaise baithe hain unke 15 15 18 18 ke ਨੇ ਪੰਜਾਬੀ ਲੋਕ ਵੀ ਬੈਠੇ ਹੈ ਵੈਲਫੇਅਰ ਮੇ ਐਸਾ ਦਿਖਾਓ ਮੇਰੇ ਕੋ ਦਿਖਾਓ ਕੋਈ 100 ਮੇ 2 ਆਦਮੀ 3 ਆਦਮੀ 5 ਆਦਮੀ ਵੈਲਫੇਅਰ ਤੇ ਹੋਣਗੇ 100 ਮੇ 5 ਆਦਮੀ ਵੈਲਫੇਅਰ ਤੇ ਹੋਣਗੇ ਪੰਜਾਬੀ ਅੱਜ ਇੱਕ ਹੋਵੇ ਹੈ ਤੋ ਸਹੀ ਨੋ ਨੋ ਦਿਖਾਓ ਨੋ ਇਹ 5 ਔਰ 90s 100 ਮੇ 95 ਹੈ 100 ਮੇ 5 ਹੈ ਉਸਕੋ ਆਪ ਇੱਕ ਰੂਪ ਤਰ੍ਹਾਂ ਨਹੀਂ ਲੈ ਸਕਤੇ ਆਪ ਦੇਖੋ ਆਪਕੀ ਨੌਸਬੈਂਡ ਰਾਨੀਅਨ ਕਮਿਊਨਿਟੀ ਹੈ उनके साथ देखना आप लोग कैसे काम करते हैं क्या कर रहे हैं वो करते हैं, हैं वो लोग नहीं करेंगे रिफ्यूजीस तो वो लोग के बच्चे करेंगे नो no. करेंगे करेंगे ऐसा नहीं कि नहीं no. करेंगे गवर्नमेंट पागल नहीं, नहीं, नहीं है नहीं नहीं नहीं बच्चे करेंगे पर लेकिन आज से 20 साल तक उनको कौन पे करेगा ममताजिद आप आप टैक्स try to understand that welfare is yeah, is a law understand. anyone Karni can take देखो पंजाबी भी बैठे हैं मैं दैट व्हाट आई एम सेइंग इज ओनली 2 or 3% ये पंजाब सुनो सुनो मेरी बात अगर पंजाबी लेते हैं जे इसका मतलब आपने भी लेना है आप आप काम नहीं करते हैं. मैं नहीं काम मैं भी पंजाबी हूं मैं काम करता कोई भी काम नहीं करते उसका प्रॉब्लम होगा दैट्स ओनली 5% दैट्स ओनली 5% दीज आर 100% ਥੈਂਕ ਯੂ ਕੋਈ ਕੋਈ ਰੈਫਿਊਜੀ ਦਾ ਤਾਂ ਪਾਸੇ ਨੂੰ ਲੜਦੀ ਲਾਈਨ ਨੰਬਰ 3 ਬਾਈਰੂ ਜੀ ਦਾ ਖਾਲਸਾ ਵੈਜ ਜੁਗੀਪਤ ਵੈਜਰ ਜੀ ਦਾ ਖਾਲਸਾ ਵੈਜ ਜੁਗੀ ਫਤੇ ਜੀ ਬਰਖਰਦਾਰ ਇਤਰਾਜ਼ ਨਹੀਂ ਹੁਣ ਤੁਸੀਂ ਦੱਸੋ ਵੀ ਇਸ ਤਰ੍ਹਾਂ ਆਪਣਾ ਜਸਟ ਸਾਹਿਬ ਨੇ ਇਹਨੂੰ ਇਹ ਨਹੀਂ ਪਤਾ ਵੀ ਜਿਹੜੇ ਲੋਕ ਸਟਰੀਟਾਂ ਦੇ ਪਏ ਨੇ ਇੱਥੇ ਲੱਖਾਂ ਲੋਕ ਨੇ ਜਿਹੜੇ ਬਲੋ ਪਾਪਟੀ ਲਾਈ ਰਹਿੰਦੇ ਨੇ ਚਲੋ ਲਿਆਵੇ ਪਰ ਪਹਿਲੋ ਆਪਦੇ ਬੁੱਕ ਦਾ ਧਿਆਨ ਕਰੇ ਆਪਦੇ ਮੁਲਕ ਦਾ ਲੋਕਾਂ ਦਾ ਧਿਆਨ ਕਰੇ ਉਹਨਾਂ ਨੂੰ ਲਿਆ ਲਿਆ ਤੇ ਇੱਥੇ ਵਿਹਲਿਆਂ ਨੂੰ ਹੁਣ ਕਿਵੇਂ ਖਵਾਵੇਗਾ ਹੋਂ ਬੀਬੀ ਕਹਿੰਦੀ ਬੱਚੇ ਬੱਚਿਆ ਅਜੇ ਤੋਂ 20 ਸਾਲ ਤੱਕ 20 ਸਾਲ ਟੈਕਸਪੇਰਾਂ ਦੀ ਮਨੀ ਤੇ ਬੈਠੇ ਰਹਿਣਗੇ ਹੁਣ ਸਾਡੇ ਬਜ਼ੁਰਗ ਨੇ ਗਰਮੀਆਂ ਦੇ ਦਿਨਾਂ ਦੇ ਵਿੱਚ ਆ ਕੇ ਵੇਖੋ ਸਾਡੇ ਬਜ਼ੁਰਗ ਸਾਡੇ ਮਾਈਆਂ ਬਾਪ ਜਿਹੜੇ ਨੇ ਸਾਰੇ ਜਾ ਕੇ ਫਾਰਮਾਂ 'ਚ ਕੰਮ ਕਰਦੇ ਗੋਰੇ ਵੀ ਦੰਗ ਮੂੰਹ ਜੰਗਲਾ ਪਾਉਂਦੇ ਨੇ ਵੀ ਇਹਨਾਂ ਦੇ ਬਜ਼ੁਰਗ ਜਿਹੜੇ ਆ ਅਸੀਂ ਘਰਾਂ ਸੋਫਿਆਂ ਦੇ ਬੈਠੇ ਜਲਸੀਆ ਕਰੀਗੇ ਇਹ ਨਹੀਂ ਬਾਰਖਾਂ ਜੇ ਆਏ ਨਹੀਂ ਅਫਸਰ ਜੀ ਤੇ ਪੀਓ ਕੰਮ ਕਰਨ ਹੁਣ ਸਾਡੇ ਨੇ ਜਾ ਕੇ 12 ਬਾਤ ਜੀਤੀਆਂ ਅਸੀਂ ਇੱਥੇ ਜਦੋਂ ਆਏ ਆ ਇੱਥੇ ਆਉਣ ਸਾਨੂੰ ਕਿਸੇ ਮਦਦ ਕੀਤੀ ਆ ਨਾ ਆਪਦੇ ਆਪ ਪੈਰਾਂ 'ਤੇ ਖੜੇ ਹੋਏ ਆ ਮੰਦੇ ਚੰਗੇ ਕੰਮ ਕੀਤੇ ਨੇ ਹੁਣ ਵੀ ਆਪਣੇ ਲੋਕ ਅੱਗੇ ਮਿਹਣਾ ਸੈਂਦੇ ਕੋਈ ਵੈਲਫੇਅਰ ਤੇ ਨਹੀਂ ਜਾਂਦਾ ਹੁਣ ਤਾਂ ਨਹੀਂ ਮੈਨੂੰ ਪਤਾ ਆਪਣੇ ਲੋਕ ਕੇ ਮਿਹਨਾ ਸਮਝਦੇ ਸੀ ਵੈਲਫੇਅਰ ਨਹੀਂ ਜਾਣਾ ਵੈਲਫੇਅਰ ਇੱਕ ਕਿਸਮ ਦੀ ਬੈਗਿੰਗ ਆ ਹੁਣ ਵੀ ਨਹੀਂ ਹੁਣ ਵੀ ਨਹੀਂ ਭੁੱਲਰ ਸਾਹਿਬ 5% ਬੰਦੇ ਨੇ 90% 65 ਸਾਲ ਦੇ ਬਜ਼ੁਰਗ ਮਮਤਾ ਜੀ ਤੁਸੀਂ ਗਰਮੀ ਚ ਆਇਓ ਇੱਥੇ ਮੈਂ ਦਿਖਾਉਂ ਤੁਹਾਨੂੰ ਪੰਜਾਬੀ ਕੰਮ ਕਿਵੇਂ ਕਰਦੇ ਆ 65-65 ਸਾਲ ਦੀਆਂ ਮਾਮਾ ਸਾਡੀਆਂ 65-65 ਸਾਲ ਦੇ ਬਜ਼ੁਰਗ ਨੇ ਦੇਖਿਓ ਜਾ ਕੇ ਕਿਵੇਂ 베ਰੀ ਤੋੜਦੇ ਆ ਦੇਖਿਓ ਕਰੇਨ 베ਰੀ ਦੇ ਵਿੱਚ 6 6 ਫੁੱਟ ਪਾਣੀ ਦੇ ਵਿੱਚ ਕਿਸ ਤਰ੍ਹਾਂ ਉਹ 베ਰੀ ਕਢਦੇ ਐ ਜਿਹੜਾ ਬੰਦਾ ਜਿਵਾਕ ਹਰ ਸਾਲ ਪਾਠੀ ਵਾਂਗੂ ਲਾ ਕੇ ਰੱਖ ਸਕਦਾ ਉਹ ਕੰਮ ਨਹੀਂ ਕਰ ਸਕਦਾ ਗੱਲ ਇਮੀਗ੍ਰੇਸ਼ਨ ਦੀ ਨਹੀਂ ਹੈ ਜੇ ਮੈਂ ਇੱਕ ਵਾਰ ਟੋਨ ਦੇ ਵਿੱਚ ਜਿਹੜਾ ਮੇਰਾ ਬੁਰਾ ਹਾਲ ਹਾਲ ਦਾ ਬੰਬ ਡਿੱਗ ਰਹੇ ਨੇ ਤੇ ਮੈਂ ਇੱਕ ਤੰਬੂ 'ਚ ਬੈਠਾਂ ਮੈਨੂੰ ਚੱਕ ਕੇ ਲਿਆ ਕੇ ਇੱਕ 4 ਸਟਾਰ ਹੋਟਲ ਦੇ ਵਿੱਚ ਇਮੀਗ੍ਰੇਸ਼ਨ ਲਿਆ ਕੇ ਰਖਤਾ ਤੇ 에어ਪੋਰਟ ਤੋਂ ਟੈਕਸੀਆਂ ਲਿਆ ਕੇ ਮੈਨੂੰ ਆਉਂਦਿਆਂ ਨੂੰ ਘਰ ਦੇ ਵਿੱਚ ਮੇਰੀ ਗਰੋਸਰੀ ਪਈ ਐ ਇਦੋਂ ਬੜੀ ਕਿਸਮਤ ਨਹੀਂ ਹੋ ਸਕਦੀ 60-60 50-50 ਲੱਖ ਰੁਪਈਆ ਦੇ ਕੇ ਮੁੰਡੇ ਸਾਲ-ਸਾਲ ੱਟਕੇ ਖਾਂਦੇ ਆ ਕੋਈ ਕਿਤੇ ਬੈਠਾ ਜੰਗਲਾ ਵਿੱਚ ਕੋਈ ਪਰਫਾਫਾਂ ਚ ਬਿਠਾ ਤੇ ਉਹ ਚ ਬੈਠਾ ਉਹ ਆ ਕੇ ਫਿਰ ਉਹਨਾਂ ਨੇ ਰਿਫਿਊਜੀ ਪ੍ਰੋਸੈਸ 'ਚ ਲੱਗਣਾ 8-8 ਸਾਲ ਫੇਰ ਲੱਗਦੇ ਐ 25 ਸਾਲ ਦਾ ਘਰੋਂ ਤੜਿਆ 33-34 ਸਾਲ ਹੋ ਗਏ ਪਿੱਛੇ ਟੱਬਰ ਸਭ ਉੱਜੜ ਜਾਂਦਾ ਪਰ ਜਿਹੜੇ ਬੰਦੇ ਨੂੰ ਇਮੀਗ੍ਰੇਸ਼ਨ ਇੱਕ ਵਾਰ ਮਿਲ ਗਈ ਉਹ ਆ ਗਿਆ ਇੱਥੇ ਰਿਫਿਊਜੀ ਸਟੇਟਸ ਹੋ ਗਿਆ ਉਹਨੂੰ ਕਦੇ ਵਾਪਸ ਨਹੀਂ ਭੇਜਣਾ ਉਹ ਕੰਮ ਤਾਂ ਕਰੇ ਜਿਹਨੇ ਸਾਲ ਬੈਠ ਕੇ ਖਾ ਲਿਆ ਉਹਨੇ ਨਹੀਂ ਕੰਮ ਕਰਨਾ ਔਰ ਜੋ ਕਿਉਂਕਿ ਫਿਰ ਦੂਜੇ ਬੰਦੇ ਚੱਲ ਜਾਣੀ ਨਾ ਕੱਲ ਜੇ ਚਲੋ ਉਹਦੇ ਬੰਦੇ ਬੱਚੇ ਨੇ 5 ਜਾਂ 6 ਜਾਂ 7 ਬੱਚੇ ਆ ਉਹਨੂੰ ਬਿਲਕੁਲ ਜਿਹੜੇ ਲੋ ਇਨਕਮ ਫੈਮਲੀ ਆ ਉਹਨੂੰ 4450 ਡਾਲਰ ਮੈਂ ਇਹ ਨਹੀਂ ਕਹ ਰਹਾ ਹੋਰ ਨਹੀਂ ਲੈਂਦੇ ਹੋਰ ਵੀ ਲੋ ਇਨਕਮ ਵਾਲੇ ਲੈਂਦੇ ਹੋਣਗੇ ਪੰਜਾਬੀ ਵੀ ਲੈਂਦੇ ਹੋਣਗੇ ਜਿਨ੍ਹਾਂ ਦੀ ਲੋ ਇਨਕਮ ਹੈ ਪਰ ਜਿਹਦੇ ਕੋਲ 6-7 ਜਵਾਕ ਹੈ ਉਹਦੇ ਡਾਲਰ ਇੱਕ ਮਹੀਨੇ ਪਹਿਲੇ ਮਹੀਨੇ ਆ ਗਿਆ ਉਹਨੇ ਕੰਮ ਨਹੀਂ ਕਰਨਾ ਹੈ ਉਹ 1000-1200 ਰੈਂਟ ਦੇਊਗਾ 500-700 ਦੀ ਉਹ ਗਰੋਸਰੀ ਕਰੂਗਾ 1.5-2000 ਉਹਨੂੰ ਫੇਰ ਬਚਦਾ 4000 ਤਾਂ ਹਾਊਸ ਹੋਲਡ ਦੀ ਇਨਕਮ ਆ ਮੀਆਂ ਬੀਬੀ ਦੀ ਇੱਥੇ ਜਿਹੜੇ ਕੰਮ ਕਰਦੇ ਇਹ ਧਰਮ ਦੇਸ਼ ਨਹੀਂ ਮੈਂ ਗੱਲ ਕਰ ਰਿਹਾ ਮੈਂ ਰਿਫਿਊਜੀ ਕਿਤੋਂ ਵੀ ਲਿਆ ਰਹੇ ਹਾਂ ਉਹਨਾਂ ਦੀ ਗੱਲ ਕਰ ਰਿਹਾ ਮੈਂ ਮਤਾ ਮਮਤਾ ਜੀ ਤੁਸੀਂ ਇਹਨੂੰ ਨਾ ਇਸ ਤਰ੍ਹਾਂ ਨਾ ਲਿਓ ਵੀ ਮੈਂ ਕਿਸੇ ਧਰਮ ਦੀ ਗੱਲ ਕਰ ਰਿਹਾ ਮੈਂ ਧਰਮ ਦੀ ਨਹੀਂ ਗੱਲ ਕਰ ਮੈਂ ਫੈਕਟਸ ਦੀ ਗੱਲ ਕਰ ਰਿਹਾ ਕੋਈ ਵੀ ਇਮੀਗਰੈਂਟ ਹੈ ਜਦੋਂ ਇਸ ਦੇਸ਼ ਚ ਆ ਗਿਆ ਇਦੋਂ ਵੱਡੀ ਕਿਸਮਤ ਨਹੀਂ ਜੇ ਉਹ ਇਮੀਗਰੈਂਟ ਹੋ ਗਿਆ ਕੰਮ ਕਰਨਾ ਕਿਉਂ ਉਹ ਸਾਰੇ ਜੇਮ ਖਰ ਰਹੇ ਨੇ ਅਰੇ ਬਾਈਟਾ ਦੇ ਵਿੱਚ ਮਾੜਾ ਹਾਲ ਆ ਕਿੰਨਾ 3 ਸਾਲ ਹੋ ਗਏ ਲੋਕਾਂ ਦਾ ਸਤਿਆਨਾਸ਼ ਹੋਇਆ ਪਿਆ ਕੰਮ ਖੁੱਸ ਗਏ ਘਰ ਖੁੱਸ ਗਏ ਕੈਲਗਰੀ ਦਾ ਮੇਅਰ ਉਹ ਕਹਿੰਦਾ ਮੇਰਾ ਕੋਟਾ ਬਿਠਾਓ ਮੈਂ ਬੰਦੇ ਸੀਰੀਅਲ ਰੈਫਿਊਜੀ ਇੱਥੇ ਲੈ ਕੇ ਆਉਣੇ ਨੇ ਪਹਿਲਿਆਂ ਨੂੰ ਖਾਣ ਲਈ ਵੈਲਫੇਅਰ ਤੋਂ ਪੈਸੇ ਹੈ ਨਹੀਂ ਤੇ ਕਹਿੰਦਾ ਮੈਂ ਹੋਰ ਲੈ ਕੇ ਆਉਣੇ ਨੇ ਇਹਨਾਂ ਨੇ ਰਲ ਕੇ ਕੈਲਗਰੀ ਤੇ ਐਡਮਿੰਟਨ ਤੇ ਨਾਲ ਸੀ ਜਿਹੜਾ ਉੱਥੇ ਦੀ ਪ੍ਰੀਮੀਅਰ ਤਿੰਨਾਂ ਨੇ ਇਹ ਕਨਵਰਸੇਸ਼ਨ ਕੀਤੀ ਫੋਨ ਕਾਲ ਕੀਤੀਆਂ ਕਿ ਸਾਡਾ ਕੋਟਾ ਵਧਾਓ ਅਸੀਂ ਬੰਦੇ ਲਿਆਉਣੇ ਰਫਿਊਜ਼ ਹੀ ਔਰ ਇਹਦੇ ਲੈਡਮੈਂਟਮ ਦੇ ਵਿੱਚ ਨਿਤ ਪ੍ਰੋਟੈਸਟ ਹੋ ਰਹੇ ਨੇ ਮੇਨਸਟ੍ਰੀਮ ਤੇ ਗੱਲਾਂ ਹਰ ਰੋਜ਼ ਰੈਡੀ ਉੱਤੇ ਚੱਲ ਰਹੀਆਂ ਵੀ ਗਲਤ ਹੋ ਰਿਹਾ ਇੱਥੇ ਅਸੀਂ ਇਲੈਕਸ਼ਨਾਂ ਦੇ ਚੱਕਰ 'ਚ ਪ੍ਰੀਮੀਅਰ ਸਾਡੀ ਹੱਸਦੀ ਹੈ ਕਿਉਂਕਿ ਸਾਨੂੰ ਤਾਂ ਹੈ ਨਹੀਂ ਸਾਡਾ ਤਾਂ ਪਾਣੀ ਦੇ ਕੰਢੇ ਬੰਗਲਾ 2 ਬਿਲੀਅਨ ਦਾ ਹੈਗਾ ਕਲੋਨ ਨੇ 5 ਹਜ਼ਾਰ ਡਾਲਰ ਦੇ ਫੰਡ ਰੇਜ਼ਿੰਗ ਨੇ ਕਲੋਨ ਦੇ ਚ ਫੰਡ ਰੇਜ਼ਿੰਗ ਲਿਬਰਲ ਦਾ ਹੋਇਆ ਕਾਲੇ ਸ਼ੀਸ਼ੇ ਵਾਲੀਆਂ ਵੈਨਾਂ ਦੇ ਵਿੱਚ ਡੋਨਰ ਅੰਦਰ ਲੈ ਕੇ ਗਏ ਕਿਸੇ ਨੂੰ ਸ਼ੱਕ ਲਾਈ ਨਹੀਂ ਦਿਖਾਇਆ 5000 ਡਾਲਰ ਪਰ ਪਲੇਟ ਚੱਕ ਦੋ ਕੰਮ ਠੀਕਾ ਲਿਬਰ ਚਾਹੀਦੀ ਪਰ ਇੱਥੇ ਚੀਪ ਨਹੀਂ ਹੈ ਕੁਝ ਚੀਪ ਇੱਥੇ ਕਿੱਥੇ ਹੈ ਕੀ ਦੋਵਾਂਗੇ ਤੁਸੀਂ 4 ਡਾਲਰ ਦੋਵਾਂਗੇ ਘੰਟੇ ਦੇ ਨਹੀਂ ਮਿਨੀਮਮ ਜਿਹੜੇ ਵੇਜਸ ਆ ਉਹ ਦੇਣੇ ਪੈਣਗੇ ਦੁਨੀਆ ਦੇ ਵਿੱਚੋਂ ਲੋਕ ਆ ਸਕਦੇ ਆ ਪਰ ਆ ਕੇ ਕੰਮ ਤਾਂ ਕਰਨ ਉਹ ਸਿੰਘ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜਿਹੜੇ ਆ ਸੂਜੀ ਦਾ ਆਉਣੇ ਵੀ ਚਾਹੀਦੇ ਆ ਚਲੋ ਜਿੱਥੇ ਜਦੋਂ ਮੈਂ ਉਹਨਾਂ ਨੂੰ ਚਾਂਟ ਤੇ ਮਿਲਦਾ ਤੇ ਬੰਦਿਆਂ ਚੋਂ ਕਿੰਨੇ ਬੰਦੇ ਆਪਣੇ ਮਿਲੀਅਨਰ ਹੋਇਆ ਕਿੰਨਿਆਂ ਨੂੰ ਜੋਬਾਂ ਕ੍ਰੀਏਟ ਕੀਤੀਆਂ ਉਹਨਾਂ ਬੰਦਿਆਂ ਨੇ ਪੈਨਕੋਰ ਹੋ ਰਹਿੰਦੇ ਆ ਬਹੁਤ ਬੰਦੇ ਨੂੰ ਮੈਂ ਜਾਣਦਾ ਪਰ ਜਿਹੜੇ ਬੰਦੇ ਹੁਣ ਇੱਥੇ ਤੁਸੀਂ ਦੇਖ ਲਓ ਬਈ ਤੁਸੀਂ ਇੱਥੇ ਕਈ ਸਾਲ ਕੰਮ ਕੀਤਾ ਹੁੰਦਾ ਮੁਰਤੇ ਅਨਪਲਾਈਮੈਂਟ ਲੈਣਾ ਹੁੰਦਾ ਤਾਂ 5 ਮਹੀਨੇ ਜਾ ਕੇ ਤੁਸੀਂ ਤੇ ਬੜਾ ਔਖਾ ਹੁੰਦਾ ਤੇ ਬਾਕੀ ਮਿਹਨਤ ਕਰਕੇ ਰੋਟੀ ਖਾਣੀ ਚਾਹੀਦੀ ਪੰਜਾਬ ਵਾਲੇ ਹਾਲਾਤ ਆ ਨਾ ਮੁੱਖ ਮੰਤਰੀਆਂ ਨੇ ਕਿਹਾ ਇੱਥੇ ਵੀ ਕਰ ਦੇਣੀ ਹੌਲੀ ਹੌਲੀ ਇਹਨਾਂ ਨੇ ਉੱਥੇ ਲਿਆ ਕੇ ਘੜੀ ਸੂਈ ਘੜੀ ਕਰ ਦੇਣੀ ਲੋਕਾਂ ਨੇ ਤੇ ਬਾਕੀ ਜੀ ਰਿਫਿਊਜੀ ਹੋਣਾ ਕੋਈ ਮੀਣਾ ਨਹੀਂ ਹੈ ਆਪਣੇ ਲੋਕ ਵੀ ਹੋਣੇ ਆਪਾਂ ਇਹਦੇ ਵਿੱਚ ਮੇਰਾ ਖਿਆਲ ਆ ਪੰਜ-ਛਾਂ ਪੰਚ ਪੰਦੇ ਚੱਲ ਜਾਂਦੇ ਹੁੰਦੇ ਆ ਨੱਪ ਲਈ ਨਹੀਂ ਤੇ ਲਵਾਉਣਾ ਚਾਹੀਦਾ ਫੇ ਬੰਦਾ ਦੇ ਲਓ ਤੇ ਰਹਿ ਕੇ ਤੇ ਮੁੜ ਕੇ ਤੁਹਾਡਾ ਕੰਮ ਕਰਨ ਨੂੰ ਰੂਹੀ ਕਰ ਰਹੀ ਤੁਹਾਨੂੰ ਉਦਾਂ ਦੇ ਬੰਦੇ ਲਫਾਂਕੇ ਮਿਲ ਜਾਂਦੇ ਆ ਬਿਲੜ ਦੁਕਾਨ ਨੂੰ ਖੰਟੀ ਨਾਲ ਚੱਕਰ ਵਾਜਾਂਦਾ ਚਲੋ ਕੰਮ ਕਰਨ ਨੂੰ ਰੂਹੀ ਨਹੀਂ ਕਰ ਜੀ ਜਾਰਾ ਕਿਸੇ ਕੈਫੇਟੇਰੀਏ ਤੇ 6 6 ਫੁੱਟ ਕੱਦ ਨੇ ਉਹਦੇ ਸਨ ਬੰਦੇ ਨੇ ਉਹ ਕੰਮ ਕਿਉਂ ਨਹੀਂ ਕਰ ਸਕਦੇ ਕੀ ਮੁਸ਼ਕਲ ਆ ਉਹਨਾਂ ਨੂੰ ਠੀਕ ਆ ਇਸਤਰੀਆਂ ਨਹੀਂ ਕੰਮ ਕਰ ਸਕਦੀਆਂ ਉਹਨਾਂ ਦੇ ਬੱਚੇ ਨੇ ਉਹ ਸੰਭਣ ਧਰਮ ਦੇ ਲਈ ਉਹਨਾਂ ਦੇ ਜਗ੍ਹਾ ਬਣੀ ਆ ਮਸਜਿਦਾਂ ਬਣੀਆਂ ਨੇ ਗੁਰਦੁਆਰੇ ਬਣੇ ਨੇ ਮੰਦਰ ਬਣੇ ਨੇ ਜਿੱਥੋਂ ਮਰਜ਼ੀ ਲੋਕ ਆਉਣ ਗਿਰਜੇ ਬਣੇ ਨੇ ਸਿਨਗੋਗ ਬਣੇ ਨੇ ਕੋਈ ਵੀ ਰਿਫਿਊਜੀ ਬਣ ਕੇ ਆਵੇ ਦੇਸ਼ ਦੇ ਵਿੱਚ ਜੇ ਅਸੀਂ ਇਮੀਗ੍ਰੇਸ਼ਨ ਲੈ ਲਈਏ ਉਹ ਨਹੀਂ ਮੈਂ ਕਹਿੰਦਾ ਹੋਰ ਕਿਸ ਨੂੰ ਇਮੀਗ੍ਰੇਸ਼ਨ ਨਾ ਹੋਵੇ ਪਰ ਆ ਕੇ ਕੰਮ ਤਾਂ ਕਰਨ ਸਾਲ ਸਾਲ ਬਾਅਦ ਬੰਦੇ ਮਖੀਕੋ ਤੋਂ ਅਮਰੀਕਾ ਦੇ ਵਿੱਚ ਪੰਜਾਬੀ ਬੰਦੇ ਬਮਤਾਜ ਜੀ ਸੁਣਿਓ ਹੁਣ ਤੁਸੀਂ ਪੰਜਾਬੀ ਪੰਜਾਬੀ ਲੱਗੇ ਸੀ ਕਰਨ ਤੁਸੀਂ ਹੋਰ ਪਾਸੇ ਇਸ ਲੈ ਕੇ ਜਾ ਰਹੇ ਸੀ ਦੇ ਕੇ ਇਲਲੀਗਲ ਇਮੀਗ੍ਰੇਸ਼ਨ ਕਰਕੇ ਇੱਕ ਸਾਲ ਜੰਗਲਾਂ ਦੇ ਵਿੱਚ ਸਨੋਚ ਪਾਣੀਆਂ ਚ ਭੁੱਖਣ ਪਾਣੇ ਰਹਿ ਕੇ ਉਹ ਬਾਰਡਰ ਤੱਕਦੇ ਆ ਫੜੇ ਜਾਂਦੇ ਆ ਜੇਲ ਜਾਂਦੇ ਆ 6 ਮਹੀਨੇ ਬਾਅਦ ਉਹਨਾਂ ਨੂੰ ਕੋਈ ਉਹਨਾਂ ਦੇ ਬਾਉਂਡ ਦੇ ਕੇ ਛਡਾਉਂਦਾ। ਨੈਕਸਟ ਡੇ ਜਦੋਂ ਕੋਰਟਸ ਜਾਂਦੇ ਆ ਉਹ ਕਹਿੰਦੇ ਕੀ ਕਹਿੰਦੇ ਸਾਨੂੰ ਵਰਕ ਪਰਮਿਟ ਦੇਓ ਪਲੀਜ਼ ਅਸੀਂ ਕੰਮ ਕਰਨਾ। ਵਰਕ ਪਰਮਿਟ ਨਹੀਂ ਬਿਲਦੇ ਇਲੀਗਲ ਜਾਂ ਚੋਰੀ ਕੰਮ ਕਰਦੇ ਆ 10 ਡਾਲਰ ਦੀ ਜਗ੍ਹਾ 4-4 ਡਾਲਰ ਉਹਨਾਂ ਗਰੀਬਾਂ ਨੂੰ ਮੁੰਡਿਆਂ ਨੂੰ ਦਿੰਦੇ ਆ ਜਾਂ 6 ਮਹੀਨੇ ਦੇ ਪੈਸੇ ਇਕੱਠੇ ਹੋ ਜਾਂਦੇ ਆ ਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਸਾਡੇ ਬੰਦੇ ਫੜਾ ਦਿੰਦੇ। ਉੱਥੋਂ ਫੇਰ ਭੱਜਦੇ ਆ ਕਦੇ ਕੋਈ ਕੈਲੀਫੋਰਨੀਆ ਕਦੇ ਕਿਤੇ ਵਿਦਨ ਟੂ ਇਅਰ ਵਿਦਨ 3 ਇਅਰਸ ਆਪਣਾ ਕਿਸੇ ਕੋਲ ਟਰੱਕ ਹੁੰਦਾ ਆਪਣਾ ਅਗਲੇ ਕੋਲ ਟਾਊਨ ਹਾਊਸ ਹੁੰਦਾ ਤੇ ਆਪਣੇ ਪਰਿਵਾਰ ਲਈ ਅਪਲਾਈ ਕੀਤਾ ਹੁੰਦਾ ਇਹ ਕੰਮ ਹੈ ਜਿਹੜੇ ਰਿਫਿਊਜੀ ਉਹ ਵੀ ਨੇ ਠੀਕ ਹੈ ਇੱਕ ਗੋਲੇ ਡਿੱਗ ਰਹੇ ਨੇ ਇੱਕ ਜਗ੍ਹਾ ਬੰਦੇ ਉਹ ਭੁੱਖ ਨਾਲ ਮਰ ਰਹੇ ਨੇ ਉਹ ਵੀ ਜੇ ਦੇਖੀਏ ਸੀਰੀਅਸ ਤਾਂ ਅਫਗਾਨਿਸਤਾਨ ਚ ਇਤੋਂ ਵੱਧ ਬੰਬ ਗਿਰਦੇ ਨੇ ਉਹਨਾਂ ਨੂੰ ਵੀ ਲਿਆਓ ਚੱਕ ਕੇ ਫਿਰ ਠੀਕ ਹੈ ਪਾਸ਼ਾ ਦੀ ਲੋੜ ਹੈ ਸਿਆਣਪ ਦੀ ਲੋੜ ਹੈ ਏਰੀਆ ਦੱਸਣਾ ਸਾਰਾ ਕੁਝ ਪਰ ਬਹੁਤ ਸਟਾਫ ਹੈ ਇਨਾਂ ਦੇ ਕੋਲ ਮੈਡੀਕਲ ਦਾ ਅਲੱਗ ਸਟਾਫ ਹੈ ਕਾਉਂਸਲਰ ਅਲੱਗ ਤੁਰੇ ਫਿਰਦੇ ਆ ਜਿਹੜੀਆਂ ਸਰਵਿਸ ਸੋਸਾਇਟੀ ਨੇ ਉਹਨਾਂ ਨੇ ਫੰਡਿੰਗ ਲੈਣੀ ਆ ਉਹ ਵੀ ਵਿੱਚੇ ਲੱਗਦੇ ਫਰੀ ਜਾਂਦੇ ਆ ਕੋਈ ਫੋਟੋਆਂ ਖਿਚਾਉਣ ਨੂੰ ਫਰੀ ਜਾਂਦਾ ਮੈਂ ਆਹ ਦੇਤਾ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਉਹਨਾਂ ਨੂੰ ਕਹੋ ਵੀ ਆਹ ਮਿੱਤਰਾ ਲਾ ਕੇ ਆਹ ਕੰਦੂਰਾ ਪਾ ਮੜੀ ਜੀ ਵਰਦੀ ਆ ਤੈਨੂੰ ਲੈ ਕੇ ਚੱਲੀਏ ਕਿਸੇ ਨੇ ਪਿਕਚਰ ਭੇਜੀ ਕੋਈ ਪੇਂਟਰ ਆ ਮੁੰਡਾ ਪਹਿਲਾਂ 60 ਫੁੱਟ ਡਰਾਈਵੇ ਤੋਂ ਪਹਿਲਾਂ ਸਨੋ ਹਾਪ ਸਾਫ ਕੀਤੀ ਕਿਸੇ ਦੇ ਘਰੇ ਤੇ ਦੁਪਹਿਰ ਹੋ ਗਈ ਹੁਣ ਪੇਂਟ ਦੀਆਂ ਬਾਲਟੀਆਂ ਲੈ ਕੇ ਅੰਦਰ ਉਹ ਬੜਿਆ ਵੀ ਸਾਡੀ ਦਿਹਾੜੀ ਲੱਗ ਜੇ। ਸਨੋ ਉਹ ਵੀ ਕਿਸੇ ਦੇ ਘਰ ਦੀ ਸਾਫ-ਸਾਫ ਕੀਤੀ ਵੀ ਸਾਡੀ ਦਿਹਾੜੀ ਲੱਗੇ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਪੰਜਾਬੀਆਂ ਦੇ ਚਵੀਹਾਂ ਦੇਣੇ ਸੌਖੀਆਂ ਪੰਜਾਬੀਆਂ ਜਿੰਨਾ ਕੰਮ ਨਹੀਂ ਕੋਈ ਕਰ ਸਕਦਾ। ਯੈਸ ਵੈਲਫੇਅਰ ਵੀ 5-7 ਸਾਡੇ ਕੋਲ ਪਰਸੈਂਟ ਹੈਗੇ ਨਖੱਟੂ ਤੁਰੇ ਫਿਰਦੇ ਪਰ 100 'ਚੋਂ 7 ਨੇ 100 ਦੇ ਵਿੱਚੋਂ 95 100 'ਚੋਂ 100 ਨਹੀਂ ਹੈ। ਬ੍ਰਾਦਰ ਸਾਹਿਬ ਲਾਈਨ ਨੰਬਰ 2 ਹਾਂਜੀ ਗੱਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੱਲਸ ਗੱਲਸ ਸਰ ਪੰਜ ਪੁੰਜ ਵਾਲੀ ਗੱਲ ਤਾਂ ਬਹੁਤ ਜ਼ੋਰ ਆ ਸਾਡੇ ਦਾ 1% ਵੀ ਨਹੀਂ ਲੈਂਦੇ ਕਿਹੜਾ ਬੰਦਾ ਗਵਰਨਮੈਂਟ ਕੋਲੇ ਸਾਰਾ ਗਾੜਾ ਸਾਨੂੰ ਕੱਢ ਕੇ ਦੱਸਣਾ ਕਿੰਨੇ ਬੰਦੇ ਵੈਲਫੇਅਰ ਲੈਂਦੇ ਕੋਈ ਵੀ ਨਹੀਂ ਲੈਂਦਾ ਸਾਡੇ ਦਾ ਵੈਲਫੇਅਰ ਨੂੰ ਮੇਹਣਾ ਸਮਝਦੇ ਆ ਰਾਈਟ ਦੂਜੇ ਦਿਨ ਅਸੀਂ ਫਾਰਮਰਾਂ ਦੀ ਬੈਂਚ 'ਚ ਬੈਠੇ ਸੀਗੇ 2000 ਡਾਲਰ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਮਹੀਨੇ ਸਿਆਂ ਹੁਣ ਵੀ ਤੇ ਉਹ ਕਿੱਥੇ ਜਾਂਦਾ ਕਿਸੇ ਕੋਲੇ ਕੋਈ ਹਿਸਾਬ ਨਹੀਂ ਸਿਰ ਹਿਸਾਬ ਦੀ ਬਸ ਉਹ ਹੈਗਾਗਾ ਕੰਮ ਕਿਉਂ ਨਹੀਂ ਕਰ ਸਕਦੇ ਆ ਇੱਥੇ ਮੇਰੇ ਗਵਾਂਡੀ ਦੀ ਬੇਸਮੈਂਟ 'ਚ ਰਹਿੰਦਾ ਸਵਾਲੀਆ ਤੈਨੂੰ ਵਿਆਹ ਕਰਾ ਲਿਆ ਆ 10 11 ਜਵਾਕ ਆ ਉਹਦੇ ਦੋ ਘਰ ਦੋ ਘਰ ਵਾਲਿਆਂ ਪਾਸੇ ਇੱਕ ਬੇਸਮੈਂਟ ਕੰਮ ਕੀ ਨਹੀਂ ਕਰਨਾ ਤੁਸੀਂ ਦੇਖ ਲਓ ਆ ਜਾ ਕੇ ਆਪਣਾ 70 ਸੈਕਿੰਡ 126 ਦੇ ਕਹਿੰਦੇ ਨਾ ਨੈਕਸਟ ਜਨਰੇਸ਼ਨ ਕਾਰੂਗੀ ਨੈਸ ਸਾਰੀ ਡਰੱਗ ਜਿਹੜੇ ਪਹਿਲੇ ਮੁੰਡੇ ਸਾਰੇ ਡਰੱਗ ਜ ਸਾਰੇ ਜਿੰਨੇ ਵੀ ਹੈਗੇ ਕੋਈ ਕੰਮ ਮੈਨੂੰ ਦਿਖਾ ਵੀ ਕਰਦਾ ਵੀ ਕਰਦਾ ਇੱਥੇ ਕੋਈ ਨਹੀਂ ਕਰਦਾ ਬਾਹਰ ਜਾ ਕੇ ਦੇ ਚੁੱਕਾ ਵੀ ਸਾਡੇ 450 ਪਰਿਵਾਰ ਅਫਗਾਨਿਸਤਾਨ ਚ ਉਹਨਾਂ ਨੂੰ ਫਿਨੈਸ਼ਲ ਨਹੀਂ ਉੱਥੇ ਕਰਨ ਦਿੰਦੇਗੇ ਵੀ ਉਹ ਉਹਨਾਂ ਨੂੰ ਮੰਗਾ ਲਓ ਬਿਲਕੁਲ ਸ਼ਰਮਨ ਇੰਗਲਿਸ਼ ਮੀਡੀਆ ਕਰਕੇ ਇਹਦਾ ਕੋਈ ਕਰੋ ਹੱਲ ਇਹਦਾ ਬਹੁਤ ਕੰਮ ਖਰਾਬ ਹੋ ਚੱਲਿਆ ਜੀ ਥੈਂਕ ਯੂ ਵਪਾਰਕ ਸੰਦੇਸ਼ ਗੱਲ ਕਰੀ ਤੋਂ ਇੱਕ ਲਿਸਨਰ ਉਹ ਕਹਿੰਦੇ 70 ਤੋਂ 80 ਸਾਡੇ ਫੋਰ ਹੋ ਰਹੀਆਂ ਨੇ 30% ਕਮਰਸ਼ੀਅਲ ਵੈਕੈਂਸੀ ਹੈ 3% ਕਾਰਪੋਰੇਟ ਟੈਕਸ ਸਾਡੇ ਮੇਅਰ ਨੇ ਵਧਾ ਦਿੱਤਾ ਤੇ ਗੱਲਾਂ ਚੱਲ ਰਹੀਆਂ ਸੀਰੀਅਰ ਰਫਿਊਜ਼ਿੰਗ ਵਾਲੇ ਫੜ ਕੇ ਉੱਥੇ ਗਾਟੇ ਲੋਨ ਹੋਏ ਨੇ ਤੇ ਫੋਟੋਸ਼ਾਪ ਰਹੇ ਨੇ ਉਸ ਦੇ ਸਮੇਂ ਤੋਂ ਬਚ ਕੇ ਬੰਦਾ ਜੇ ਇਹ ਨਾ ਦੇਸ਼ਾਂ ਚ ਜਾ ਜਿੱਥੇ ਮਹਿਫੂਜ਼ ਹੈ ਉਹ ਕੰਮ ਕਿਉਂ ਨਹੀਂ ਕਰ ਸਕਦਾ ਰੌਲਾ ਇਸ ਗੱਲ ਦਾ ਔਰ ਇਹ ਆਪਣੇ ਇੱਕ ਪੰਜਾਬੀਆਂ ਦੇ ਜਾਂ ਇਸ ਐਥਨਿਕ ਰੇਡੀਓ ਤੇ ਨਹੀਂ ਗੱਲ ਚੱਲ ਰਹੀ ਮੇਨਸਟ੍ਰੀਮ ਦੇ ਵਿੱਚ ਸਾਰੀ ਜਗ੍ਹਾ ਅਲਬਰਟਾ ਦੇ ਹਰ ਸਟੇਸ਼ਨ ਤੇ ਇਹ ਗੱਲ ਚੱਲ ਰਹੀ ਜੱਸ ਦੀ ਜਿਸ ਦਿਨ ਦੀ ਇਹ ਗੱਲ ਹੋਈ ਹੈ ਜਿਸ ਦਿਨ ਉਹਨਾਂ ਨੂੰ ਲਿਉਣਾ ਹੈ ਉਸ ਦਿਨ ਉਹਨਾਂ ਦੀ ਲਾਈਨ ਕੀਤੀ ਜਾਵੇ ਦੋ ਦਿਨ ਆ ਕੇ ਜੈਟ ਬਿਲਕੁਲ ਕਲੀਅਰ ਕਰਕੇ ਤੀਜੇ ਦਿਨ ਪੰਜਾਬੀ ਬੰਦਾ ਕੰਮ ਤੇ ਜਾਂਦਾ ਹੈ 3rd ਉਹਨੂੰ ਵੀ ਨੀ ਅੰਗਰੇਜ਼ੀ ਆਉਂਦੀ ਹੁੰਦੀ ਉਹਨੂੰ ਵੀ ਨਹੀਂ ਪਤਾ ਹੁੰਦਾ 2x4 ਕੀ ਨੂੰ ਕਹਿੰਦੇ ਨੇ ਉਹਨੂੰ ਵੀ ਨਹੀਂ ਪਤਾ ਪਲੈਨਰ ਕੀ ਹੁੰਦਾ ਉਹਨੂੰ ਵੀ ਨਹੀਂ ਪਤਾ ਹੁੰਦਾ ਵੀ ਕਿਹੜੇ ਪਾਸੇ ਬੈਂਚ ਕਿੱਥੇ ਬਹਿਣਾ ਤੇ ਲੰਚ ਕਿਟ ਕੀ ਐ ਸਿਖਾ ਦਿੰਦੇ ਨੇ ਨਾਲ ਦੇ ਇਹ ਵੀ ਸਿੱਖ ਸਕਦੇ ਨੇ ਲਾਓ ਸਾਡੇ ਬੰਦਿਆਂ ਨਾਲ ਫਰੇਮਰ ਭੇਜੋ ਕੱਲ ਨੂੰ 5 ਬੰਦੇ ਮੈਂ ਦਿਵਾਉਣਾ ਨੌਕਰੀ ਕਿਉਂ ਨਹੀਂ ਕੰਮ ਕਰ ਸਕਦੇ ਕਿਹੜੀ ਭਾਸ਼ਾ ਦੀ ਲੋੜ ਹੈ ਕਿਹੜੀ ਲੈਂਗੁਏਜ ਦੀ ਜਿਹੜੀ ਮੁਸ਼ਕਲ ਆ ਪਿੱਛੇ ਜਿਹੜੀ ਜਗ੍ਹਾ ਦੇ ਵਿੱਚ ਬੰਦੇ ਮਰ ਰਹੇ ਨੇ ਗੋਲੀਆਂ ਲੱਗ ਰਿਹਾ ਉਸ ਜਗ੍ਹਾ ਤੋਂ ਨਿਕਲ ਕੇ ਆ ਕੇ ਉਹ ਜਗ੍ਹਾ ਨੂੰ ਮਿਸ ਕਰ ਰਹੇ ਨੇ ਗਲਤ ਐਡਵੋਕੇਸੀ ਨਾ ਕਰੋ ਇਹਨਾਂ ਦੀ ਜਿਹੜੇ ਜੇ ਹੁਣ ਅਸੀਂ ਇਹ ਗੱਲ ਤੇ ਖੜੇ ਆ ਕਿ ਜੀ ਉਹ ਫਲਾਣਾ ਗਲਤ ਕਰਦ ਰਿਹਾ ਜੀ ਉਹ ਵੀ ਗਲਤ ਕਰ ਰਿਹਾ ਤਾਂ ਇਹ ਗਲਤ ਕਰ ਰਿਹਾ ਤਾਂ ਕੀ ਮਤਲਬ ਗਲਤ ਤਾਂ ਗਲਤ ਹੈ ਮੇਰ ਤੋਂ ਵੀ ਮੈਂ ਪੁੱਛੀ ਸੀ ਗੱਲ ਪਹਿਲੇ ਦਿਨ ਜਦੋਂ ਹੈਪਨਰ ਹੋਣੀ ਆਇਆ ਸੀ ਵੀ ਇਹ ਗੈਟੋ ਬਣ ਜੂ ਇੱਕ ਏਰੀਆ ਦੇ ਵਿੱਚ ਬੰਦੇ ਇਕੱਠੇ ਹੋ ਰਹੇ ਨੇ ਅਵੈਂਚੂਰਲੀ ਕੀ ਹੋਊਗਾ ਸ਼ਹਿਰ ਦਾ ਚਿਹਰਾ ਮੋਹਰਾ ਕੀ ਹੋਊ ਬਰਕਲੇ ਦੇ ਵਿੱਚ ਕਾਲੇ ਇੱਕ ਜਗ੍ਹਾ ਰਹਿੰਦੇ ਨੇ ਉਹ ਸ਼ਹਿਰ ਚ ਦੀ ਕੋਈ ਵੜਦਾ ਬਿਟੋ ਐਟ ਦ ਚ ਰਹਿੰਦੇ ਉੱਥੇ ਕੋਈ ਬੰਦਾ ਨਹੀਂ ਵੜਦਾ ਨਿਊਯਾਰਕ ਤੇ ਬਰਕਲੈਂਡ ਦੇ ਇੱਕ ਏਰੀਆ ਚ ਰਹਿੰਦੇ ਨੇ ਉੱਥੇ ਕੋਈ ਬੰਦਾ ਨਹੀਂ ਵੜਦਾ ਇਸ ਤਰ੍ਹਾਂ ਸਾਡੀਆਂ ਕਮਿਊਨਿਟੀਆਂ ਤੇ ਪੰਜਾਬੀ ਇੱਕ ਜਗ੍ਹਾ ਹੋ ਗਏ ਗੋਰੇ ਇੱਕ ਜਗ੍ਹਾ ਹੋ ਕੇ ਮੁਸਲਮਾਨ ਇੱਕ ਜਗ੍ਹਾ ਹੋ ਗਏ ਹਿੰਦੂ ਇੱਕ ਜਗ੍ਹਾ ਹੋ ਗਏ ਸਾਡਾ ਕਿੱਦਾਂ ਨੂੰ ਇਹ ਤੇ ਸ਼ਹਿਰ ਕਿੱਦਾਂ ਨੂੰ ਬਣੂਗਾ ਕਹਿ ਜੀ ਬਣੂ ਇੱਥੇ ਦੀਆਂ ਪ੍ਰਾਪਰਟੀਆਂ ਇੱਥੇ ਦੀ ਕਮਾਈ ਅਸੀਂ ਜ਼ਿੰਦਗੀਆਂ ਇੱਥੇ ਲਾਈਆਂ ਇੱਕ ਘਰ ਬਣਾਉਣ ਲਈ ਜਦੋਂ ਉੱਥੇ ਇਹ ਚੀਜ਼ਾਂ ਆਉਣ ਉਹ ਸਾਡੇ ਜਦ ਸ਼ਹਿਰ ਦੇ ਨਾਮ ਬਦਨਾਮ ਹੋਣਗੇ ਤਾਂ ਕੀਮਤਾਂ ਕੱਟਣਗੀਆਂ ਔਰ ਕਮਿਊਨਿਟੀ ਕ੍ਰਾਈਸਿਸ ਨੇ ਇਹ ਆਹੀ ਕੋਸ਼ ਜਿਹੜਾ ਹੈ ਇੰਗਲੈਂਡ ਵਿੱਚ ਹੋਇਆ ਹੈ ਤੋਂ ਆਏ ਲੋਕ ਇਹ ਦੱਸ ਰਹੇ ਨੇ ਵੀ ਕੀ ਉੱਥੇ ਪ੍ਰੋਬਲਮ ਹੋਈ ਮੰਦੇ ਹੋਣ ਮਰਜ ਹੋਣ ਫਿਲਟਰ ਹੋ ਕਮਿਊਨਿਟੀ ਦੇ ਕੰਮ ਕਰਨ ਦਿਹਾੜੀ ਆਪਣੀ ਲਾਉਣ ਤਕੜੇ ਨੇ ਕੋਈ ਉਹਨਾਂ ਨੂੰ ਕੁਝ ਨਹੀਂ ਹੋਇਆ ਹੈ ਤਕੜੇ ਨੇ ਸੇ ਤਾਂ ਤਕੜੀਆਂ ਨੇ ਬਿਮਾਰ ਹੋ ਕੋਈ ਮੁਸ਼ਕਲ ਹੈ ਕੰਮ ਛੁੱਟ ਗਿਆ ਕੰਮ ਮਿਲਦਾ ਨਹੀਂ ਠੀਕ ਹੈ ਉਹਦੇ ਅਨਐਮਪਲੋਇਮੈਂਟ ਨੇ ਵੈਲਫੇਅਰ ਹੈ ਲਾਸਟ ਉਹ ਰਿਸੋਰਸ ਇੱਕ-ਇੱਕ ਕਹਾਣੀਆਂ ਤੁਸੀਂ ਫੁੱਟ ਫੁੱਟ ਦਾ ਗਲਾਸ ਫੜਿਆ ਸਟਾਰ ਬਗਦਾ ਤੇ ਹੱਥੋਂ ਸਟਿੱਕਟ ਫੜੀ ਆ ਦਿਨ ਫੁੱਟ ਮਾਲ ਚ ਇਧਰੋਂ ਇਧਰੋਂ ਤੁਰ ਜਾਂਦੇ ਪਾਈਆਂ ਸ਼ੂਕ ਦੂਜੇ ਪਾਏ ਨੇ ਤੇ ਕੱਪੜੇ ਉੱਥੇ ਦੇ ਲਾਹਤ ਤੇ ਗੱਲਾਂ ਕਰਦੇ ਫਿਰਦੇ ਹੋ ਇਹ ਕਿਹੜੇ ਪਾਸੇ ਹੋ ਗਵਰਨਮੈਂਟ ਐ ਇਸ ਖਾਤਰ ਪਰ ਆਮ ਲੋਕ ਇਸ ਤੰਗ ਹੋਣਗੇ ਜੇ ਇਹਨਾਂ ਨੂੰ ਰੱਖਣੇ ਫਿਰ ਵੈਸਟ ਬੈਂਡ ਕੋਵਰ ਬਣਾ ਕੇ ਦੋ ਹਾਊਸਿੰਗ ਯੂਨਿਟ ਤੇ ਉੱਥੇ ਰੱਖੋ ਮਾੜਾ ਪਤਾ ਲੱਗੇ ਵੀ ਤੁਹਾਨੂੰ ਲੋਕ ਰੱਖਣ ਦਿੰਦੇ ਆ ਉੱਥੇ ਜੇ ਨਾ ਟਾਊਨ ਹਾਲ ਮੀਟਿੰਗ ਤੇ ਨਾ ਜਿਹੜੇ ਸ਼ਹਿਰ ਨੂੰ ਜਿਹੜਾ ਮਿਊਨਿਸਪੈਲਿਟੀ ਦਾ ਆਫਿਸ ਆ ਸਿਟੀ ਦਾ ਜੇ ਮਹਿੰਗੇ ਸ਼ਹਿਰਾਂ ਦੇ ਵਿੱਚ ਕੋਈ ਰੱਖੋ ਉੱਥੇ ਫੇਰ ਪਤਾ ਲੱਗੇ ਘਰ ਤਾਂ ਕਰੇ ਸਰੀ ਚ ਕਿਹੜਾ ਸਸਤੀ ਜ਼ਮੀਨ ਸਜੀਤ ਸਿੰਘ ਲਾਈਨ ਨੰਬਰ 2 ਸਸੀ ਦਾ ਬਾਈ ਜੀ ਸਸੀਕਾਲ ਜੀ ਬਾਈ ਜੀ ਇਹਨਾਂ ਨੂੰ ਜਿਹੜਾ ਨਾ ਇਸ ਸਾਲ ਦੀ ਸੁਣ ਮੈਂ ਦੇ ਵਿੱਚ ਨਾ ਦੋ ਬੰਦੇ ਆ ਗਏ ਤੇ ਦੋ ਦੇ ਪੈਸੇ ਕਹਿੰਦੇ ਸੀ ਕੈਸ਼ ਨਹੀਂ ਲੈਣੇ ਆ ਕੈਸ਼ ਲੈਣੇ ਆ ਵੀ ਚੈੱਕ ਤੁਸੀਂ ਵੀ ਲੈ ਲਓ ਕਹਿੰਦੇ ਨਹੀਂ ਸਾਡਾ ਵੇਅਰ ਕੱਟ ਹੋ ਜਾਊਗਾ ਇਹ ਤੇ ਕਲੋਵਡੇਲ ਦੀ ਗੱਲ ਆਏ ਬਾਈ ਦੋ ਜਾਣੇ ਦੋ ਦਿਨ ਕੰਮ ਕੀਤਾ ਤੀਜੇ ਦਿਨੋਂ ਵੜੇ ਹੀ ਨਹੀਂ ਆਣਗੇ ਹੂੰ ਅਹੀਂ ਅਹੀਂ ਨਾ ਟੈਕਸ ਪੇ ਕਰਦੇ ਹਰੇਕ ਸਾਲ ਇਹ ਓਵਰ 40% ਟੈਕਸ ਪੇ ਕਰਦੇ ਆ ਨਾ ਸਾਡਾ ਕਿਤੇ ਬੈਗ ਕੇ 4000 ਡਾਲਰ ਤੱਕ ਹੈ ਕਰ ਰਹੇ ਆ ਜਿਹੜੇ ਰਿਫਿਊਜੀ ਲੈਂਦੇ ਕੰਮ ਦਿਨ ਅਸੀਂ ਦਿਨੇ ਕੰਮ ਭੇਜਣ ਧੰਨਵਾਦ ਜੀ ਪ੍ਰੋਗਰਾਮ ਦੇ ਸਤਿਕਾਰ ਗਗਨ ਸਿੰਘ 604 349 13 13 ਜੁਨਟ 109 85 40 120 ਸਟਰੀਟ ਸਕਾਟ ਰੋਡ ਦੇ ਉੱਪਰ ਜਿੱਥੇ ਭਾਰਤ ਦਾ ਵੀਜ਼ਾ ਮਿਲਦਾ ਉੱਥੇ ਗਗਨ ਸਿੰਘ ਦਾ ਦਸਤਰਾ ਪੰਜਾਬ ਫੋਰੈਕਸ ਡਾਲਰਾਂ ਦੇ ਰੁਪਏ ਰੁਪਈਆਂ ਦੇ ਡਾਲਰ ਬਣਾ ਕੇ ਭੇਜਣਿਆ ਗਗਨ ਸਿੰਘ ਪ੍ਰੋਸਸ ਦਾ ਦੂਜਾ ਨਾਮ ਕੋਈ ਟਰੱਕ ਲੈਣਾ ਨਾ ਨਵਾਂ ਪੁਰਾਣਾ ਡੰਪ ਟਰੱਕ 5 ਟਨ ਉਦੋਂ ਛੋਟਾ ਕੋਈ ਕੰਮ ਲਈ ਪਿਕਅਪ ਚਾਹੀਦਾ ਜਾਂ ਫਾਰਮ ਦੀ ਕੋਈ ਮਸ਼ੀਨਰੀ ਚਾਹੀਦੀ ਆ ਕੰਸਟਰਕਸ਼ਨ ਦਾ ਕੰਮ ਆ ਉੱਥੇ ਮਸ਼ੀਨਰੀ ਚਾਹੀਦੀ ਹੈ ਕੋਈ ਵੀ ਕਮਰਸ਼ੀਅਲ ਲੋਨ ਆ ਮਸ਼ੀਨਰੀ ਦਾ ਤਾਂ ਪੀਲ ਫਾਈਨੈਂਸ਼ੀਅਲ ਦੇ ਕੁਲਦੀਪ ਸਿੰਘ ਗਿੱਲ ਰੂਮੀ ਨੂੰ ਯਾਦ ਰੱਖਿਓ 6045036969 64 7475 100 35 ਸਟਰੀਟ ਕੁਲਦੀਪ ਸਿੰਘ ਗਿੱਲ ਰੂਮੀ ਹਰਮਨ ਸਿੰਘ ਜੀ ਲਾਈਨ ਨੰਬਰ 3 ਗਿੱਲ ਦਾ ਸਤਿਕਾਰ ਸਤਿਕਾਰ ਜੀ ਜੇਕਰ ਮਰ ਉਹ ڈالر ਦਾ ਜਿਹਦਾ ਸਿਸਟਮ ਵਿੱਚ ਕੋਈ ਕਮੀ ਹੈਗੀ ਸਾਡੇ ਇੱਥੇ ਅਮਰੀਕਾ ਜਿੱਦਾਂ ਨਹੀਂ ਹੈਗੇ ਤੁਹਾਨੂੰ ਉਹਨਾਂ ਨੂੰ ਫਾਰਮ ਫਿਲ ਅਪ ਕਰਨਾ ਪੈਂਦਾ ਦੱਸਣਾ ਪੈਂਦਾ ਕਿ ਕਮਾਰ ਕਰਨੀ ਪੈਂਦੀ ਕਿਹੜੇ ਸਟੋਰ ਚ ਗਏ ਆ ਕਿਹੜੀ ਜੌਬ ਲੱਭੀ ਆ ਤੁਸੀਂ ਹਫ਼ਤੇ ਬਾਅਦ ਤਿੰਨਾਂ ਮਹੀਨਿਆਂ ਬਾਅਦ ਫਿਰ ਉਹਨਾਂ ਦੀ ਮੀਟਿੰਗ ਕੀਤੀ ਜਾਂਦੀ ਆ ਤੇਰੇ ਕੀਤਾ ਜਾਂਦਾ ਕਿਸ ਤਰੀਕੇ ਨਾਲ ਤੁਸੀਂ ਜੌਬ ਲੱਭਣੀ ਹੈਗੀ ਆ ਕੁਝ ਸਮਾਂ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਜੌਬ ਨਹੀਂ ਲੱਭਦੇ ਤਾਂ ਫਿਰ ਦੁਬਾਰੇ ਦੁਬਾਰਾ ਤੋਂ ਫਿਰ ਸ਼ੁਰੂ ਕੀਤਾ ਜਾਂਦਾ ਵੈਸੇ ਤੇ 6 ਕਿ ਮਹੀਨਿਆਂ ਬਾਅਦ 3 ਕਿ ਮਹੀਨਿਆਂ ਬਾਅਦ ਜੌਬ ਜਾਂਦੀ ਆ ਤੇ ਇਹ ਮੇਰੇ ਘਰ ਚ ਮੇਰੇ ਘਰ ਘਰ ਇਹ ਇਹਨਾਂ ਮੁਲਕਾਂ ਦੇ ਲੜਕੀਆਂ ਕੰਮ ਕਰਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਆਦਮੀ ਕੀ ਕੰਮ ਕਰਦੇ ਆ ਡਰਾਈਵਰ ਆ ਕਿੱਥੇ ਕੀ ਉਹ ਕਹਿੰਦੇ ਬੇਲੇ ਬੈਠੇ ਘਰ ਇਹ ਕੁਝ ਮੇਰੇ ਖਿਆਲ ਮਾਈਂਡਡ ਵੀ ਹੈਗਾ ਕੁਝ ਬੰਦੇ ਇਹ ਜਿਸ ਤਰ੍ਹਾਂ ਤੁਸੀਂ ਬਹੁਤ ਵਾਰੀ ਕਿਹਾ ਹੈ ਮੈਂ ਤੇ ਨਾ ਨਹੀਂ ਬਾਰ ਬਾਰ ਕਹਿਣਾ ਚੰਗਾ ਨਹੀਂ ਲੱਗਦਾ ਸੋ ਸਾਡੇ ਕੋਲ ਨੇਪਾਲੀਆਂ ਦਾ ਇੱਕ ਅਪਾਰਟਮੈਂਟ ਹੈਗਾ ਮੇਰੇ ਘਰ ਘਰ ਦੇ ਕੋਲ ਉਹਨਾਂ ਨੂੰ ਆਫਰ ਦਿੱਤੀ ਜਾਂਦੀ ਆ ਕਿ ਅਗਰ ਤੁਸੀਂ ਇਹਨਾਂ ਨੂੰ ਆਪਣੇ ਸਾਥੀਆਂ ਨੂੰ ਜੋਬ ਲੱਭ ਕੇ ਦਿਓ ਤੇ ਉਹਦਾ ਪਰਸੈਂਟੇਜ ਤੁਹਾਨੂੰ ਦਿੱਤਾ ਜਾਊਗਾ ਤੇ ਜਿਸ ਕਾਰ ਵਿੱਚ ਤੁਸੀਂ ਲੈ ਕੇ ਇਹਨਾਂ ਨੂੰ ਚਾਹਦੇ ਹੋ ਤੇ ਉਹਦੇ ਪੈਸੇ ਵੀ ਇਹ ਪੇ ਕਰਨਗੇ ਥੋੜੇ ਜਿੰਨੇ ਕੀ ਗਵਰਨਮੈਂਟ ਨੇ ਲਾਏ ਹੈਗੇ ਆ ਸੋ ਇਹ ਸਿਸਟਮ ਬਣਾਇਆ ਹੈ ਇਥੇ ਅਮਰੀਕਾ ਦੇ ਵਿੱਚ ਤੇ ਬਾਕੀ ਨਹੀਂ ਪੰਜਾਬੀਆਂ ਦੀ ਗੱਲ ਜਾਣਦੇ ਹੋ ਬੜਾ ਭਾਵੇਂ ਅਸੀਂ ਆਪਣੇ ਮੂੰਹ ਤੇ ਗੱਲੇ ਸਜਦੀ ਨਹੀਂ ਹੈਗੀ ਸਾਡੇ ਦੇ ਮੁੰਡੇ ਯਾਰ ਪਹਿਲਾਂ ਹੀ ਆਉਂਦੇ ਪਹਿਲਾਂ ਵਰਕ ਪਰਮਿਟ ਰਾਤ ਨੂੰ ਵਰਕ ਪਰਮਿਟ ਦੀ ਸਲਾਹ ਕਰਦੇ ਆ ਮੁੰਡੇ ਤਕੂਮੇ ਤੋਂ ਆਉਂਦੇ ਇੱਥੇ ਸਾਡੇ ਕੋਲ ਉਹ ਸਵੇਰ ਦੁਹੇ ਦਿਨ ਪੁੱਛਦੇ ਆ ਭਾਜੀ ਟਰੱਕ ਦਾ ਲਾਇਸੈਂਸ ਕਿਸ ਤਰ੍ਹਾਂ ਮਿਲਦਾ ਆ ਕਾਰ ਦਾ ਕਿਸ ਤਰ੍ਹਾਂ ਮਿਲਦਾ ਆ ਵੈਸੇ ਆਪਣੀ ਕਿਫਤਆਪ ਲਈ ਹੁੰਦੀ ਤਾਂ ਵੈਸੇ ਤਾਂ ਹੀ ਤੇ ਕਮਾਈ ਕਰੀ ਜਾਂਦੇ ਪੰਜਾਬੀ ਪਛਮੀ ਗੱਲ ਨਹੀਂ ਵਾ ਕਾਲ ਸਾਬ ਜੀ ਕਰਮਜੀਤ ਸਿੰਘ ਜੀ ਲਾਈਨ ਨੰਬਰ 4 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੇਰੀ ਥੋੜੀ ਜਿਹੀ ਪਰਸਨਲ ਸਟੋਰੀ ਆ ਮੈਂ ਸਾਲ ਪਹਿਲਾਂ ਮੈਂ ਇੱਥੇ ਆਇਆ ਕੈਨੇਡਾ ਦੇ ਵਿੱਚ ਮਤਲਬ ਕੁਦਰਤੀ ਚਾਰਕ ਸਾਲ ਹੈ ਮੈਨੂੰ ਕੰਮ ਕਰਨ ਦੇ ਨੂੰ ਹੋਏ ਨਹੀਂ ਸੀ ਜਦੋਂ ਕਿਸੇ ਰੀਜ਼ਨ ਕਰਕੇ ਮੇਰੀਆਂ ਅੱਖਾਂ ਖਰਾਬ ਹੋ ਗਈਆਂ ਇੱਕ ਟੋਟਲੀ ਬਲਾਈਂਡ ਹੋ ਗਈ ਇੱਕ ਚੋਂ ਮੈਨੂੰ 50% ਦੇਖਦਾ ਸੀ ਮਤਲਬ ਜੇ ਆਪਾਂ ਕਹੀਏ ਕਿ ਦੋ ਅੱਖਾਂ ਚੋਂ ਮੈਨੂੰ ਅੱਧੀ ਚੋਂ ਦੇਖਦਾ ਸੀ ਹੈਨਾ ਪਰ ਮੈਂ ਅਪਲਾਈ ਕੀਤਾ ਸੀ ਪੀਪੀ ਦਾ ਜਿੱਦਾਂ ਵੀ ਆਪਣੇ ਕੈਨੇਡਾ ਪੈਨਸ਼ਨ ਪਲਾਨ ਜਿੰਨਾ ਕ ਮੈਂ ਕੰਮ ਕੀਤਾ ਤੇਰਾ ਚਾਰ ਸਾਲ ਨੀ ਹੋਏ ਤੈਨੂੰ ਦੇ ਨੀ ਸਕਦੇ 1 ਸਾਲ ਮੈਨੂੰ ਘਰੇ ਬਹਿਣਾ ਪਿਆ ਕਿ ਮਤਲਬ ਕੋਈ ਪੈਸਾ ਨਹੀਂ ਸਿਉਂਦਾ ਮਿਨੀਮਮ ਵੇਜ ਤੇ ਅਸੀਂ ਉਹਦੇ ਨਾਲ ਹੀ ਘਰ ਚਲਾਇਆ ਉਸ ਤੋਂ ਬਾਅਦ ਸਾਲ ਬਾਅਦ ਜਦੋਂ ਮੈਨੂੰ ਰਿਅਲਾਈਜ਼ ਹੋ ਗਿਆ ਕਿ ਅੱਖ ਠੀਕ ਠੋਕ ਨਹੀਂ ਹੋਣੀ ਮੈਨੂੰ ਇਸੇ ਤਰੀਕੇ ਤੁਹਾਨੂੰ ਆਦਤ ਪੈ ਜਾਂਦੀ ਆ ਫਿਰ ਤੁਸੀਂ ਉਹਦੇ ਜਿੰਨਾ ਕ ਦਿਸਦਾ ਉਨਾਂ ਕੀ ਮਤਲਬ ਤੁਹਾਨੂੰ ਵਧੀਆ ਲੱਗਣ ਲੱਗ ਜਾਂਦਾ ਫਿਰ ਮੈਂ ਉਹਦੇ ਨਾਲ ਵਾਲੇ ਕੰਮੇ ਤਾਂ ਸਾਲ 7 ਸਾਲ ਤੋਂ ਬਾਅਦ ਜਦੋਂ ਟੋਟਲੀ ਮੇਰੀ ਅੱਖ ਮਤਲਬ ਮੈਨੂੰ ਬਹੁਤ ਘੱਟ ਤੇ ਮੈਨੂੰ ਕੰਮ ਛੱਡਣਾ ਹੀ ਪਿਆ ਮੈਂ ਕਰੇ ਨਹੀਂ ਸੀ ਸਕਦਾ ਇਵਨ ਡਰਾਈਵ ਵੀ ਨਹੀਂ ਮੇਤੋਂ ਹੁਣ ਹੁੰਦੀ ਆ ਮੈਨੂੰ ਇਹਨਾਂ ਨੇ ਸੀਪੀਪੀ ਮਿਲਦੀ ਆ ਮੈਂ ਥੈਂਕਸ ਕਰਨਾ ਕਿ ਮੈਨੂੰ ਮਿਲਦਾ ਜੇ ਆਪਾਂ ਪੰਜਾਬ 'ਚ ਹੁੰਦੇ ਤਾਂ ਉਹ ਵੀ ਨਹੀਂ ਸੀ ਮਿਲਣਾ ਕੋਈ ਇਹਨਾਂ ਦੇ ਲਾਅ ਦੇ ਤਹਾਰਨਾ ਜੋ ਵੀ ਹੈਗਾ ਪਰ ਮੇਰੇ ਵਰਗੇ ਹੋਰ ਕਿੰਨੇ ਹੋਣਗੇ ਜਿਹੜੇ ਮਤਲਬ ਕੰਮ ਨਹੀਂ ਕਰਨਾ ਚਾਹੁੰਦੇ ਆ ਪਰ ਕਿਸੇ ਵੀ ਹੈਲਥ ਰੀਜ਼ਨ ਦੇ ਨਾਲ ਉਹ ਨਹੀਂ ਕਰ ਸਕਦੇ ਉਹਨਾਂ ਨੂੰ ਤਾਂ ਇਹ ਦਿੰਦੇ ਆ 5-500 ਪਈਆ ਜਿੱਦਾਂ ਤੁਸੀਂ ਕੰਨੀ ਵਾਰੀ ਕਹੇ ਹਟੇਆਂ ਕਿ ਹਟੇ ਕੱਟੇ ਹਟੇ ਕੱਟੇ ਫਿਰ ਇਹ ਲੋਕ ਕਿਉਂ ਨਹੀਂ ਕਰ ਸਕਦੇ ਇਹ ਫਿਰ ਜਦੋਂ ਇਦਾਂ ਇਹਨਾਂ ਨੂੰ 4 4000 ਦਿੰਦੇ ਲਈ ਕੰਮ ਵੀ ਕੀਤਾ ਉਹ ਕੁਦਰਤ ਨੇ ਸਾਡੇ ਤੋਂ ਖੋ ਲਿਆ ਕਰ ਸਕਦੇ ਇਹ ਚੀਜ਼ ਫਿਰ ਸਾਨੂੰ ਹੋਰ ਤੰਗ ਕਰਦੀ ਡੈਸਪੀਰੇਟ ਕਰਦੀ ਕਿ ਅਸੀਂ ਕਿੱਥੇ ਗਲਤੀ ਕਰ ਦਿੱਤੀ ਥੈਂਕ ਯੂ ਹਰਜੀਤ ਪਾਜੀ ਠੀਕ ਹੈ ਪਿਛਲੇ ਦਿਨੀ ਮੈਂ ਅੱਗੇ ਵੀ ਦੱਸਿਆ ਕਿ ਡਾਕੂਮੈਂਟਰੀ ਸੀ ਇੱਕ ਸਾਲ ਉਹ ਵੇਟ ਕਰਦਾ ਰਿਹਾ ਸੀ ਮੁੰਡਾ ਅਹੀਲੇ ਦਿਨ ਉਹ 362 ਦੇ ਲੋਕ ਇਹ ਕਹਿੰਦਾ ਕੰਮ ਤੇ ਜਾਣਾ ਪੈਣਾ ਕੰਮ ਲਈ ਤੁਰ ਪਿਆ। ਕੰਮ ਲਈ ਜਦ ਤੁਰਿਆ ਆਥਣੂਆ ਕਹਿੰਦਾ ਮੈਨੂੰ ਤਾਂ ਕੰਮ ਨਹੀਂ ਮਿਲਿਆ। ਦੋ ਜਗ੍ਹਾ ਤਿੰਨ ਜਗ੍ਹਾ ਨੈਕਸਟ ਕੀ ਹੈ? ਗਵਰਨਮੈਂਟ ਨੂੰ ਦੇਣਾ ਪੈਣਾ ਵੈਲਫੇਅਰ ਬਸ। ਜਿੰਦਰ ਸਿੰਘ ਜੀ ਲਾਈਨ ਨੰਬਰ 5। ਜਲਸਾ ਸਤਿਕਾਰ ਜੀ। ਸਤਿਕਾਰ ਜੀ। ਮੈਂ ਬਾਪ ਜੀ ਇਸ ਗੱਲ ਦੇ ਹੱਕ 'ਚ ਆ ਜਿਹੜਾ ਬੰਦਾ ਚਾਹੇ ਉਹ ਵੈਲਫੇਅਰ ਆ ਅਨਪਾਇੰਟਮੈਂਟ ਆ ਚਾਹੇ ਕਿਸੇ ਤਰੀਕੇ ਦਾ ਵੀ ਗਵਰਨਮੈਂਟ ਤੋਂ ਬੈਨੀਫਿਟ ਲਈਦਾ ਉਹਦਾ ਸਿਕੰਜਾ ਜੇ ਤਾਂ ਦੇਖੋ ਜਿਹੜਾ ਜਾਇਜ ਹੈ ਚਾਹੇ ਕੋਈ ਆ ਇਹ ਨੇ ਆਪਣੇ ਨੇ ਗੋਰੇ ਨੇ ਕੋਈ ਆ ਜਾਇਜ ਆ ਉਹਨੂੰ ਮਿਲੇ ਜਿਹੜਾ ਬੰਦਾ ਉਹਨੂੰ ਉਹ ਆਪਣੇ ਬੰਦੇ ਵਿੱਚ ਥੋੜੇ ਬਹੁਤੇ ਕਰਦੇ ਆ ਚਾਹੇ ਇਹ ਤਾਂ ਕਰਦੇ ਆ ਹੋਰ ਵੀ ਉਹਨਾਂ ਨੂੰ ਇਹ ਹੋਵੇ ਸਿਕੰਜਾ ਹੀ ਐਸਾ ਕੱਥਿਆ ਹੋਵੇ ਕਿ ਤੁਹਾਨੂੰ ਸਿਟੀਜ਼ਨਸ਼ਿਪ ਤੱਕ ਵੀ ਤੁਹਾਡੀ ਲੈ ਲੈਣ ਕੱਲਾ ਪੀਆਰ ਮੁਰਤੇ ਦੇ ਦੇਣ ਗਵਰਨਮੈਂਟ ਤੇ ਇੰਨਾ ਬੋਝ ਹੈ ਜੀ ਲੋਕੀ ਹਜ਼ਾਰ ਹਜ਼ਾਰ ਡਾਲਰ ਕਈ ਬੰਦੇ ਜਿਹੜੇ ਟਰੱਕਾਂ ਵਾਲੇ ਵੀ ਆ ਸਿੰਗਲ ਆ ਉਹ ਟੈਕ ਮਹੀਨੇ ਦਾ ਪੇ ਕਰ ਰਹੇ ਆ ਕਿ ਜਿਨ੍ਹਾਂ ਨੇ ਇੰਨਾ ਔਖੇ ਹੋ ਕੇ ਤੇ ਡੱਕਾ ਇੱਕ ਨਹੀਂ ਮਿਲਿਆ 15-15 ਸਾਲ ਹੋ ਗਏ ਇਹੋ ਜਿਹੇ ਮੁੰਡੇ ਵੀ ਆਪਾਂ ਜਾਣਦੇ ਆ ਜਿਹੜੇ ਸਾਡੀ ਕੰਪਨੀ ਚ ਵੀ ਕੰਮ ਕਰਦੇ ਸਿੰਗਲ ਆ 15-15 ਸਾਲ ਹੋ ਗਏ ਇੰਨਾ ਟੈਕਸ ਪੇ ਕਰਦੇ 10-10 ਹਜ਼ਾਰ ਮਹੀਨੇ ਦਾ ਸੌਰੀ ਸਾਲ ਦਾ ਤੇ ਇਹਨਾਂ ਨੂੰ ਤੇ ਇਹੀ ਹੋਵੇ ਕੰਜਾ ਕਸਿਆ ਜਾਵੇ ਬਡੇਪੇ ਜਾ ਕੇ ਵੀ ਕੋਈ ਟੈਨਸ਼ਨ ਨਾ ਮਿਲੇ ਫੇਰ ਬੰਦਾ ਡਰੂਗਾ ਇਸ ਤੋਂ ਇਸ ਤੋਂ ਕੋਈ ਡਰਦਾਗਾ ਜਦੋਂ ਇਸ ਤੋਂ ਬਿਨਾ ਦਾ ਫਰਕ ਬੰਦੇ ਨੇ ਲਈ ਜਾਣਾ ਤੇ ਬੰਦੇ ਵੀ ਰਹਿ ਜਾਂਦੇ ਆ ਆ ਫਲਾਨਾ ਆਓ ਇੱਦਾਂ ਕਰ ਲਾ ਇਦਾਂ ਕਰ ਲਾ ਕੰਜਾ ਕਸਿਆ ਜਾਵੇ ਫੇਰ ਗੱਲ ਬਣਨੀ ਥੈਂਕ ਯੂ ਇੱਕ ਲੱਖ ਡਾਲਰ ਕਮਾਉਣ ਵਾਲਾ 30% ਬ੍ਰੈਕਟ ਚ ਆਉਂਦਾ 30000 ਦਾ ਉਹਦਾ ਸਿੱਧਾ ਟੈਕਸ ਜਾਂਦਾ ਪਲੱਸ ਉਹ ਪ੍ਰਾਪਰਟੀ ਟ੍ਰਾਂਸਫਰ ਟੈਕਸ ਜੀ ਉਸੇ ਬਾਅਦ ਉਹਦਾ ਜੀਐਸਟੀ ਜੀ ਪੀਐਸਟੀ ਜੀ ਐਮਐਸਪੀ ਆ ਬਿਜਲੀ ਦਾ ਬਿੱਲ ਆ ਗੈਸ ਦਾ ਬਿੱਲ ਆ ਗਰੋਸਰੀ ਦੀ 1 ਲੱਖ ਦੇ ਵਿੱਚੋਂ 65000 60000 ਡਾਲਰ ਉਹਦਾ ਟੈਕਸ ਦੇ ਵਿੱਚ ਜਾਂਦਾ 60% ਔਰ ਜਦ ਉਥੋਂ ਲਿਉਣੇ ਨੇ ਉਸ ਦਿਨ ਗੱਲ ਮਨਾਈ ਜਾਵੇ ਵੀ ਬਾਈ ਜੀ ਕੰਮ ਕਰਨਾ ਪੈਣਾ ਹਫਤੇ ਬਾਅਦ ਆ ਜੇ ਨਾ ਲਿਟਦੇ ਆਉਣ ਵੀ ਮੈਂ ਕੰਮ ਕਰੂੰਗਾ ਮੈਨੂੰ ਲੈ ਕੇ ਚੱਲ ਜਿੱਥੇ ਹਫਤਾ ਹਫਤਾ ਨਹਾਉਣ ਨੂੰ ਪਾਣੀ ਨਹੀਂ ਮਿਲਦਾ ਜਿੱਥੇ ਟੈਂਟ ਦੇ ਵਿੱਚ 10-10 ਜਣੇ ਪਏ ਐ ਜਿੱਥੇ ਦੁੱਖ ਹੈ ਕਿਸੇ ਕਾਰ ਕਰਕੇ ਰਾਜਿਆਂ ਦੀ ਲੜਾਈ ਹੈ ਦੇਸ਼ਾਂ ਦਾ ਟਕੜਾ ਉਹ ਬੇਕਾਰ ਹੋ ਗਏ ਲੋਕ ਮੈਂ ਉਹਨਾਂ ਦੇ ਨਾਲ ਆਂ ਸੀ ਹੈ ਸੀਰੀਅਨ ਰਫਿਊਜੀ ਦੇ ਲਈ ਜਿੰਨੇ ਟਾਕ ਸ਼ੋਅ ਆਪਾਂ ਕੀਤੇ ਵੀ ਵਰਦੇ ਨੇ ਪੰਪਪੁਰ ਪੁਰਾ ਬੱਚੇ ਲੋਕ ਉੱਜੜ ਗਏ ਅਸਾਦ ਨੇ ਕੀ ਕੀਤਾ ਬਹੁਤ ਜ਼ੁਲਮ ਕੀਤਾ ਗਏ ਸਿਟੀ ਆਪਣੇ ਬੰਦੇ ਮਾਰਤੇ ਜੇ ਉਹਨਾਂ ਨੂੰ ਚੰਗੀ ਜਗ੍ਹਾ ਹਿੱਸਾ ਮਿਨਿਸਟਰ ਹੁਣ ਜਿਹੜਾ ਬਣਾਇਆ ਜਸਟਨ ਟਰੂਡੋ ਨੇ ਉਹ ਰਿਫਿਊਜੀ ਆਇਆ ਬੰਦਾ ਉਹ ਵਕੀਲ ਹੈ ਉਸ ਦੀ ਵੀ ਗੱਲ ਚੱਲ ਰਹੀ ਆ ਵੀ ਉਸ ਇੱਕ ਬਿਲਕੁਲ ਸੌਫਟ ਤੌਰ ਤੇ ਰੱਖ ਕੇ ਟਰੂਡੋ ਨੇ ਕੰਮ ਜਿੰਨੇ ਵੀ ਰਿਫਿਊਜੀ ਆਲਾ ਕੰਮ ਸਾਰਾ ਉਹਦੇ ਰਾਹੀਂ ਕਰਨਾ ਵੀ ਲਿਆਈ ਚੱਲ ਤੱਕ ਦੇ ਜਿੰਨਾ ਕੰਮ ਚਾਹੀਦਾ ਹੈ ਫਿਰ ਬਹੁਤ ਫਿਰ ਤਾਂ ਮਿਹਨਤੀ ਬੰਦੇ ਆ ਬਹੁਤ ਤਿਆਰ ਨੇ ਦੇਓ ਪੰਜਾਬ ਦੇ ਵਿੱਚ ਮਾੜੀ ਜੀ ਗੱਲ ਵੀ ਚਲੋ ਵੀ ਇੰਨੇ-ਇੰਨੇ ਨਾਲੇ ਤਾਂ ਦਿਓ ਸਾਨੂੰ ਪੈਸੇ ਤੇ ਜਾ ਕੇ ਕੰਮ ਕਰਨਾ ਪਊ ਨਾਲੇ ਫ੍ਰੀ ਨਹੀਂ ਆਉਣਗੇ 10-10 ਹਜ਼ਾਰ ਡਾਲਰ ਲਾ ਦਿਓ ਪਰਸਨ ਵੀ 10-10 ਹਜ਼ਾਰ ਦੇਣਾ ਪਊ ਇਹ ਸਾਡੀ ਦੇਸ਼ ਦੀ ਫੀਸ ਹੈ ਉਹਦੇ ਬਾਅਦ ਜਾ ਕੇ ਕੰਮ ਕਰਨਾ ਪਊ ਚਾਹੇ ਵਰਕ ਵੀਜ਼ੇ ਤੇ ਹੀ ਲੈ ਆਓ ਵੀ 4 ਸਾਲ ਲਾ ਕੇ ਵਾਪਸ ਭੇਜਣਾ ਪਊ। ਦਾ ਸਾਲਾਂ ਨੂੰ ਵੀ ਆਉਣ ਨੂੰ ਤਿਆਰ ਨੇ ਵੀ ਹਾਂ ਸਾਨੂੰ ਲੈ ਚੱਲੋ 4 ਸਾਲਾਂ ਬਾਅਦ ਮੋੜ ਦੇ। ਭੁੱਖਾ ਕਰ ਦੇਣਗੇ 4 ਸਾਲਾਂ ਦੇ ਵਿੱਚ। 2-2 ਸਾਲ ਦੇ ਵਰਕ ਪਰਮਿਟ ਤੇ ਮਿਡਲ ਈਸਟ ਦੇ ਵਿੱਚ ਲੇਬਰ ਜਿਹੜੀ ਸੀ ਮੁੰਡੇ ਕੰਮ ਕਰਦੇ ਵਰਕਰ ਉਹਨਾਂ ਨੂੰ 40 ਤੋਂ 50 ਰਿਆਲ ਮਿਲਦੇ ਸੀ ਉਸ ਸਮੇਂ ਮੈਂ 1992 ਦੀ ਗੱਲ ਦੱਸਦਾ ਤੁਹਾਨੂੰ। ਤੇ 50 ਰੁਪਏ 'ਚ ਉਹ ਰਿਆਲ ਚੱਲਦਾ ਸੀ 2500 ਰੁਪਏ ਦੇ ਵਿੱਚ ਮਸਕਟ 'ਚ ਕੰਮ ਕਰਨਾ ਆਇਆ ਸੀ ਲੇਬਰ ਦੇ ਮੁੰਡੇ ਮਸਾ ਉਹਨਾਂ ਦੇ 70 ਡਾਲਰ ਰਿਆਲ ਮਿਲਦੇ ਸੀ 30 33500 ਰੁਪਇਆ ਕੰਪਨੀ ਦੀ ਟਿਕਟ ਕੰਪਨੀ ਦੀ ਰੋਟੀ ਕੰਪਨੀ ਦੇ ਸ਼ੂ ਤੇ ਬੰਕ ਬੈੱਡ ਲਾਏ ਹੁੰਦੇ ਸੀ ਵਿਚਾਰੇ ਦੇਖ ਲਓ 3000 ਦੀ ਸੇਵਿੰਗ 24 ਮਹੀਨਿਆਂ ਬਾਅਦ 70 75000 ਰੁਪਇਆ ਲੈ ਕੇ ਪੰਜਾਬ ਨੂੰ ਮੁੜਦੇ ਸੀ ਮਹੀਨਾ ਰਹਿ ਕੇ ਦੁਬਾਰਾ ਫੇਰ ਬਾਸ ਪੰਜਾਬੀਆਂ ਦੀ ਜੇ ਕੋਈ ਕਹਿੰਦਾ ਨਾ ਵੀ ਪੰਜਾਬੀਆਂ ਦੀ ਅਸੀਂ ਪੰਜਾਬੀਆਂ ਨੇ ਦੱਸ ਇਹ ਕੰਟਰੀ ਨਹੀਂ ਜੇ ਬਾਹਰ ਦੇ ਵਿੱਚ ਭੇਜੇ ਪਾਕਿਸਤਾਨ ਜਾ ਜੇ ਲਖੀਨਪੁਰ ਖੀਰੀਵਾਲ ਨੂੰ ਟੀਰੀਵਾਲ ਨੂੰ ਭੇਜਤੇ ਉਹ ਸਾਫ਼ ਕਰਤਾ ਨਾਲੇ ਅਜਾੜਾ ਹੋਇਆ ਮੁਰਮੁਰ ਕੇ ਦੁਆਰਾ ਬਾਹਰ ਦੇ ਵਿੱਚੋਂ ਚਲੋ ਮੋੜੋ ਲੱਖ 10 ਲੱਖ ਬੰਦਾ ਮਰ ਗਿਆ ਉਥੋਂ ਪੱਟੇ ਕਿਨੀਆਂ ਦੇ ਵਿੱਚ ਪੂਰੀ ਜਨਰੇਸ਼ਨ ਬੈਠੀ ਸੀ ਦੀ ਉਮੀਦ ਨੇ ਸਾਰੇ ਓਜਾੜ ਤੇ ਦੁਆਰਾ ਫੇਰ ਅੱਜ ਪੌਚਮੀਆਂ ਉਨੀਆਂ ਪੱਗਾਂ ਦੇ ਸਿੰਘ ਸਰਦਾਰ ਉਨੀਆਂ ਹੀ ਪਿਆਰੀ ਫੇ ਆ ਕੇ ਜ਼ੀਰੋ ਤੋਂ ਸ਼ੁਰੂ ਸਿਰਫ ਬਣਾਉਣ ਤੱਕ ਦੇ ਨਾਲ ਈਦੀ ਉਮੀਦ ਨੇ ਕਰੋੜਪਤੀ ਬੰਦੇ ਉੱਥੋਂ ਕੱਢ ਦਿੱਤੇ ਹੈ ਪੰਜਾਬੀਆਂ ਵਰਗੇ ਬਣਨਾ ਬਹੁਤ ਔਖਾ ਦੇਖਿਓ ਕਦੇ ਮੈਨੂੰ ਦਿਖਾਇਓ ਕੋਈ ਕਮਿਊਨਿਟੀ ਦਿਹਾੜੀ ਦਾ ਮਿਲੀਅਨ ਮਿਲੀਅਨ ਡਾਲਰ ਇਕੱਠਾ ਕਰਦੀ ਲਿਆਇਓ ਮੈਨੂੰ ਦਿਓ ਕੋਈ ਭੇਜਿਓ ਅੱਜ ਮੈਨੂੰ ਈਮੇਲ ਤੇ ਭੇਜੋ ਕੋਈ ਕੀ ਇੱਕ ਕਮਿਊਨਿਟੀ ਕੋਈ ਦੱਸੋ ਮੈਨੂੰ ਕੈਨੇਡਾ ਦੀ ਜਿਹਨੇ ਮਿਲੀਅਨ ਡਾਲਰ ਦੀ ਹਾੜੀ ਚ ਇਕੱਠਾ ਕੀਤਾ ਹੋਵੇ। ਖੇਤੀ ਦੇ ਲਈ 3 ਮਿਲੀਅਨ ਡਾਲਰ ਪੰਜਾਬੀਆਂ ਨੇ ਇਕੱਠਾ ਕੀਤਾ ਇਨ 3 ਡੇਸ 3 ਮਿਲੀਅਨ ਡਾਲਰ। ਖੇਤੀ ਕੋਈ ਪੰਜਾਬੀ ਨਹੀਂ ਸੀ ਰਹਿੰਦੇ ਖੇਤੀਆਂ ਦੇ ਏਸ਼ੀਅਨ ਲੋਕਾਂ ਲਈ 3 ਮਿਲੀਅਨ ਡਾਲਰ ਇਨ 3 ਡੇਸ ਆਹ ਮੰਚ ਤੋਂ 1550 ਤੋਂ। ਕਹਿਣਾ ਬਹੁਤ ਸੌਖਾ ਪੰਜਾਬੀ ਪੰਜਾਬੀ ਪੰਜਾਬੀਆਂ ਵਰਗਾ ਬਣਨਾ ਬਹੁਤ ਔਖਾ। ਜਤਿੰਦਰ ਸਿੰਘ ਜੀ ਲਾਈਨ ਨੰਬਰ 2 ਅਜੇ ਗੱਲ ਦਾ ਸਸਿਕਾ ਸਸਿਕਾ ਜੀ ਬੜਾ ਸੈਂਸਟਿਵ ਟਾਪਿਕ ਹੈ ਔਰ ਇਹਦੀ ਬੜੀ ਜ਼ਰੂਰਤ ਹੈ ਮੈਂ ਵੀ ਇੱਕ ਝੁਕਵੇਂ ਤੋਂ ਹਿਸਟਰੀਸ ਨਾਲ ਲੱਗਾ 1992 ਜਦੋਂ ਕਰਤਿਆ ਸਿੰਘ ਸਾਹਿਬ ਅਜੇ ਲੀਡਰ ਨਹੀਂ ਸੀ ਬਣੇ ਤਾਂ ਇੱਥੇ ਆਪਣੇ ਉਹ ਪੰਜਾਬੀ ਕਮਿਊਨਿਟੀ ਚ ਆਏ ਸਹੀ ਕਿ ਉਸ ਟਾਈਮ ਤੇ ਭਿੰ ਸਿੰਘ ਬਿੰਗ ਹੋਣੀ ਸਰੀਜ ਜਾਂ ਹੋਰ ਜਿੰਨੇ ਵੀ ਟੌਪ ਦੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਉਹਨਾਂ ਨੂੰ ਇੱਕ ਦੋ ਸਬਡਿਵੀਜ਼ਨਾਂ ਦਿਖਾਈਆਂ ਪੰਜਾਬੀਆਂ ਦੀ ਜਿੱਥੇ ਆਪਣੇ ਮੁੰਡੇ ਛੱਤਾਂ 'ਤੇ ਕਿਦਾਂ ਕੰਮ ਕਰ ਰਹੇ ਆ ਕਿਦਾਂ ਪ੍ਰੇਮਿੰਗ ਕਰ ਰਹੇ ਆ ਕਿਦਾਂ ਡਰਾਈਵਲ ਕਰ ਰਹੇ ਆ ਉਹ ਕੁਦਰਤੀ ਡਿਵੈਲਪਰ ਵੀ ਪੰਜਾਬੀ ਦਾ ਸਾਰੇ ਕੰਮ ਕਰਨ ਵਾਲੇ ਵੀ ਪੰਜਾਬੀ ਤਾਂ ਕਸ਼ਿਆਨ ਸਾਹਿਬ ਕਹਿੰਦੇ ਵੀ ਤੁਸੀਂ ਇੱਥੇ ਕੋਈ ਪੰਜਾਬੀ ਇੰਸਟੀਚਿਊਟ ਖੋਲੀ ਆ ਜਿੱਥੇ ਤੁਸੀਂ ਟ੍ਰੇਨਿੰਗ ਦਿੰਦੇ ਆ ਤਾਂ ਸਾਰੇ ਹੱਸ ਪਏ ਕਹਿੰਦੇ ਨਹੀਂ ਮਰਾ ਸਾਡੀ ਕੋਈ ਇੰਸਟੀਚਿਊਟ ਨਹੀਂ ਆ ਸਾਡੀ ਇੰਸਟੀਚਿਊਟ ਦਾ ਮਜਬੂਰੀ ਆ ਔਰ ਗੁਰੂ ਦੇ ਸਿਖਿਆ ਵੀ ਇਹ ਕੰਮ ਕਰਕੇ ਹੀ ਰਾਜੀ ਆ ਹੋਰ ਕੁਛ ਕਰਕੇ ਰਾਜੀ ਨਹੀਂ ਔਰ ਕਛਿਆ ਸਾਹਿਬ ਇੰਨਾ ਇੰਪ੍ਰੈਸ ਹੋਏ ਉਸ ਗੱਲ ਤੋਂ ਮਨੋ ਵੀ ਚਾ ਉਹਨਾਂ ਕੋ ਗੱਲ ਯਾਦ ਰੱਖੀ ਇਹ ਚਾਹੇ ਇੱਕ ਐਗਜ਼ਾਮਪਲ ਆ ਪਰ ਮੈਂ ਚਲੋ ਟਰੂਡੋ ਸਾਹਿਬ ਦੀ ਮੈਂਡੇਟ ਸੀ ਉਹਨਾਂ ਨੇ ਆਪਣੀ ਇਲੈਕਸ਼ਨ ਚ ਗਿਆ ਸੀ ਮੈਸੂਲੀ ਜੀ ਲੈਣੇ ਆ ਲੈ ਲੈ ਪਰ ਇਹ ਵੈਰੀ ਅਨਫੋਰਚੂਨੇਟ ਵੀ ਇਹ ਆਖੀ ਇਦਾਂ ਕਰ ਰਹੇ ਆ ਬਹੁਤ ਜਿੰਨੇ ਵੀ ਦੁਨੀਆ ਦੇ ਇਮੀਗ੍ਰੈਂਟ ਸਾਰੇ ਹੀ ਮੰਨੇ ਆ ਹਾਰਡਵਰ ਕਰਨ ਲਈ ਚਾਹੇ ਉਹ ਮੈਕਸੀਕਨ ਹੋਣ ਚਾਹੇ ਉਹ ਪਰ ਇਟਸ ਵੈਰੀ ਵੈਰੀ ਸੈਡ ਵੀ ਸਿਚੁਏਸ਼ਨ ਪਾਰਲੀਮੈਂਟ ਸੁਣ ਰਹੇ ਆ ਸਾਰੇ ਹੀ ਸੁਣਦੇ ਆ ਜੇ ਨਹੀਂ ਵੀ ਸੁਣਦੇ ਤੇ ਕੋਈ ਲਿਆ ਕੇ ਜਿਹੜੇ ਫਿਊਚਰ ਚ ਆਉਣੇ ਆ ਉਹਨਾਂ ਦਾ ਕੁਝ ਨਾ ਕੁਝ ਕਰ ਲੈ ਅਦਰਵਾਈਜ਼ ਤਾਂ ਬਹੁਤ ਜ਼ਿਆਦਾ ਡੈਮੇਜ ਹੋ ਰਿਹਾ ਇਟਸ ਵੈਰੀ ਵੈਰੀ ਹਾਰਮਫੁਲ ਔਰ ਬਹੁਤ ਸੈਡ ਆ ਵੀ ਕੈਨੇਡਾ ਵਰਗਾ ਕੰਪੈਸ਼ਨੇਟ ਕੰਟਰੀ ਜਿਹੜਾ ਆ ਉਹ ਇਦਾਂ ਦੇ ਲੋਕਾਂ ਦੇ ਬਦੀਰੇ ਕਰਕੇ ਕਿਤੇ ਰਫੂਜੀ ਲੈਣੇ ਨਾ ਬੰਦ ਲਾ ਦੇਵੇ ਇਹ ਵੀ ਇੱਕ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਇਹ ਜਿਹੜਾ ਤੁਹਾਡਾ ਟੌਪਿਕ ਹੈ ਮੈਂ ਇਹਦੀ ਬਹੁਤ ਸ਼ਲਾਘਾ ਕਰਦਾ ਔਰ ਇਹਦੇ ਕਰ ਰਹੇ ਮੈਨੂੰ ਲਾਈਨ ਲੈਣ ਲਈ ਇੱਕ ਘੰਟਾ ਲੱਗ ਗਿਆ ਮੈਂ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਕਿਉਂਕਿ ਤੁਹਾਡਾ ਟੌਪਿਕ ਇੰਨਾ ਸੋਹਣਾ ਹੈ ਧੰਪਾ ਜੀ ਥੈਂਕ ਯੂ ਸੋ ਮੱਚ ਮੈਂ ਜਿਹੜੇ ਹੁਣ ਪਹਿਲੇ ਆ ਗਏ ਉਹਨਾਂ ਨੂੰ ਸੈਟਲ ਕਰੋ ਸੈਂਡਮੈਨ ਸਾਰਾ ਭਰਿਆ ਪਿਆ ਗਿਲਫਰਡ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਚ ਰਹਿੰਦੇ ਹੋਏ ਇੱਕ ਰਾਤ ਨਹੀਂ ਆਪਾਂ ਉਹਨਾਂ ਵਿੱਚ ਕੱਟੀ ਕਿਉਂਕਿ 100 ਡਾਲਰ ਆਦੇ ਹੜੇ ਰਾਤ ਦਾ ਇੱਕ ਦਾ ਉੱਪਰੋਂ ਥੱਲੇ ਤੱਕ ਸਭ ਕਿਉਂਕਿ ਉਹਨਾਂ ਨੂੰ ਗਵਰਨਮੈਂਟ ਮਹੀਨੇ ਦੇ ਦਿੰਦੀ ਆ ਫਿੱਟਾ ਕੰਮ ਉਥੋਂ ਉਤਰਦੇ ਆ ਚੱਲ ਗੱਲ ਫਰਮਾਤ ਇੱਧਰ ਉੱਧਰ ਗੱਲਾਂ ਬਾਤਾਂ ਤੇ ਫੋਨ ਨੂੰ ਚਿੰਬੜੇ ਹੋਇਆ ਤੁਸੀਂ ਜਾ ਕੇ ਦੇਖੋ ਤਾਂ ਸਹੀ ਇੱਕ ਵਾਰ ਤੇ ਇਹ ਬੰਦਿਆਂ ਨੇ ਆਉਣ ਵਾਲਿਆਂ ਦਾ ਰਾਹ ਬੰਦ ਕਰਨਾ 5 ਦਿਨਾਂ ਦੀਆਂ ਰੋਟੀਆਂ ਤੇ 4 ਸਬਜ਼ੀਆਂ ਇਕੱਠੀਆਂ ਬਣਾ ਕੇ ਨਾ ਇੱਥੋਂ ਟਰੱਕ ਦੀ ਸੈਲਫ ਵਜੇ ਸਰੀ ਦੇ ਵਿੱਚੋਂ 10ਵੇਂ ਦਿਨ ਟਰੱਕ ਆ ਕੇ ਸਰੀ 'ਚ ਖੜਦਾ ਹੈ ਇੱਥੋਂ ਕੈਲੀਫੋਰਨੀਆ ਕੈਲੀਫੋਰਨੀਆ ਟ੍ਰਾਂਟੋ ਟ੍ਰਾਂਟੋ ਤੋਂ ਵਾਪਸ 4-4 ਦਿਨ ਦੀਆਂ ਠੰਡੀਆਂ ਰੋਟੀਆਂ ਪੰਜਾਬੀ ਬੰਦੇ ਖਾਂਦੇ ਆ ਜਿੰਨਾ ਪੰਜਾਬੀ ਪੰਜਾਬੀ ਹੁੰਦੀ ਹੈ 4-4 ਦਿਨ ਦੀਆਂ ਠੰਡੀਆਂ ਰੋਟੀਆਂ ਖਾ ਕੇ ਉਹ ਤਾਂ ਆਪਣਾ ਟੱਬਰ ਪਾਲਦੇ ਆ ਤੇ ਇਸ ਸ਼ਹਿਰ ਦੇ ਵਿੱਚ 4-4 5-5000 ਸਾਲ ਦਾ ਪ੍ਰਾਪਰਟੀ ਟੈਕਸ ਦਿੰਦੇ ਆ ਉਹਦਾ ਪ੍ਰਾਪਰਟੀ ਟ੍ਰਾਂਸਫਰ ਟੈਕਸ ਜੇ ਮਿਲੀਅਨ ਡਾਲਰ ਦਾ ਕੋਈ ਘਰ ਲੈਂਦੇ ਆ ਤਾਂ ਉਹਦੇ ਬਾਅਦ 12 12 14 14 ਹਜ਼ਾਰ ਦਿੰਦੇ ਆ ਸਰਕਾਰ ਨੂੰ ਉਹ ਉਹਦੇ ਬਾਅਦ ਜੀਐਸਟੀ ਪੀਐਸਟੀ ਦਿੰਦੇ ਠੀਕ ਹੈ ਕੁਛ ਮਾਰੇ ਹੋਣਗੇ ਪਰ 90% ਉਹ ਨਹੀਂ ਜਿਹੜੇ ਸਵੇਰੇ 8 ਵਜੇ ਚੱਕ ਲੈਂਦੇ ਆ ਲੰਚ ਕਿਟ ਤੇ 7 ਵਜੇ ਆਉਂਦੇ ਆ 6 ਦਿਨ 7 7ਵੇਂ ਦਿਨ ਅੱਧ ਚ ਤਾਂ ਇੱਥੇ ਜ਼ਿੰਦਗੀ ਹੈ ਕਿ ਉਹ ਸਾਰਾ ਜਿੰਨਾ ਕਮਾਉਂਦੇ ਘਰੇ ਲੈਂਦੇ ਨਹੀਂ ਅੱਧਾ ਉਹਦੇ ਚ ਗੌਰਮੇਟ ਨੂੰ ਜਾਂ ਸਭਜਿੰਦਰ ਸਿੰਘ ਲਾਈਨ ਨੰਬਰ 3 ਪਰਮਵੀਰ ਸਿੰਘ ਲਾਈਨ ਨੰਬਰ 5 ਸਸੀ ਗਾ ਗਿਲਸਾ ਤੁਹਾਨੂੰ ਸਸੀ ਕਾ ਬਾਈ ਜੀ ਆਦਾ ਗਿਲਸਾ ਤੁਸੀਂ ਬਹੁਤ ਵਧੀਆ ਟੌਪਿਕ ਲੈ ਕੇ ਆਂਦਾ ਇੱਕਦਮ ਜਿਹੜੀ ਪ੍ਰੋਬਲਮ ਸੀਗੀ ਇਹ ਤੁਹਾਡੀ ਬਹੁਤ ਮੈਂ ਕਹਿੰਨਾ ਖਾਸੀਅਤ ਆ ਕਿ ਜਿਹੜੇ ਵੀ ਕੋਈ ਮਤਲਬ ਮਸਲਾ ਹੁੰਦਾ ਤੇ ਆਧਾਰ ਤੇ ਥੈਂਕ ਯੂ ਤੁਹਾਡਾ ਇਸ ਗੱਲ ਲਈ ਥੈਂਕ ਯੂ ਤੇ ਜਿਹੜਾ ਰਫਿਜੀਓ ਵਾਲਾ ਇਹ ਗਿਰੂ ਸਾਹਿਬ ਕੰਮ ਆ ਮੈਂ ਛੋਟੀ ਐਗਜ਼ਾਮਪਲ ਲੈਂਦਾ ਮੁੰਡਾ ਇੱਕ ਕਹਿ ਕੇ ਗਿਆ ਉਹ ਕੰਮ ਕਰਦਾ ਬੰਦਾ ਉਹ ਕਹਿੰਦਾ ਮੇਰੀ ਨਿਗਾਹ 'ਚ ਫਰਕ ਪੈ ਗਿਆ ਉਹਨੂੰ ਬੈਲ ਫਿਰ ਮਿਲਦੀ 500 ਰੁਪਈਆ ਪਰ ਦੂਜੇ ਬੰਦਿਆਂ ਨੂੰ ਉਹਨਾਂ ਨੂੰ 3-3 4 ਹਜ਼ਾਰ ਡਾਲਰ ਮਿਲਦਾ ਤੇ ਜਿਹੜੇ ਬੰਦੇ ਨੇ ਕੰਮ ਕੀਤਾ ਉਹਨੂੰ ਤਾਂ ਮਿਲਦਾ 500 ਇਹਨਾਂ ਨੂੰ ਕਿਉਂ ਨਹੀਂ 500 ਦਿੱਤਾ ਜਾਂਦਾ ਇਹਨਾਂ ਨੂੰ ਕਿਉਂ 4-4000 ਦਿੱਤਾ ਜਾਂਦਾ ਇਹ ਕਿਹੜੀ ਗਵਰਨਮੈਂਟ ਦੀ ਪਾਲਿਸੀ ਟੈਕਸ ਪੇ ਕੀਤਾ ਹੋਇਆ ਔਰ ਟਰੱਕ ਡਰਾਈਵਰ ਤੁਸੀਂ ਦੇ ਲੋ ਇਹਨਾਂ ਨੂੰ ਇੱਕ ਪੀਆਰ ਮਿਲ ਗਈ ਪੀਆਰ ਲੈਣ ਦੇ ਲਈ ਵੀ ਤੁਸੀਂ ਸਾਰੀਆਂ ਗੱਲਾਂ ਜਿਵੇਂ ਸਾਬ ਬੰਨਣਾ ਕਰੇ ਦਿੱਤੀਆਂ ਟਰੱਕ ਚਲਾਉਂਦੇ ਬੰਦੇ ਪੰਜ ਦਿਨ ਘਰੋਂ ਬਾਹਰ ਰਹਿੰਦੇ ਆ ਉਹ 15-1500 18-1800 ਡਾਲਰ ਉਹਨਾਂ ਦਾ ਮਹੀਨੇ ਦਾ ਟੈਕਸ ਜਾਂਦਾ ਗਵਰਨਮੈਂਟ ਨੂੰ ਔਰ ਅਜੇ ਉਹ ਪੀਆਰ ਨਹੀਂ ਹੈਗੇ ਹਜੇ ਆਹ ਲਾਈਨ ਦੇ ਵਿੱਚ ਲੱਗੇ ਹੋਏ ਆ ਪੇਪਰ ਲੈਣ ਦੇ ਲਈ ਔਰ ਇਹਨਾਂ ਨੂੰ ਉੱਤਰਦਿਆਂ ਨੂੰ ਪੇਪਰ ਮਿਲ ਗਿਆ ਲੇਕਿਨ ਇਹ ਕੰਮ ਨਹੀਂ ਕਰਨਾ ਚਾਹਦੇ ਤੇ ਕੰਮ ਨਹੀਂ ਕਿਉਂ ਨਹੀਂ ਕਰ ਸਕਦੇ ਜੇ ਪੈਸੇ ਮਿਲਦੇ ਦੂਜਾ ਸਾਰਾ ਕੁਝ ਆ ਬੱਚਿਆਂ ਨੂੰ ਜੋ ਵੈਲਫੇਅਰ ਮਿਲਦੀ ਤਾਂ ਕੰਮ ਤਾਂ ਐਟਲੀਸ ਇਹਨਾਂ ਨੂੰ ਕਰਨਾ ਚਾਹੀਦਾ ਔਰ ਇੱਕ ਆਪਣੇ ਮੈਡਮ ਹੋਣੀ ਚਾਹ ਕੇ ਗਏ ਪੰਜਾਬੀਆਂ ਦੀ ਗੱਲ ਉਹ ਕਹਿੰਦੇ ਔਰ ਪੰਜਾਬੀ ਬੰਦੇ ਗੱਲ ਤੁਸੀਂ ਗੱਲਾਂ ਸਾਰੀਆਂ ਮੈਂਸ਼ਨ ਕਰਤੀਆਂ 70 70 60 60 ਹਜ਼ਾਰ ਡਾਲਰ ਖਰਚ ਕੇ ਲੋਕ ਕਿ ਆਗੇ تھے ਕੰਮ ਕਰਨੇ ਨੂੰ ਤਿਆਰ ਆ ਪੰਜਾਬੀ ਜਿਨ੍ਹਾਂ ਨੂੰ ਉਹ ਕਹਿੰਦੇ ਪੰਜਾਬੀ ਆ ਕੇ ਵੈਲਫੇਅਰਾਂ ਲੈਂਦੇ ਆ ਮੈਂ ਕਹਿਆ ਵੀ ਮੈਂ ਉਹੀ ਕਹਿ ਰਿਹਾ ਸੀ ਕੱਲ ਜਿਹੜਾ ਵਰਕ ਪਰਮਿਟ ਆ ਹੁਣ ਲੇਬਰ ਮਾਰਕੀਟ ਤੇ opinion LMI ਤੇ ਪਤਾ ਨਹੀਂ ਕੀ ਕੰਸਲਟੈਂਟ 50 50 60 60000 ਡਾਲਰ ਲੈ ਰਹੇ ਨੇ ਪੰਜਾਬੀਆਂ ਤੋਂ ਇੱਥੇ ਬੰਦਾ ਲਿਆਉਣ ਦਾ 60000 ਡਾਲਰ ਟੈਂਪਰੇਰੀ ਵਰਕ ਪਰਮਿਟ ਤੇ ਔਰ ਉਹਨੇ ਕੰਮ ਪੂਰਾ ਕਰਨਾ ਰਣਜੀਤ ਦਿਵਾਲ ਨੇ ਇੱਕ ਬੀਟੀ ਹੈ ਜਾਂ ਬੇਟਾ ਉਸਨੇ ਪੀ ਈਮੇਲ ਭੇਜੀ ਆ ਉਹ ਕਹਿੰਦੀ ਮਾਈ ਫਾਦਰ ਵਾਸ ਬੈਂਕ ਮੈਨੇਜਰ ਇਨ ਇੰਡੀਆ ਵੀ ਮੂਵਡ ਹੇਅਰ ਬੈਕ ਇਨ 1995 ਹੀ ਵਰਕਡ ਔਨ 베ਰੀ ਫਾਰਮ ਐਪਲ ਔਚਰਡ ਐਂਡ ਬਿਕਮ ਗਾਰਡਨਰ ਹੀ ਹੈਡ ਸ਼ੋਲਡਰ ਸਰਜਰੀ ਬੈਕ ਇਨ 2002 ਡਿਊ ਟੂ ਹੈਵੀ ਜੌਬ ਹਿਸ ਸਰਜਨ ਐਡਵਾਈਸਡ ਹਿਮ ਥੈਟ ਹੀ ਵੁਡਨਟ ਬੀ ਏਬਲ ਟੂ ਵਰਕ ਆਫਟਰ ਸਰਜਰੀ ਆਫਟਰ ਸਰਜਰੀ ਮਾਈ ਪਾਪਾ ਜੀ ਡਿਡ ਸ਼ੋਲਡਰ ਐਕਸਰਸਾਈਜ਼ ਐਵਰੀ 10 ਮਿੰਟਸ for 1 2 20 minutes as per advice from his surgeon for 6 months after 6 months he was back to work he retired 2 years ago thanks akhir de vich jehda sakartha da awareness di gall please apne aap nu aware karo te ede risk jehde concerned jehde toade mp ne jehde votan di rajneeti hun kholne ge inna nu vi dasso ਕੰਮਕੂ ਤੁਹਾਡਾ ਵੀ ਠੱਪਿਆ ਜਾਣਾ ਜਿਹੜਾ ਤੁਸੀਂ ਫਿਰਦੇ ਆ ਨਾ ਕੰਨ ਚ ਲਾ ਕੇ ਕੋੜ ਕਿੜਲਾ ਜਾ ਉੱਥੇ ਬੈਠ ਕੇ ਤਾਰੀਆਂ ਮਾਰਦੇ ਆ ਜੇ ਨਾ ਕਮਿਊਨਿਟੀ ਦਾ ਕੀਤਾ ਲੋਕ ਉਜੜ ਰਹੇ ਨੇ ਇੱਕ ਮੁੰਡੇ ਨੇ ਆਤਮ ਹੱਤਿਆ ਕੀਤੀ ਹੈ ਟਰੱਕਰ ਨੇ ਲੋਕਲ ਕੰਟੇਨਰ ਨੇ ਦੂਜਾ ਜਾ ਕੇ ਉਹਨੇ ਬਣੀ ਬੜਾਈ ਗੱਡੀ ਉਸ ਤਰ੍ਹਾਂ ਹੀ ਗਰਾਜ ਚ ਖੜ ਗਿਆ ਤੇ ਗੱਡੀ ਨਾ ਬੰਦ ਕੀਤੀ ਡਿਪਰੈਸ਼ਨ ਚ ਇੱਕ ਡੇਕੇ ਉੱਪਰੋਂ ਗਰਦਨ ਦੀ ਸੰਗਲੀ ਤੜਾਈ ਬੈਠਾ ਸਟ੍ਰੈਸਰ ਨੇ ਲੋਕ ਘਰ ਚਲਾਉਣ ਨੂੰ ਕੰਮ ਮਿਲ ਨਹੀਂ ਲਿਆ ਵੀਜ਼ਾ ਰੇਟ ਆ ਕੇ ਕਰਕੇ ਤੇ ਹੁਣ ਸਰਕਾਰ ਬਦਲੀ ਹੋਈ ਹੈ ਜਿਹੜੇ ਸੋ ਕਾਲ ਕਹਿੰਦੇ ਨੇ ਅਸੀਂ ਕਮਿਊਨਿਟੀ 'ਚ ਇੱਥੇ ਹੀ ਕਮਿਊਨਿਟੀ 'ਚ ਰਹੇ ਆਂ ਤੇ ਕਮਿਊਨਿਟੀ ਦੇ ਜਵਾਕ ਪਾਲਿਆ ਉਹਨਾਂ ਨੂੰ ਹੁਣ ਜਵਾਕ ਜਿਹੜੇ ਰੋੜ ਰਹੇ ਨੇ ਦਿਖਣੇ ਚਾਹੀਦੇ ਔਰ ਲੀਡ ਲੈਣੀ ਚਾਹੀਦੀ ਹੈ ਜਿਹੜਾ ਉਹਨਾਂ ਨੂੰ ਏਉਂ ਆਦਾ ਵੀ ਹਲੇ ਸਾਡੀਆਂ ਤਾਂ 15 ਚ ਪਈਆਂ 19 ਚ ਪੈਣੀਆਂ ਨੇ 19 ਵੀ ਹਾਲ ਇਹ ਤਾਂ ਪਤਾ ਹੀ ਨਹੀਂ ਲੱਗਦਾ ਸਾਲ ਕਦ ਨਿਕਲ ਜਾਣਾ ਜਿਹੜੇ ਜਿਨ੍ਹਾਂ ਨੇ ਹੱਥ ਮੜਾਏ ਸੀ ਵਿਕਟੋਰੀਆ ਵਾਲੇ ਉਹ ਆ ਗਏ ਨਾ ਕਿ ਟੈਰੇ ਮਈ ਦੇ ਵਿੱਚ ਤੇ ਕੀ ਹੁਣ ਪਤਾ ਲੱਗੂ ਦੇਖਿਓ ਹੁਣ ਛੱਡਦੀ ਆ ਨੌ ਮਾਨਕ ਨਹੀਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੋਣਾ ਪਰ ਤੁਸੀਂ ਟ੍ਰੱਕਰ ਦੇ ਇਕੱਠੇ ਹੋਵੋ ਇਸ ਤਰ੍ਹਾਂ ਹੀ ਇਹ ਕਮਿਊਨਿਟੀ ਜਿਹੜੀ ਆ ਜਿਹੜੀ ਕੋਈ ਵੀ ਆਉਂਦਾ ਇਸ ਸ਼ਹਿਰ ਦੇ ਵਿੱਚ ਉਹਨਾਂ ਨੂੰ ਗੈਟੋ ਨਾ ਬਣਾਓ ਉਹ ਸਾਰੀਆਂ ਕਮਿਊਨਿਟੀਆਂ 'ਚ ਰਹਿਣ ਇਕੱਠੇ ਰਹਿਣ ਬਹੁਤ ਐਥਨਿਕ ਸ਼ਹਿਰ ਆ ਇਹ ਜਿੰਨਾ ਇੱਥੇ ਨਗਰ ਕੀਰਤਨ ਦਾ ਪਿਆਰ ਹੈ, ਉਹਨੇ ਛਾਤਰੀ ਦਾ ਪਿਆਰ ਹੈ, ਉਹਨਾਂ ਹੀ ਇੱਥੇ ਈਦ ਦਾ ਪਿਆਰ ਹੈ, ਉਹਨਾਂ ਹੀ ਇੱਥੇ ਕ੍ਰਿਸਮਸ ਦਾ ਪਿਆਰ ਹੈ। ਕੋਈ ਫਰਕ ਨਹੀਂ ਇੱਥੇ। ਕਮਿਊਨਿਟੀ 'ਚ ਵਿੱਚੋਂ ਬੰਨ ਲੋਕ ਇੱਕ ਦੂਜੇ ਨਾਲ ਇੰਟਰਫੇਥ ਗੱਲਾਂ-ਬਾਤਾਂ ਹੋਣ ਉਹਨਾਂ ਨੂੰ ਪਤਾ ਹੋਵੇ। ਇੱਕ ਖਿੱਤੇ ਦੇ ਵਿੱਚੋਂ ਜਿੱਥੇ ਇੱਕੋ ਹੀ ਧਰਮ ਆ ਉਹਦੇ 'ਚੋਂ ਨਿਕਲ ਕੇ ਜਦ ਬਹੁਤ ਧਰਮਾਂ ਚ ਆਉਣਾ ਲੋਕਾਂ ਨੂੰ ਪਤਾ ਹੋਵੇ। ਤੇ ਉਹਨਾਂ ਨੂੰ ਕੰਮ ਕਰਨ ਦੀ ਯੁਕਤ ਦੱਸੀ ਜਾਵੇ ਕਿਵੇਂ? ਇਮੇ ਜੁਗਤ ਕੰਮ ਦੀ ਐ ਜਿਸ ਤਰ੍ਹਾਂ ਕੰਮ ਕਰਨਾ ਫੋਰਟ ਮੈਕਮਰੀ ਚ ਅੱਗ ਲੱਗੀ ਪੰਜਾਬੀਆਂ ਨੂੰ ਸਿੱਖਾਂ ਨੂੰ ਨਹੀਂ ਕੱਲੀ ਦੇਖੀ ਸਾਰੇ ਕੈਨੇਡਾ ਨੂੰ ਵੀ ਦੇਖੀ ਐ ਗੱਸੋਂ ਇੱਕ ਕਮਿਊਨਿਟੀ ਜਿਹੜੇ ਟਰੱਕ ਗਿਆ ਹੋ ਟਰੱਕ ਭੇਜਿਆ ਕੱਲੀ ਸਟਰੀ ਦੇ ਵਿੱਚੋਂ ਪੰਜਾਬੀਆਂ ਨੂੰ ਕਹਿਣਾ ਬਹੁਤ ਸੌਖਾ ਕੋਈ ਸਿੰਗਲ ਇੱਕ ਕਮਿਊਨਿਟੀ ਸਾਰੇ ਕੈਨੇਡਾ ਦੀ ਕਿਉਂ ਜਿਹਨੇ 7 ਟਰੱਕ ਉੱਥੇ ਕੱਪੜਿਆਂ ਦੇ ਭੇਜੇ ਹੋਣ ਔਰ ਸਿਰ ਤੇ ਹੱਥ ਜਦ ਅਸੀਂ ਮੁੜ ਕੇ ਗਏ ਆ ਮੋਟਰਸਾਈਕਲਾਂ ਤੇ ਉਹ ਜਿਹੜਾ ਚੀਫ ਸੀ ਉਹ ਕਹਿੰਦਾ ਮੈਂ ਅਜਿਹੀ ਕਮਿਊਨਿਟੀ ਨਹੀਂ ਦੇਖੀ -30° 'ਚ ਤੁਹਾਡੇ ਬੰਦੇ ਇੱਥੇ ਕੰਮ ਕਰੀ ਤੁਰੇ ਜਾਂਦੇ ਆ ਔਰ ਤੁਸੀਂ ਕਿੱਥੋਂ ਸਹੀ ਆ ਤੇ ਕਿੱਥੇ ਤੁਸੀਂ ਸਾਡੇ ਕੋਲ ਫਿਰਦੇ ਹੋ 1700 ਕਿਲੋਮੀਟਰ ਦੂਰ ਸਿਰਫ ਟੋਕਨ ਆਫ ਲਵ ਸਾਨੂੰ ਪੈਸੇ ਦੇਣ ਤੇ ਸਾਡਾ ਮਾਣ ਕਰਨ ਨਾ ਹੈ 'ਚ ਅਸੀਂ ਨਾ ਏਸ਼ੀਆ ਲੋਕਾਂ ਨਾਲ ਸਾਡੀ ਕੋਈ ਇਸਦਾਰੀ ਆ 3 ਮਿਲੀਅਨ ਡਾਲਰ ਇਕੱਠਾ ਕਰਕੇ ਦਿੱਤਾ। ਅਰਥਕ ਇੱਕ ਆਇਆ ਪਾਕਿਸਤਾਨੀ ਕਸ਼ਮੀਰ ਵਾਲੇ ਪਾਸੇ ਉਥੇ ਸਕੂਲ ਬਣਿਆ ਜਿਹਦੇ ਤੇ ਲਿਖਿਆ ਹੋਇਆ ਵੈਨਕੂਵਰ ਦੀ ਸਿੱਖ ਸੰਗਤ ਨੇ ਇਹ ਪੈਸੇ ਭੇਜੇ ਨੇ ਕਰਕੇ ਤਾਂ ਦਿਖਾਓ ਕੁਛ ਗੱਲਾਂ ਕਰਨ ਨਾਲ ਗੱਲਾਂ ਹੁੰਦੀਆਂ ਜਿਹੜੇ ਦੂਜੇ ਆਉਂਦੇ ਆ ਇਹਨਾਂ ਨੂੰ ਸਿਖਾਓ ਕਿ ਇਹ ਕੰਮ ਕਰ ਇੱਕ ਗੀਤ ਸੁਣਾਉਣਾ ਗੀਤ ਤੋਂ ਬਾਅਦ ਵਪਾਰਕ ਸਰੇਸ਼ ਤੇ ਅੱਜ ਦਾ ਜਿਹੜਾ ਅਗਲਾ ਵਿਸ਼ਾ ਉਹ ਸ਼ੁਰੂ ਕਰਦੇ ਆ ਮਿੰਟ ਹੋਏ ਆ ਜੀ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਗ੍ਰੀਨ ਇੰਡੀਅਨ ਕੁਜ਼ੀਨ ਵਾਲੇ 655033535 ਜੁਨਟ 162 2565 88 ਐਵਨਿਊ வால்ਮਾਰਟ ਵਾਲੇ ਪਲਾਜ਼ੇ ਦੇ ਵਿੱਚ ਬਹੁਤ ਵਧੀਆ ਇਹ ਨਮਾ ਇੱਕ ਰੈਸਟੋਰੈਂਟ ਬਣਿਆ ਜਿੱਥੇ ਪੀਜ਼ਾ ਵੀ ਆਰਡਰ ਕਰ ਸਕਦੇ ਹੋ ਮਿਠਾਈ ਵੀ ਆਰਡਰ ਕਰ ਸਕਦੇ ਹੋ ਤੇ ਬਹਿ ਕੇ ਵੀ ਉੱਥੇ ਤੁਸੀਂ ਭਾਰਤੀ ਖਾਣਾ ਆਰਡਰ ਕਰ ਸਕਦੇ ਹੋ ਤੇ ਲੈ ਕੇ ਵੀ ਜਾ ਸਕਦੇ ਹੋ ਹੁਣ ਵਜ਼ਿਆਦਾ ਵਧੀਆ ਇਹ ਤਾਂ ਕਹਿਣ ਤੇ ਜਾ ਕੇ ਜੇ ਇੱਕ ਵਾਰ ਵੇਖੋ ਤਾਂ ਪਤਾ ਲੱਗੂ ਫਿਰ ਦੱਸਿਓ ਵੀ ਹਾਂ ਕੋਈ ਗੱਲ ਚ ਤਤ ਹੈ ਕਿ ਨਹੀਂ ਜੇ ਤਤ ਹੈ ਨਹੀਂ ਗੱਲ ਚ ਫਿਰ ਫਾਇਦਾ ਨਹੀਂ ਸੰਤ ਤੇ ਤਤ ਦੋ ਅਲੱਗ-ਅਲੱਗ ਨੇ ਉੱਪਰ ਟਿੱਪੀ ਪੈਂਦੀ ਆ ਤਾਂ ਗੁੱਸਾ ਤੰਤ ਤੇ ਤਤ ਸੇਧ ਭਰਪੂਰ ਤੱਤਾਂ ਵਾਲੀਆਂ ਚੀਜ਼ਾਂ ਖਾਇਆ ਕਰੋ ਤੇ ਫਿਰ ਤੰਤ ਆਉਂਦਾ 604 503 35 35 ਜੁਨੇਟ 112 125 65 ਮਨਜੀਤ ਸਿੰਘ ਉਹਨਾਂ ਦਾ ਫੋਨ ਨੰਬਰ ਹੈ ਇਕ ਵਾਰ ਲੋਕ ਸਦ ਦਾ ਹਵਾਲਾ ਦਿਓ ਫਿਰ ਦੇਖਿਓ ਕੋਈ ਛੋਟ ਕਰਦੇ ਆ ਕਿ ਨਹੀਂ ਨਹੀਂ ਤਾਂ ਉਹਨੂੰ ਕਹਿ ਦੇਵੇ ਮੂੰਹ ਮਿੱਠਾ ਕਰਨ ਵਾਲੀ ਚੀਜ਼ ਨਾਲ ਫ੍ਰੀ ਦੇ ਦਿਓ ਜ਼ਲੇ ਪਿੰਡੇ ਚ ਮਿਲਟਰੀ ਦੀ ਜਿਹੜੀ ਕੋਰ ਆ ਡਾਕਟਰਾਂ ਦੀ ਉਹਦੇ ਚੋਂ ਕੈਪਟਨ ਸਾਹਿਬ ਰਿਟਾਇਰ ਹੋ ਕੇ ਆਗੇ ਉਹਨਾਂ ਹਿੰਦੀ ਤੇ ਪੰਜਾਬੀ ਇਕੱਠੀ ਉੱਤੇ ਆ ਕੇ ਘਰੇ ਵੀ ਪ੍ਰੈਕਟਿਸ ਕਰ ਲਈ ਇੱਕ ਬਾਕਸ ਛੋਟਾ ਜਿਹਾ ਡੱਬਾ ਹੁੰਦਾ ਉਹਦੇ ਚੀ ਇੱਕ ਪੀਲੀ ਦਵਾਈ ਜਿਹੜੇ ਟੈਰਾਮਾਈਸਿਨ ਦਾ ਪੱਕਾ ਹੀ ਲੱਗਦਾ ਸੀ ਕਨੀਨ ਵਾਲੀ ਜਿਹੜੀ ਅਲੱਗ ਉਹ ਤੇ ਉਹਦੇ ਵਿੱਚ ਹੀ ਸਿਲਵਰ ਦੀ ਜਿਹੜੀ ਉਹ ਡੱਬੀ ਜੀ ਵਿੱਚ ਸਰਿੰਜਾਂ ਹੁੰਦੀਆਂ ਆਵਾਲਣ ਨੂੰ ਜਿਹੜੋਂ ਦੇਖ ਕੇ ਜਵਾਕ ਪਹਿਲਾਂ ਹੀ ਸਾਹ ਖਿੱਚ ਲੈਂਦਾ ਵੀ ਹੁਣ ਸੂਈਆਂ ਉੱਬਰਦੀਆਂ ਉੱਠਾ ਜਵਾਕ ਨੂੰ ਪਾ ਲੈਣਾ ਦੇਖੀ ਤਾਂ ਉਹ ਦੇ ਕੋਕੋ ਕੋਕੋ ਕਿੱਥੇ ਉਹਦਾ ਤਾਂ ਪੁੜਾ ਪਾੜ ਦਿੰਦੇ ਜਾਨ ਨੂੰ ਕੋਕੋ ਕਿੱਥੇ ਦੇਖਦੀ ਉਹਨੂੰ ਚੰਗਿਆੜਾ ਮਾਰਦਾ ਜਦ ਸੰਭਾ ਜਾ ਲਾਲ ਲੱਗਦਾ ਸਪਰੇਡ ਦਾ ਉਹ ਵੀ ਹੁਣ ਗੱਲ ਗਈ ਉਹ ਡਾਕਟਰ ਸਾਹਿਬ ਨੇ ਫਿਰ ਕਹਿਣਾ ਵੀ ਉਹਨੇ ਕਿਹਾ ਜੀ ਪਖਾਲ ਠੀਕ ਨਹੀਂ ਹੁੰਦਾ ਫਿਰ ਕਿਹੜੀ ਗੱਲ ਉਹ ਕਹਿੰਦਾ ਲਾਇਸਨ ਵੀ ਖਾ ਸਕਦੇ ਹੋ ਅਦਰਕ ਵੀ ਖਾ ਸਕਦੇ ਹੋ ਉਹ ਗੋਰਿਆਂ ਦੇ ਵੇਲੇ ਦੇ ਸੀ ਜਲੇਬੀ ਨਹੀਂ ਖਾਣੀ ਉਹਨਾਂ ਨੂੰ ਨੋ ਹੀ ਲੱਗਦਾ ਵੀ ਜਲੇਬੀ ਡਾਕਟਰ ਨੂੰ ਲਿਆਓ ਠੀਕ ਹੋਊਗਾ ਜਲੇਬੀ ਲੱਗਦੀ ਤਾਂ ਵਧੀਆ ਪਰ ਉਹਦੇ ਤੇ ਹੈਲਥ ਵਾਲਿਆਂ ਨੇ ਲਿਖ ਕੇ ਲਾਇਆ ਹੋਇਆ ਇੱਕ ਦਿਨ ਗੁਰਦੁਆਰਾ ਸਾਹਿਬ ਸਰੀ ਵਾਲੇ ਚ ਕਹਿੰਦੇ ਇੱਕ ਜਲੇਬੀ ਚ ਪੰਜ ਚਪਚੇ ਚਮਚੇ ਚਮਚੇ ਪਾਉਂਦੇ ਕਹਿਣ ਗੁਚੀਨੀ ਦੇ ਹੈ ਜਲੇਬੀ ਮੂੰਹ ਚ ਫੁੱਲਣ ਲੱਗ ਗਈ ਵੀ ਐਨਾ ਮਿੱਠਾ ਯਾਰ ਇਹਦੇ ਚ ਅਮਰਤੀਆਂ ਤਾਂ ਬਾਹਲਾ ਹੋਊ ਨਿਤ ਨਿਤ ਨਹੀਂ ਭਾਣ ਜੇ ਮਿਹੋਣੇ ਖਾਲਾ ਬਿੱਲੋ ਅਮਰਤੀਆਂ ਜਿਹੜੀ ਉਹ ਅਮਰਤੀਆਂ ਆ ਉਹ ਫੇਰ ਮਿੱਠਾ ਬਹੁਤ ਹੈ ਕਦੀ ਕਦਾ ਹੀ ਕੁਝ ਨਹੀਂ ਪਰ ਨਿਤ ਔਖਾ ਹੈ ਪੰਜਾਬੀਆਂ ਦਾ ਕਿਤੇ ਹੋਰ ਨਾ ਦਾ ਭਰੇ ਆਥਣੇ ਇਹ ਮਿੱਠੇ ਦੀ ਗੱਲ ਬਣੀ ਨਹੀਂ ਕਿਤੇ ਫਿਰ ਉਹ ਕੀ ਕਹਿੰਦੇ ਆ ਸ਼ੀਰ ਦੇ ਰਲਾ ਲਓ ਦੋ ਤਿੰਨ ਐਨ ਚਿਣ ਫਿਰ ਕਹਿੰਦੇ ਅੱਧੀ ਕੁ ਹੋਰ ਦੇ ਦਿਓ ਸ਼ੱਕਰ ਕਿਉਂ ਨਾਲ ਖਾਈ ਉਲਟ ਚਲਦੇ ਆ ਉਹ ਕਹਿੰਦੇ ਵੀ ਸਵੇਰੇ ਸ਼ਹਿਨਸ਼ਾਹ ਵਾਲਾ ਖਾਣਾ ਚਾਹੀਦਾ ਦੁਪਹਿਰੇ ਮੱਧ ਵਰਗੀ ਦਾ ਰਾਤ ਨੂੰ ਗਰੀਬ ਵਾਲਾ ਅਸੀਂ ਦੂਜੇ ਬੰਨੇ ਚਲਦੇ ਆ ਸਵੇਰੇ ਗਰੀਬੀ ਵਾਲਾ ਹੀ ਹੱਥ 'ਚ ਕਾਫੀ ਦਾ ਕੱਪ ਨਾਲ ਆਜਾ ਦੇ ਪੀਪੇ ਵਾਲੇ ਬਿਸਕੁਟ ਆ ਰਹੇ ਨੇ ਤਾਂ ਤਰਥਲੀ ਮਚਾਤੀ ਤਿੰਨ ਕ ਚਾਰ ਸਾਲ ਦੇ ਸ਼ੁਰੂ ਹੋਏ ਐ ਦੇ ਗੇੜੇ ਤੇ ਗੇੜਾ ਪਤਾ ਹੀ ਨਹੀਂ ਕਿੰਨੇ ਬਣਾਉਣ ਵਾਲੇ ਆ ਤੇ ਬਸ ਇੱਕ ਦੋ ਹੱਥ ਚ ਇੱਕ ਦੋ ਹਿੱਸੇ ਚ ਚੱਲ ਚੱਲ ਚੱਲ ਮੈਂ ਆਇਆ ਆਇਆ ਜਾਨੂ ਬਾਹਰੋਂ ਵੈਨ ਵਾਲਾ ਆਵਾਜ਼ਾ ਮਾਰਦਾ ਉਹ ਕਹਿੰਦਾ ਹੁਣ ਯਾਰ ਬੜੇ ਜੀ ਤਸਮੇ ਤਾਂ ਬਣ ਲੈਂਦੇ ਸੇਫਟੀ ਇਸ਼ੂ ਦੇ ਚਾਰ ਚੇ ਚੁਸਕੀਆਂ ਕਰ ਕੋਲ ਕਰਦੀ ਆ ਭਾਫ ਨੱਕ ਦੇ ਨੇੜੇ ਨੂੰ ਫੇ ਖੁਸ਼ ਹੁੰਦੇ ਆ ਹੋਰ ਸੁਣਾ ਕਿਵੇਂ ਆ ਕੀ ਗੱਲ ਚੱਲਦੀ ਆ ਬਸ ਉਥੋਂ ਹੀ ਸ਼ੁਰੂ ਦਿਹਾੜੀ ਘਰ ਦਾ ਹੇਰ ਬੁੱਲ ਜਾਂਦੇ ਆ ਇਉਂ ਹੀ ਜਦ ਬਾਰਡਰ ਟੱਪ ਜਾਂਦੇ ਆ ਬਸ ਪਹਿਲੀ ਜਿਹੜਾ ਕੱਢ ਕੇ ਅਰੇਸਟਰੀ ਅਚ ਪਾਣੀ ਪੀ ਪੀ ਕੇ ਇੱਕ ਦੂਜੇ ਨੂੰ ਪੁੱਛ ਕੇ ਕਿੱਥੇ ਕਾਂ ਦੋ ਕੁ ਜਣੇ ਹੋ ਗਏ ਇਕੱਠੇ ਫਿਰ ਐਲੇ ਪੈਰਾਂ 'ਚ ਦਿਖਦੀ ਆ ਮਾਂ ਦੇ ਸ਼ੇਰ ਬੱਗੇ ਡਗੜ-ਡਗੜ ਕਰਦੇ ਜਾਂਦੇ ਆ ਫਿਰ ਦੱਸ ਦਿੰਦੇ ਆ ਕਿਵੇਂ ਸਮਾਨ ਲਿਆ ਕੇ ਤੁਹਾਨੂੰ ਖੜਾਈ ਦਾ ਤੇ ਕਿਵੇਂ ਇੱਥੋਂ ਲੈ ਕੇ ਜਾਏਗਾ ਮਿਹਨਤਾਂ ਇਉਂ ਹੁੰਦੀਆਂ ਸੋ ਮਨਜੀਤ ਸਿੰਘ ਉਹਨਾਂ ਨੂੰ ਕਿਹਾ ਉਹ ਮੂੰਹ ਮਿੱਠਾ ਕਰਨ ਨੂੰ ਨਾਲ ਚੀਜ਼ ਦੇਣਗੇ ਕੋਈ ਨਾਂ ਦਿਓ ਲੋਕ ਸੱਤਾ 604 503 35 35 ਕੈਪਟਨ ਮੀਟ ਤੋਂ ਮੀਟ ਦੇ ਸ਼ਿਕਾਰੀ ਨੇ ਜਿਹੜੇ ਸ਼ਕੀਨ ਨੇ ਉਹ ਮੀਟ ਲਿਆ ਸਕਦੇ ਐ ਹਰ ਕਿਸਮ ਦਾ ਜਿਹੜਾ ਮੀਟ ਉੱਥੇ ਬਹੁਤ ਵਧੀਆ ਕੁਆਲਿਟੀ ਦਾ ਮਿਲਦਾ ਤੇ ਮੈਰੀਨੇਟ ਕੀਤਾ ਵੀ ਜਿਹੜਾ ਰੈਡੀ ਐ ਆਉਣ ਵੇਲੇ ਤੁਸੀਂ ਉਹਨੂੰ ਗ੍ਰਿਲ ਕਰ ਸਕਦੇ ਹੋ ਗ੍ਰਿਲਡ ਫੂਡ ਸਭ ਤੋਂ ਵਧੀਆ ਫੂਡ ਆ ਵਿਸ਼ੇਸ਼ ਕਰਕੇ ਕਰਨ ਦੀ ਘਰ ਦੇ ਪਿੱਛੇ ਇੱਕ ਯੂਨਿਟ ਜੀ ਸੈੱਟ ਕਰ ਲੋ ਜਿੱਥੇ ਬਾਰਬੀਕਿਊ ਇਨ ਬਿਲਟ ਹੋਵੇ ਤੇ ਉੱਥੇ ਹੀ ਤੰਦੂਰ ਗੱਡ ਦਿਓ ਇੱਕ ਇਹ ਕੰਮ ਗਰਮੀਆਂ ਗਰਮੀਆਂ 5-4 ਮਹੀਨੇ ਕਰਿਆ ਕਰੋ ਇਹ ਠੀਕ ਹੈ ਜਿਨ੍ਹਾਂ ਦੇ ਕੋਲ ਜਗ੍ਹਾ ਹੈ ਜਿਹੜੇ ਵਿਚਾਰੇ ਉਂ ਛੋਟੀ ਜਗ੍ਹਾ ਚ ਨੇ ਉਹਨਾਂ ਦੀ ਤਾਂ ਮਜਬੂਰੀ ਹੈ ਉਹ ਘਰੇ ਬਾਰਬੀਕਿਊ ਰੱਖੋ ਪਰ ਵੱਡੀਆਂ ਲੋਟਾਂ ਵਾਲਿਆਂ ਨੂੰ ਇਹ ਯੂਨਿਟ ਬਣਾਉਣੀ ਚਾਹੀਦੀ ਹੈ ਬਾਹਰ ਟੱਬਰ ਵਾਲ ਦੇ ਬੈਠੂ ਨਾਲੇ ਤਾਂ ਨਾਲੇ ਸੋਹਣਾ ਲੱਗੂ ਵੈਜੀ ਫੂਡ ਵਧੀਆ ਹੈ ਉਹਦੇ ਚ ਫੈਟ ਛੱਡ ਜਾਂਦੀ ਹੈ ਵਧੀਆ ਕੈਪਟਨ ਮੀਟ 604503 ਨੂੰ 0070 ਪਾਇਲਬिज ਨੂੰ ਸੈਂਟਰ ਚ ਜਿਹੜੀ ਅੱਜ ਗੱਲ ਕਰਨੀ ਹੈ ਉਹ ਇਹ ਹੈ ਉਹ ਕਹੇ ਹੈ ਕਿ ਅਕਸਰ ਅਸੀਂ ਵੀਕਐਂਡ ਤੇ ਸਾਡੇ ਸਸਕਾਰ ਜਦ ਪਰਿਵਾਰਾਂ ਦੇ ਵਿੱਚ ਹੁੰਦੇ ਆ ਅਸੀਂ ਜਾਣਦੇ ਆ ਇੱਕ ਡੇਢ ਘੰਟੇ ਦਾ ਜਿਹੜਾ ਉੱਥੇ ਦਾ ਮਾਹੌਲ ਹੈ ਨਾ ਬੰਦਾ ਸੀਖ ਭਰ ਜਿਵੇਂ ਸਿੱਧਾ ਹੀ ਬੈਠਾ ਹੁੰਦਾ ਉਹੀ ਬੈਠਾ ਹੁੰਦਾ ਸਾਹਮਣੇ ਬਾਕਸ ਦੇ ਵਿੱਚ ਕੋਈ ਮਿੱਤਰ ਪਿਆਰਾ ਆਪਣਾ ਪਿਆ ਹੁੰਦਾ ਹੈ। ਜਾਂ ਪਰਿਵਾਰ ਦੇ ਵਿੱਚੋਂ ਕੋਈ ਜੀ ਬੈਠਾ ਪਿਆ ਹੁੰਦਾ ਉੱਥੇ ਤੇ ਜਿਹਨੂੰ ਅਸੀਂ ਅਗਨ ਪੇਟ ਕਰਕੇ ਛੱਡਿਆਉਣਾ ਉੱਥੇ। ਗੁਰੂ ਦੇ ਵਜ਼ੀਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੱਲਾਂ ਦੱਸਦੇ ਆ ਇਹ ਜਗਤ ਛੱਡਣ ਨਾਲ ਇੱਥੇ ਕੱਖ ਨਹੀਂ ਕੱਲਾ ਆਇਆ ਕੱਲਾ ਜਾਣਾ ਮਰਨਾ ਕੁਛ ਨਹੀਂ ਪੰਜੇ ਚੀਜ਼ਾਂ ਜਿਹੜੀਆਂ ਉਹ ਇੱਥੇ ਮਿਲ ਜਾਣੀਆਂ ਤੇਰੀ ਰੂਹ ਕਦੇ ਨਹੀਂ ਮਰਦੀ ਅਲੱਗ-ਅਲੱਗ ਫਿਲਾਸਫਰ ਨੇ ਜਿਹੜੇ ਉਹ ਕਹਿੰਦੇ ਮਰਨਾ ਕੀ ਹੈ ਮਰਦਾ ਕੁਛ ਵੀ ਨਹੀਂ ਹੈ। ਜਿਹੜੀ ਗੱਲ ਦੀ ਕਹਾਣੀ ਕਰਦਾ ਪਰ ਇੱਕ ਬੰਨੇ ਅੰਦਰ ਕੰਪਨੀ ਛਿੜਦੀ ਆ ਯਾਰ ਕਿੱਥੋਂ ਆਇਆ ਤੇ ਕਿੱਥੇ ਜਾਣਾ ਅਲੀ ਅਲੀ ਕਰਦਾ ਫਿਰਦਾ ਕਦੇ ਇੱਧਰ ਨੂੰ ਤੇ ਕਦੇ ਉੱਧਰ ਨੂੰ ਤੇ ਕਦੇ ਮੌਤ اٹਲ ਹੈ ਪਰ ਉੱਥੇ ਅਸੀਂ ਬੈਠੇ ਸਿੱਧੇ ਰਹਿਨੇ ਆ ਹੋਰਾ ਨਹੀਂ ਹਿਲਦੇ ਫੋਨ ਬੰਦ ਸਾਰੇ ਸਿੱਧਾ ਝਾਕਦੇ ਆ ਬੰਦੇ ਤੁਰ ਜਾਣ ਦੀਆਂ ਵੀਡੀਓ ਦੇਖਦੇ ਆ ਵੀ ਹਾਂ ਦੇਖ ਲਾ ਆ ਖੜਾ ਹੈ ਖੜਾ ਹੈ ਆ ਬੀਜੀ ਇੱਥੇ ਖੜੀ ਹੈ ਜਾਂ ਕੋਈ ਵੀ ਜੀ ਹੈ ਜੱਫੀਆਂ ਪਾਉਣੀ ਆ ਇੱਕ ਦੂਜੇ ਨੂੰ ਰਿਚੁਅਲ ਨੇ ਸਾਰੀਆਂ ਆਪਾਂ ਇੱਕ ਦੂਜੇ ਦੇ ਜਾਣੇ ਆ ਬੜੀ ਘੜੀ ਚ ਪਰ ਸੱਚ ਹੈ ਕਿ ਉਹ ਸਰੀਰ ਆਪਾਂ ਹਫਤੇ ਪਹਿਲਾਂ ਉੱਥੇ ਕੱਖ ਨਹੀਂ ਹੈ ਉਹ ਮਿੱਟੀ ਹੈ ਉਹ ਮਿੱਟੀ ਨੂੰ ਆਪਾਂ ਮੱਥਾ ਟੇਕਦੇ ਆ ਮਿੱਟੀ ਦਾ ਹੀ ਆ ਆਪਣੀਆਂ ਰੋਹ ਦੀ ਤਨੇ ਹਰ ਇੱਕ ਧਰਮ ਦੀਆਂ ਅਲੱਗ ਨੇ ਪਰ ਮੌਤ ਕੀ ਹੈ ਮੌਤ ਦਾ ਭੇਦ ਕੀ ਹੈ ਮਰਨਾ ਕਿਉਂ ਕਹਿੰਦੇ ਆ ਮੌਤ ਕਿਹੜੀ ਹੈ ਕਦੇ-ਕਦੇ یوں ਲੱਗਦਾ ਨਹੀਂ ਬੰਦਾ ਜੇ ਕੱਲਾ ਬੈਠ ਕੇ ਸੋਚੇ ਯਾਰ ਮੈਂ ਕਿੱਥੋਂ ਆਇਆ ਨਾ ਮੈਨੂੰ ਪਾਸਟ ਪਤਾ ਨਹੀਂ ਇਦੋਂ ਪਹਿਲਾਂ ਮੈਂ ਕੀ ਸੀ ਧਾਰਮਿਕ ਗ੍ਰੰਥਾਂ ਦੇ ਵਿੱਚ ਅਲੱਗ-ਅਲੱਗ ਗੱਲਾਂ ਨੇ ਕੋਈ 84 ਲੱਖ ਜੂਨੀਆਂ ਦੀ ਗੱਲ ਕਰਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਸੱਚ ਕੀ ਹੈ ਨਰਕ ਤੇ ਸਵਰਗਾਂ ਦੀਆਂ ਗੱਲਾਂ ਨੇ ਚੰਗਾ ਕਰੋਗੇ ਤਾਂ ਸਵਰਗਤ ਜਾਣਾ ਮਾੜਾ ਕਰੋਗੇ ਨਰਕਾਂ ਜਾਂ ਜੇ ਤੁਸੀਂ ਇੱਕ ਮਨੋਰੋਗੀ ਬਣ ਜਾਂਦਾ ਬੰਦਾ ਜੇ ਦਿਮਾਗ 'ਚ ਆ ਜਾਵੇ ਯਾਰ ਮੈਂ ਕਿੱਥੋਂ ਆਇਆ ਜਦ ਮੈਂ ਇੱਥੇ ਸਾਰਾ ਕੁਝ ਮੇਰਾ ਟੱਬਰ ਟੀਹਰ ਘਰਬਾਰ ਛੱਡ ਕੇ ਮੈਂ ਤੁਰ ਜਾਣਾ ਕੀ ਮੈਨੂੰ ਯਾਦ ਰਹੂ ਯਾਰਾ ਉਹ ਟੱਬਰ ਸੀ ਮੇਰਾ ਉਹ ਮੇਰਾ ਘਰ ਸੀ ਵਿਗਿਆਨੀ ਹੈ ਹੀ ਕੱਖ ਨਹੀਂ ਆਤਮਾ ਜਿਹੜੀ ਮਰਦੀ ਨਹੀਂ ਸੋਲ ਆ ਜਿਹੜੀ ਉਹ ਇੱਥੇ ਹੀ ਰਹਿੰਦੀ ਆ ਤੇ ਹਜ਼ਾਰਾਂ ਲੱਖਾਂ ਅਰਬਾਂ ਆਤਮਾਵਾਂ ਜਿਹੜੀਆਂ ਉੜੀਆਂ ਫਿਰਦੀਆਂ ਗਗਨ ਦੇ ਵਿੱਚ ਫਿਰ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਅੱਗੇ ਜਨਮ ਮਿਲਦਾ ਤੇ ਫੇਰ ਉਹ ਆ ਕੇ ਅਲੱਗ-ਅਲੱਗ ਨੇ ਜੇ ਤੁਸੀਂ ਕਿਸੇ ਨੂੰ ਵੀ ਕੋਈ ਵੀ ਸੰਤ ਨੂਮਾ ਬੰਦਾ ਉਹਦੇ ਹਿਸਾਬ ਨਾਲ ਮੌਤ ਦੀ ਕਹਾਣੀ ਕੋਈ ਤਾਂ ਕਹਿੰਦਾ ਮੌਤ ਤੇ ਨੱਚਣਾ ਚਾਹੀਦਾ ਇੱਕ ਗੱਲ ਨਿਬੜੀ ਕਈ ਵਾਰ ਪਿੰਡਾਂ ਦੇ ਵਿੱਚ ਜਿਹੜੀਆਂ ਖਬਰਾਂ ਛਪੀਆਂ ਕਿਸੇ ਨੂੰ ਪੈਸਟ ਆਪਣੀ ਲਾਈਫ ਯਾਦ ਹੁੰਦੀ ਆ ਵੀ ਫਲਾਣੇ ਪਿੰਡ ਮੈਂ ਆ ਸੀ ਉਹ ਜਾਂ ਖਬਰਾਂ ਛਪ ਕੇ ਬੰਦੇ ਨੂੰ ਧੁਰਤੜੀ ਆਉਂਦੀ ਆ ਯਾਰ ਇਹਨੂੰ ਕਿਵੇਂ ਯਾਦ ਆ ਮਰਨਾ ਜਿਹੜਾ ਉਹ ਸੱਚ ਹੈ ਪਰ ਮਰਨ ਤੋਂ ਡਰ ਫਿਰ ਕਿਹੜੀ ਲੱਗਦਾ ਜਿਹੜੀ ਚੀਜ਼ ਹੈ ਜੇ ਪਤਾ ਜਾਏ ਸਾਲ ਦੇ ਕਹਿੰਦਾ ਯਾਰ ਮਰਨ ਨੂੰ ਜੀ ਨਹੀਂ ਕਰਦਾ ਯਾਰ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ ਜਪਾਨੀ ਬੇ ਜੋ ਕੋਈ ਗੱਲ ਕਹਿ ਦਵੇ ਮਰਨਾ ਉਹ ਕਹਿੰਦੇ ਆ ਗੱਲਾਂ ਕਰੀਦੀਆਂ ਮਨੋ ਰੋਗੀ ਬੰਦੇ ਬਣ ਜਾਂਦੇ ਆ ਬਹੁਤ ਕਈ ਜਦ ਦਿਮਾਗ ਦੇ ਵਿੱਚ ਚੀਜ਼ ਆ ਜਾਂਦੀ ਹੈ ਤੇ ਯਾਰ ਮਰਨਾ ਜੇ ਤੁਸੀਂ ਐ ਸੋਚ ਲੋ ਬੇ ਮਰਨਾ ਤਾਂ ਬੰਦਾ ਹੱਥ ਛੱਡ ਦਿੰਦਾ ਯਾਰ ਮਰ ਤਾਂ ਜਾਣਾ ਹੀ ਐ ਕਾਦੇ ਲਈ ਤੁਸੀਂ ਐ ਭੱਜੇ ਫਿਰਨਾ ਪਰ ਹੱਥ ਤੇ ਹੱਥ ਰੱਖ ਕੇ ਥੋੜਾ ਬਹਿਣਾ ਜੇ ਮਰਨਾ ਤਾਂ ਸਾਰੀਆਂ ਚੀਜ਼ਾਂ ਬੰਦ ਨੇ ਇਹ ਕਿਸੇ ਚੀਜ਼ ਦਾ ਭੇਦ ਕਿਉਂ ਨਹੀਂ ਡੈਸਟੀਨੇਸ਼ਨ ਦੱਸਦਾ ਪਤਾ ਚਾਹੀਦਾ ਯਾਰ ਕਿੱਥੇ ਚੱਲੇ ਆ ਕਿੱਥੋਂ ਆਏ ਆ ਇਹ ਚੀਜ਼ ਦਾ ਭੇਦ ਕਿਉਂ ਨਹੀਂ ਹੈ ਕਿਸੇ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਅਸੀਂ ਕਿੱਥੋਂ ਆਏ ਆ ਬੱਸ ਸਾਨੂੰ ਯਾਦ ਕਿਉਂ ਨਹੀਂ ਅੱਗੇ ਜਾਣ ਦਾ ਪਤਾ ਕਿਉਂ ਨਹੀਂ ਕਿ ਜਾਣਾ ਕਿੱਥੇ ਹੈ ਤੇ ਕੀ ਨਿਕਲਣਾ ਹੈ ਸਰੀਰ ਦੇ ਵਿੱਚੋਂ ਤੇ ਦੁਨੀਆ ਮਾਰੋ ਮਾਰ ਕਰਦੀ ਫਿਰਦੀ ਕੋਈ 20 ਸਾਲ ਦੀ ਉਮਰ ਦੇ ਵਿੱਚ ਕਹਿੰਦਾ ਆਹ ਬਣਾ ਕੋਈ 94 ਸਾਲ ਦੀ ਉਮਰ 'ਚ ਕਹਿੰਦਾ ਯਾਰ ਮੈਨੂੰ ਐਮਐਲਏ ਇੱਕ ਵਾਰ ਹੋਰ ਬਣਾ ਦਿਓ ਮੇਰੀ ਇੱਜ਼ਤ ਦਾ ਸਵਾਲ ਹੈ 94 ਕੋਈ ਕਹਿੰਦਾ ਮੈਂ ਆਪਨਾ ਕੋਈ ਕਹਿੰਦਾ ਆਪ ਬਣਨਾ ਤੇ ਅਸਥਿਰ ਕੰਮ ਹੈ ਪੱਕਾ ਕੰਮ ਨਹੀਂ ਹੈ ਇਹ ਵੀ ਪਤਾ ਹੈ ਇਹ ਵੀ ਪਤਾ ਹੈ ਵੀ ਪੱਕਾ ਆਪਾਂ ਇੱਥੇ ਰਹਿਣਾ ਨਹੀਂ ਫਿਰ ਇਹਦਾ ਸਾਰ ਕੀ ਹੈ ਮੌਤ ਨੂੰ ਤੁਸੀਂ ਕਿਵੇਂ ਮੌਤ ਦੀ ਪਰਿਭਾਸ਼ਾ ਤੁਹਾਡੇ ਹਿਸਾਬ ਨਾਲ ਕੀ 144 247 1550 ਜਿਹੜੇ ਪੜ੍ਹੇ ਲਿਖੇ ਤਰਕ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਧਾਰਮਿਕ عقیده ਵਾਲਿਆਂ ਨੂੰ ਵੀ ਬੇਨਤੀ ਹੈ ਕਿ ਧਰਮ ਵਾਲੇ ਪਾਸਿਓਂ ਦੱਸਿਓ ਜਿਹੜੇ ਵਿਦਵਾਨ ਨੇ ਉਹ ਵੀ ਦੱਸਣ ਕਿ ਉਹ ਮੌਤ ਨੂੰ ਕਿਵੇਂ ਲੈਂਦੇ ਆ ਮੌਤ ਜਦ ਅਟਲ ਹੈ ਜਦ ਪਤਾ ਹੈ ਕਿ ਮੀਂਹ ਵਰਨੇ ਵਰਨਾ ਹੈ ਅੱਤੇ ਘੰਟੇ ਨੂੰ ਫੋਰਕਾਸਟ ਹੋਗੀ ਤੇ ਮੀਂਹ ਤੋਂ ਡਰ ਕਿਉਂ ਲੱਗਦਾ ਨਾਲੇ ਸਾਨੂੰ ਪਤਾ ਜਿਹੜੀ ਮੌਤ ਦਾ ਪੱਕਾ ਪਤਾ ਵੀ ਜਿਹੜਾ ਆਇਆ ਮਰਨ ਲਿਖਾ ਕੇ ਮੰਡਲ ਚ ਆਇਆ ਜਿਹੜਾ ਉਪਜਿਆ ਉਹਨੇ ਵਿਣਸਣਾ ਫਿਰ ਡਰ ਕਾ ਲੱਗਦਾ ਡਰ ਕਿਉਂ ਲੱਗਦਾ ਕਿਹੜੀ ਗੱਲਾਂ ਡਰ ਲੱਗਦਾ ਕਿਹੜੀ ਚੀਜ਼ ਆ ਸਭ ਡਰਾਉਂਦੀ ਆ ਸਾਨੂੰ ਮੌਤ ਡਰਾਉਂਦਾ ਜਗਾ ਉਪਮਾ ਪੈਸਾ ਤੇਲਾ ਹੂੰ ਮੈਂ ਉਹਦੇ ਤੋਂ ਡਰ ਲੱਗਦਾ ਕਿਹੜੀ ਚੀਜ਼ ਤੋਂ ਡਰ ਲੱਗਦਾ ਮੌਤ ਨੂੰ ਤੁਸੀਂ ਕਿਵੇਂ ਸੋਚਦੇ ਹੋ ਮੌਤ ਕੀ ਹੈ 1843 247 1550 ਬਹੁਤ ਇਹ ਗੰਭੀਰ ਜਿਆ ਮਸਲਾ ਜੀ ਦੇ ਬਾਰੇ ਗੱਲ ਕਰਨੋ ਵੀ ਬੰਦ ਕਰਦੇ ਆ ਪਰ ਅਸਲ ਗੱਲ ਇਹ ਹੈ ਕਿ ਇਹ ਅਟਲ ਸਚਾਈ ਹੈ ਪਰ ਉਸ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਸਾਬ ਹਾਦਰ ਸਿੰਘ ਜੀ ਲਾਈਨ ਨੰਬਰ 2 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ਼ਕਾਲ ਜੀ ਮੈਂ ਤੁਹਾਨੂੰ ਪਹਿਲੀ ਵਾਰੀ ਫੋਨ ਕੀਤਾ ਮੈਨੂੰ ਅਜੇ ਵੀ ਥੋੜਾ ਤੇਰੀ ਰੁਹਾਇ ਜੀ ਹਜੇ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਸੋ ਮੱਚ ਮੈਂ ਇਹ ਕਹ ਰਿਹਾ ਮੌਤ ਦੀ ਗੱਲ ਹੈ ਜੀ ਸਾਡੇ ਮੈਂ ਆਪਣੇ ਦਾਦਾ ਜੀ ਦੀ ਗੱਲ ਕਰਦਾ ਜੀ ਉਹਨਾਂ ਦੀ 104 ਸਾਲ ਦੀ ਹੁਣ ਹੋਈ ਆ ਤੇ ਉਹ ਕਈ ਵਾਰ ਉਹਨਾਂ ਨੇ ਕਹਿਣਾ ਕਹਣਾ ਮੇਰੇ ਨਾਲ ਮੇਰੇ ਪੇਪਰ ਪੂਪਰੇ ਹੀ ਭੁੱਲ ਗਏ ਆ ਕਿ ਮੇਰੀ ਮੌਤ ਮੈਂ ਕਹਿੰਦਾ ਇੱਕ ਟਾਰਕ ਆ ਸਾਨੂੰ ਕੀ ਜੇ ਅਜੇ ਤੁਸੀਂ 104 ਸਾਲ ਦੀ ਉਮਰ ਤੇ ਵੀ ਤੁਹਾਡੇ ਹੋ ਠੀਕ ਆ ਆਪਣੀ ਨਿੰਦੇ ਸੌਣੇ ਉੱਠ ਰਹੇ ਰੋਗ ਕੋਈ ਨਹੀਂ ਪਰ ਉਹ ਕਹਿੰਦੇ ਮੈਂ ਹੁਣ ਤੰਗ ਜਾਤਾ ਹੁਣ ਵੈਸੇ ਦੁਨੀਆ ਦੇਖ ਦੇ ਕੇ ਅੱਕ ਚ ਪਾਇਆ ਮੈਂ ਮੌਤ ਹੀ ਚਾਹੁੰਦਾ ਹਾਂ ਮੈਂ ਹੁਣ ਰੱਜ ਰੱਜ ਚੁੱਕਿਆ ਹਾਂ ਉਹ ਰੋਜ਼ ਦੁਆ ਨੂੰ ਮਿਲਦੇ ਸਾਰ ਕੋਈ ਬਿਮਾਰ ਜਿਵੇਂ ਚਾਹੁੰਦੇ ਸੀ ਕੁਮਾਰ ਧੰਨਵਾਦ ਜੀ ਫੋਨ ਕਰਿਆ ਕਰੋ ਥੈਂਕ ਯੂ ਇਸ ਗੱਲ ਨੂੰ ਕਿਸੇ ਬਜ਼ੁਰਗਾਂ ਤੋਂ ਵੀ ਪੁੱਛਿਆ ਮੈਂ ਕਿਹਾ ਜੀ ਕਿਸ ਤਰ੍ਹਾਂ ਲੱਗਦਾ ਉਹ ਕਹਿੰਦਾ ਜਵਾਨੀ ਪਾਰੇ ਪੁੱਤ ਜਿਵੇਂ ਤੈਨੂੰ ਲੱਗਦਾ ਇਸ ਤਰ੍ਹਾਂ ਹੀ ਸਾਨੂੰ ਲੱਗਦਾ ਸੀ ਜਦ 70 ਦੇ ਵਿੱਚ ਬੰਦਾ ਚੱਲ ਜਾਂਦਾ ਉਹਦਾ ਖੁਦੇ ਜੀ ਕਰਨ ਲੱਗ ਜਾਂਦਾ ਚੱਲ ਬਸ ਚੱਲੀ ਜਿਵੇਂ ਉਹਦਾ ਕੋਈ ਹੋਰ ਘਰ ਹੋਵੇ ਕੋਈ ਹੋਰ ਦੇਸ਼ ਹੋਵੇ ਉਹ ਕਹਿੰਦੇ ਆਤਮਾ ਪਰਮਾਤਮਾ ਉਸਦੇ ਇੱਕ ਅੰਸ਼ ਦੇ ਵਿੱਚੋਂ ਆ ਉਹ ਆਪਣੇ ਘਰ ਮੁੜਨਾ ਚਾਹੁੰਦੀ ਹੈ ਜਗਾ ਉਹ ਆਪਣੀ ਜਗਾ ਤੇ ਜਾਣਾ ਚਾਹੁੰਦੇ ਉਹ ਕਹਿੰਦੇ ਆਹ ਟਾਈਮ ਬੀਿੰਗ ਅਸੀਂ ਵਿਜ਼ਿਟ ਕਰ ਰਹੇ ਹਾਂ ਪਲੈਨਟ ਅਸੀਂ ਵਾਪਸ ਜਾਣਾ ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ ਉਹਨੂੰ ਉਹਦਾ ਨਾਮ ਰੱਬ ਹੈ ਉਹਦਾ ਨਾਮ ਅੱਲਾ ਹੈ ਉਹਦਾ ਨਾਮ ਭਗਵਾਨ ਹੈ ਉਹਦਾ ਨਾਮ ਅਲੱਗ-ਅਲੱਗ ਜਿਹੜੇ ਨਾਮ ਨੇ ਉਹਨਾਂ ਉੱਥੇ ਵਾਪਸ ਜਾਣਾ ਚਾਹੁੰਦੇ ਆ ਕਹਿੰਦੇ ਇਹ ਮਹਿਸੂਸ ਕਰਦੇ ਆ ਲੋਕ ਥਾਮੀਨ ਨਾਰਿੰਗ ਐਂਡ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ 600 864 61 31 ਅਮਰੀਕ ਨਾਰਿੰਗ ਤੇ ਰਾਜ ਥਾਮੀ ਦੋ ਡਾਕਟਰ ਸਰੀ ਤੇ ਐਵਸਪੋਰਟ ਚ ICBC ਦੇ ਕੇਸ ਲੜਦੇ ਆ 8 ਵਕੀਲ ਹੈ ਹੋਰ ਅਮਲਾ ਫੈਲ ਹੈ फास्टर्स ग्रोइंग कंपनी है यह 600 464 61 31 अमेरिका टांग पे राज तामी सतरोचन सिंह तालीवाल लाइन नंबर 3 हां जी सत श्री काल जी सत श्री काल जी जी सिंह गल की हालचाल आ बहुत बढ़िया जी ਤੁਸੀਂ ਦੱਸੋ ਪਹਿਲਾਂ ਮੈਂ ਕਿਹੜੇ ਦਵਦਾ ਤੁਹਾਡੇ ਜਿੰਨੇ ਤੁਸੀਂ ਸੱਚ ਕਰਦੇ ਹੋ ਨਾ ਸੱਚ ਤੁਸੀਂ ਕਹਿੰਦੇ ਹੋ ਕਿਵੇਂ ਮੈਂ ਤੁਹਾਡਾ ਧੰਨਵਾਦ ਕਰਾਂ ਬਾਈ ਜੀ ਨਹੀਂ ਸਾਡਾ ਕੰਮ ਹੀ ਇਹ ਹੈ ਬੋਲਣਾ ਹੀ ਸੱਚ ਚਾਹੀਦਾ ਗੱਲ ਇਸ ਤਰ੍ਹਾਂ ਕਰਨੀ ਚਾਹੀਦੀ ਵੈਸੇ ਮੈਂ ਤੁਹਾਡਾ ਪ੍ਰੋਗਰਾਮ ਤਾਂ ਬਹੁਤ ਸੋਹਣਾ ਅੱਜ ਮੈਂ ਕਿਹਾ ਵੀ ਚਲ ਫੋਨ ਕਰਦੇ ਆ ਧੰਨਵਾਦ ਜੀ ਮੈਂ ਤਾਂ ਆਪਾਂ ਦੇ ਬੰਦੇ ਆ ਇਸ ਮਖਸੂਦ ਨਾਲ ਤੁਹਾਡਾ ਪੈਂਦਾ ਉੱਥੇ ਸਾਡੇ ਮਿੱਤਰ ਪਹਿਰੇ ਹੈਗੇ ਆਪਣੇ ਚੱਜੇ ਹੋਣੀ ਠੀਕ ਆ ਜੀ ਠੀਕ ਆ ਸਰ ਜੀ ਅੱਗੇ ਦੱਸੋ ਮੈਂ ਕਿਹਾ ਮੌਤ ਸੀ ਜਾਈ ਹੈ ਜੀ ਇਹ ਤਾਂ ਆਉਣੀ ਹੈ ਪਰ ਇਹੋ ਪਤਾ ਸਾਨੂੰ ਕੁਝ ਨਹੀਂ ਲੱਗਿਆ ਵੀ ਇਹ ਕਿੱਦਾਂ ਨੂੰ ਬੰਦਾ ਜਾਂਦਾ ਕਿੱਦਾਂ ਨੂੰ ਆਉਂਦਾ ਸੰਸਾਰ ਸਾਡੇ ਅੱਖਾਂ ਦੇ ਸਾਹਮਣੇ ਹੁਣ ਮੇਰੀ ਵੀ 60-72 ਸਾਲ ਦੀ ਉਮਰ ਆ ਆਏ ਕਿੰਨੇ ਗਏ ਬਾਕੀ ਜਿਹੜੀ ਤੁਸੀਂ ਇੱਕ ਮਿੰਟ ਗੱਲ ਕਰਦੇ ਸੀ ਇਹ ਤਾਂ ਫਿਰ ਅਸੀਂ ਤਾਂ 20-20 ਡਾਲੇ ਦੇ ਦਿਹਾੜੀ ਲਈ ਆ ਚੌਥੇ ਦਿਨ ਕੰਮ ਤੇ ਬਾਗੇ ਚੌਥੇ ਦਿਨ ਕੰਮ ਤੇ ਚਲੇ ਗਏ ਮੈਨੂੰ 20 ਡਾਲੇ ਬਣੇ ਤੜਕੇ 6 ਵਜੇ ਚੱਕਦੇ ਰਾਤ ਦੇ 9 ਵਜੇ ਲਾਇਆ ਮੈਨੂੰ ਹੂੰ 30 ਵਰਕ ਤੇ ਕੰਮ ਕਰਿਆ ਆ ਕੇ ਚੌਥੇ ਦਿਨ ਮੈਂ ਕਿਹਾ ਭਾਈ ਕੁੜੀ ਕੋਈ ਐ ਸੀ ਅੱਜ ਤਾਂ ਭਾਈ ਕੰਮ ਕਰਕੇ ਖਾਣਾ ਉਹਦੇ ਵੀ ਸਾਨੂੰ ਜਾਨੀ ਇਹਨਾਂ ਆ ਕੇ ਇਹਨਾਂ ਨੇ ਕਹਿਣਾ ਕਿ ਠੀਪੇ ਹੋ ਜਣੀ ਜੀ ਤੁਸੀਂ ਵੀ ਕੰਮ ਲੱਭੋ ਤੁਸੀਂ ਉੱਥੇ ਜਾਓ ਸਾਰਾ ਸਿਆਲ ਅਸੀਂ ਤੁਰੇ ਫਿਰਨਾ ਸਿੰਘ ਢਿਲੋਂ ਜੀ ਲਾਈਨ 4 ਉਹ ਸਰਜੀਤ ਸਿੰਘ ਢਿਲੋਂ ਜੀ ਲਾਈਨ ਨੰਬਰ 4 ਕਿਰਪਾ ਕਰ ਸਤਿਕਾਰ ਸਤਿਕਾਰ ਜੀ ਲਓ ਸਰ ਅਜੀ ਮੈਂ ਮੌਤਵਾਰੇ ਨਾਲ ਚ ਕੋਈ ਦੇ ਵਿੱਚ ਪ੍ਰੀਤ ਲੜੀ ਦੇ ਵਿੱਚ ਪੜਿਆ ਸੀਗਾ ਹੂੰ ਉਹ ਸਾਡੇ ਤਿੰਨ ਹੀ ਪਿੰਡ ਦੇ ਵਿੱਚ ਸੇਲੜੀ ਤੇ ਉਹਨੇ ਵੀ ਜਿਹੜਾ ਸਰੀਰ ਹੈ ਜੋ ਸਾਹ ਨਿਕਲਦੇ ਤੇ ਇੱਕ ਜਿਸ ਤਰ੍ਹਾਂ ਵੱਲੋ ਫਿਊਜ ਹੋ ਜਾਂਦਾ ਹੈ ਹੂੰ ਵੱਲੋ ਫਿਊਜ ਹੋ ਜਾਂਦਾ ਹੈ ਤਾਂ ਸਾਫ਼ ਰਹਿੰਦਾ ਤੇ ਉਹਦੇ ਵਿੱਚ ਜਨਰਲ ਮਰਜ਼ੀ ਜਵਲ ਕਰਨ ਨੂੰ ਮੜ ਕੇ ਜਗਦਾ ਨਹੀਂਗਾ ਹੂੰ ਉਹਨੇ ਇਸ ਸਮੇਂ ਬਿਆਨ ਦਿੱਤਾ ਸੀ ਇਹ ਦਿੱਤਾ ਸੀ ਬਸ ਗੱਲ ਹੁਣ ਬਾਕੀ ਦੀ ਗੱਲਾਂ ਭੁੱਲ ਗਏ ਨਹੀਂ ਕਿ ਰਹੀ ਹੈ ਗੱਲ ਠੀਕ ਕੋਲਰ ਦਾ ਤੁਹਾਡੀ ਠੀਕ ਹੈ ਰਾਜ ਚਾਲ ਜੀ ਲਾਈਨ ਅਪ ਫਾਈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਨੂੰ ਜਿਆਦਾ ਤਾਂ ਨਹੀਂ ਪਤਾ ਪਰ ਮੈਂ ਆਪਣੀ ਅੱਡ ਬੀਤੀ ਸੁਣਾਉਣਾ ਤੁਹਾਨੂੰ ਵੱਡੇ ਨਾਨਾ ਜੀ ਅਸੀਂ ਤਿੰਨ ਭਾਈ ਆ ਤੇ ਮੇਰੇ ਫਾਦ ਸਾਹਿਬ ਦੀ ਡੈਥ ਹੋ ਗਈ ਉਹਨਾਂ ਨੇ ਸਾਨੂੰ ਪਾਲਿਆ ਸਾਡੇ ਕੋਲੇ ਆ ਕੇ ਉਹਨਾਂ ਰਹਿਣਾ ਨਹੀਂ ਤੇ ਮੈਂ ਜਰਮਨੀ ਤੋਂ ਗਿਆ ਕੁ ਤਕਰੀਬ 9 ਸਾਲ ਬਾਅਦ ਪੱਕਾ ਹੋ ਕੇ ਤੇ ਇੱਕ ਦਿਨ ਪਹਿਲਾਂ ਮੇਰੇ ਕੋਲੇ ਬੈਠੇ ਮੈਨੂੰ ਪੁੱਛਿਆ ਵੀ ਤੂੰ ਪੈਸੇ ਪੁਛ ਲੈ ਕੇ ਤਾਂ ਨਹੀਂ ਆਇਆ ਕਿਸੇ ਕੋਲ ਮੈਂ ਨਹੀਂ ਮੇਰੇ ਕੋਲੇ ਮੈਂ ਆਪਦੇ ਪੈਸੇ ਕਮਾਏ ਨੇ ਆਪਦੇ ਲੈ ਕੇ ਆਇਆ ਆਪਦੇ ਕਮਾ ਕੇ ਤੁਹਾਨੂੰ ਭੇਜਦਾ ਰਿਹਾ ਤੇ ਬੜੇ ਖੁਸ਼ ਹੋਇਓ ਤੇ ਉਦੋਂ ਬਾਅਦ ਚ ਅਗਲੇ ਅਖੰਡ ਪਾਠ ਦਾ ਭੋਗ ਸੀਗਾ ਅਗਲੇ ਦਿਨ ਉਹ ਇਦਾਂ ਸੋਤੇ ਰਾਤ ਨੂੰ ਸਵੇਰੇ ਉੱਠ ਕੇ ਸਾਰਿਆਂ ਨੂੰ ਵੇੜੇ ਚ ਲਿਆ ਕਹਿੰਦੇ ਜੀ ਪੀ ਅਮਰੀਕਾ ਸੁਣ ਮਮੀ ਨੂੰ ਕਹਿੰਦੇ ਕਹਿੰਦੇ ਵੀ ਦੇਖ ਮੇਰੇ 6 ਪੁੱਤ ਸੀਗੇ ਪੁੱਤ ਤਿੰਨਾਂ ਮਾਮਿਆਂ ਨੂੰ ਕਹਿੰਦੇ ਸੀਗੇ ਉਹ ਤੇ ਤਿੰਨਾਂ ਨੂੰ ਸਾਨੂੰ ਮੈਂ ਸ਼ੀਰ ਸੈੱਟ ਕਰਤੇ ਨੇ ਸਾਰੇ ਆਪ ਆਪਣੇ ਦਾ ਖੁਸ਼ ਨੇ ਤੇ ਮੈਂ ਚੱਜਣਾ ਜੇ ਮੈਨੂੰ ਐਵੇਂ ਕਿਤੇ ਲਈ ਨਾ ਫਿਰੋ ਜੇ ਨਾ ਕਿਤੇ ਹਸਪੀਟਲ ਖੜੇ ਹੋ ਜੇ ਨਾ ਕਿ ਡਾਕਟਰ ਦੇ ਲੈ ਦੀ ਲੋੜ ਆ ਉਹ ਸਾਡੇ ਪਿੰਡ ਸੀਗੇ ਤੇ ਲੋਕ ਵੀ ਸਾਡੇ ਨਾਲ ਕੇ ਉਹ ਕਹਿੰਦੇ ਵੀ ਮੈਨੂੰ ਲੋਕੋ ਕੀ ਲੈ ਜਾਓ ਮੈਂ ਬਾਕੀ ਜੀਆਂ ਨੂੰ ਵੀ ਮਿਲ ਲਵਾਂ ਤੇ ਮੈਂ ਹੁਣ ਜਾਣਾ ਸਾਰੇ ਜਣੇ ਮਿਲੋ ਮੈਨੂੰ ਮੇਰੇ ਲਾਗੇ ਦੋ ਅਜਾ ਉਹੀ ਗੱਲ ਉਹਨਾਂ ਇੰਨੀ ਤੇ ਗੱਡੀ ਸਟਾਪ ਕੀਤੀ ਅਮਰ ਸਾਨੂੰ ਭੱਜ ਗਏ ਲੋਕੋ ਗਿਆ ਨੂੰ ਉਹਨਾਂ ਨੂੰ ਖੜਿਆ ਹੀ ਤੇ ਉਹ ਬਾਕੀ ਜੀਆਂ ਨੂੰ ਮੈਨੂੰ ਹੀ ਕਿਹਾ ਤੁਹਾਨੂੰ ਜਿਹੜੀ ਗੱਲ ਕਹੀ ਤੁਸੀਂ ਮੰਨੀ ਨਹੀਂ ਮੇਰੀ ਚੰਗਾ ਫਿਰ ਆਪਾਂ ਚੱਲੇ ਜਗੇ ਤੇ ਐ ਸੱਚਾਈ ਹੈ ਜੀ ਜਿਹੜੀ ਮੈਂ ਆਪਣੇ ਹੱਦ ਬੀਤੀ ਜਿਹੜੀ ਹੈ ਕੁਦਰਤੀ ਮੈਂ ਉਦੋਂ ਉਥੇ ਗਿਆ ਸੋ ਵਕਤ ਦੇ ਹਿਸਾਬ ਨਾਲ ਬੰਦੇ ਦੇ ਮਨ 'ਚ ਆ ਜਾਂਦਾ ਵੇ ਜਾਣਾਂ ਮੇਰੇ ਖਿਆਲ ਨਾਲ ਜੀ ਇਦਾਂ ਹੈ ਕਿ ਜਿਹੜਾ ਬੰਦਾ ਰੱਬ ਦੇ ਭੈਅ ਚ ਰਹਿੰਦਾ ਹੈ ਉਹਨੂੰ ਇੱਕ ਦਿਨ ਤਰੀਬ-ਤਰੀਬ 24 ਘੰਟੇ ਪਹਿਲਾਂ ਪਤਾ ਮੇਰਾ ਆਪਣਾ ਮੰਨਣਾ ਹੈ ਹੋ ਸਕਦਾ ਅਗਲੇ ਵਿਦਵਾਨ ਸਾਹਿਬ ਆਉਂਦੇ ਨੇ ਕੋਈ ਦੋਨਾਂ ਦੇ ਸੁਣਦੇ ਵਿਚਾਰ ਧੰਨਵਾਦ ਜੀ ਸ਼ਾਹ ਸਾਹਿਬ ਪਰਮਿੰਦਰ ਥੈਂਡ ਇੰਸ਼ੋਰੈਂਸ ਦੀ ਦੁਨੀਆ ਦਾ ਵੱਡਾ ਨੰਬਰ 600 428 7213 thinkinsurance.ca ਅਲਬਰਟਾ ਦੇ BC ਦੇ ਵਿੱਚ ਸੇਵਾਵਾਂ ਪਰਮਿੰਦਰ ਥੈਂਡ ਹੋਣੀ ਤੁਹਾਡੀ ਇੰਸ਼ੋਰੈਂਸ ਦਾ ਕੰਮ ਜਿਹੜਾ ਸਾਰਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਨਸਮੋਰ ਕੇ ਸੁਪਰਵਾਈਜ਼ਾ ਡਿਸੇਬਿਲਟੀ ਇੰਸ਼ੋਰੈਂਸ ਕਰਕੇ ਦਿੰਦੇ ਆ ਤੇ ਹੋਰ ਵੀ ਜਾਣਕਾਰੀ ਕੋਈ ਹੋਵੇ ਤਾਂ ਉਹਦੇ ਲਈ ਪਰਮਿੰਦਰ ਥਿੰਦ ਤੇ ਰਮਨਦੀਪ ਸਿੰਘ ਸੋਹਤ ਦਾ ਅਲਬਰਟਾ ਦੇ ਵਿੱਚ ਮੋਹਨ ਸਿੰਘ ਜੀ ਲਾਈਨ ਨੰਬਰ 2 ਸਤਿਕਾਰ ਜੀ ਸਤਿਕਾਰ ਜੀ ਸਾਬ ਜਿਹੜੀ ਇਹ 85 ਲੱਖ ਜੁਨਾ ਆ ਇਹ ਤਾਂ ਐਵੇਂ ਲੱਗਣਾ ਬਸ ਇਹਾਸ ਗਿਣਿਆ ਹੋਇਆ ਆ ਜੀ ਜੀ ਤੇ ਜੇ ਹੁਣ ਅਸੀਂ ਵੀ ਸਿੱਖ ਵੀ ਦੋ ਬੇੜੀ ਲੱਤਾ ਰੱਖਣਗੇ ਤਾਂ ਫੇਰ ਤਾਂ ਉਹ ਡੁੱਬਣਗੇ ਡੁੱਬਣਗੇ ਰੋਜ਼ ਪੜਦੇ ਆ ਜੇ ਇਹਦੇ ਆ ਉਹ ਸਾਰੀ ਆਸਤਰੀ ਇਹੀ ਦਾਜੀ ਬੰਦਾ ਕਿੱਥੋਂ ਨਾ ਉਹ ਤਾਂ ਨਾ ਕਿਤੇ ਜਾਂਦਾ ਜਿਵੇਂ ਪਹਿਲੇ ਕਹਿੰਦੇ ਬੰਦਾ ਵੱਲ ਵੱਲ ਫਿਊਜ ਹੋ ਜਾਂਦਾ ਬਸ ਇਹੀ ਹਾਲ ਹੈ ਇਹਦਾ ਹੰਡਰ ਬੋਡਿਕਾ ਇਹ ਦੱਸੇ ਬੰਦੇ ਦਾ ਕੋਈ ਪਤਾ ਨਹੀਂ ਦੇਖੋ ਮੈਂ ਤੁਹਾਨੂੰ ਛੋਟੇ ਸ਼ਲੋਕ ਛੋਟਾ ਨਾ ਗੁਰੂ ਸਾਹਿਬ ਕਹਿੰਦਾ ਇੱਕ ਦੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵੀ ਸੁਟੀਏ ਇੱਕ ਵੀ ਫੇਰ ਹੱਸਣ ਪਾਏ ਨਾ ਉਹ ਨਿਕ ਏਵ ਕਿੱਥੇ ਜਾਏ ਸਵਾਏ ਉਹ ਕਹਿੰਦਾ ਨਾ ਹੁੰਦੇ ਦਾ ਪਤਾ ਨਹੀਂ 100 ਜਾਂਦੇ ਦਾ ਪਤਾ ਬੰਦਾ ਕਿੱਦੇ ਹੁੰਦਾ ਜੇ ਕਿ ਸਾਨੂੰ ਕੋਈ ਔਡੀਕ ਜਾਂ ਰੱਬ ਸਾਨੂੰ ਔਡੀਕ ਬੰਦੇ ਨੂੰ ਕੋਈ ਔਡੀਕ ਨਹੀਂ ਮਿੱਟੀ ਦਾ ਬੰਦਾ ਮਿੱਟੀ 'ਚ ਰਹਿ ਜਾਣੀ ਹੈ ਜਿਹੜਾ ਦੋਨ ਬੱਚਾ ਜੰਮਦਾ ਪਹਿਲਾਂ ਸਾਰੀ ਨਹੀਂ ਜਾਂਦਾ ਨਾ ਬੋਲਦਾ ਆ ਜਦੋਂ ਆ منہ ਮੂੰਹ ਸਾਫ਼ ਕਰਦੇ ਉਹਦੇ ਅੰਦਰ ਆਕਸੀਜਨ ਹੁੰਦੀ ਆ ਬਾਹਰਲੀ ਆਕਸੀਜਨ ਨਾ ਮਿਲ ਕੇ ਤਾਂ ਬੰਦਾ ਨਿਆਣਾ ਸਾਹ ਲੈਣ ਲੱਗਦਾ ਫਿਰ ਬੰਦਾ ਰੋਣ ਲੱਗਦਾ ਨਿਆਣਾ ਪਹਿਲਾਂ ਵੀ ਰੋਣਾ ਕੋਈ ਨਹੀਂ ਏਸੀ ਤਰ੍ਹਾਂ ਜਦੋਂ ਆਕਸੀਜਨ ਮੈਦਰੀ ਦੋਇਆ ਜਦੋਂ ਆਕਸੀਜਨ ਕਮਜ਼ੋਰ ਹੋ ਜਾਂਦੀ ਹੌਲੀ ਹੌਲੀ ਹੁੰਦੀ ਤੇ ਇੱਕ ਜਿਹੜੀ ਫਿਊਮ ਉਹ ਹੋ ਗਿਆ ਬਸ ਗੱਲ ਬੜੀ ਬਦ ਮਿੱਟੀ ਮਿੱਡ ਮਾੜੀ ਮਿੱਟੀ ਰਾਜਣਾ ਸੋ ਇਹ ਗੱਲ ਐਵੇਂ ਜੇ ਬੰਦੇ ਬੰਮੇ ਕਹੀਈ ਆ ਉਹ ਹੁੰਦਾ ਬੰਦੇ ਕਿੱਥੇ ਜਾਣਾ ਜਾਂ ਅਸਮਾਨੀਏ ਰੂਹਾਂ ਜੇ ਅਦਾ ਰੂਹਾਂ ਹੁੰਦੀਆਂ ਉਹ ਐਕਸੀਡੈਂਟ ਦਾ ਹੁਣ ਕਹ ਦੇਗਾ ਇਹ ਲੱਗਦੀ ਹੈ ਨਾ ਰੂਹਾਂ ਰੂਹੇ ਨਾਲ ਕਦੇ ਨਹੀਂ ਗੋਦ ਰਸਦਾ ਠੀਕ ਜੀ ਧੰਨਵਾਦ ਜੀ ਪ੍ਰਭਜੋਤ ਪਾਲ ਸਿੰਘ ਜੀ ਲਾਈਨ ਨੰਬਰ 3 ਹਲਸਾ ਵਾਇਬ੍ਰੇਟੀ ਸਾਡੇ ਜੀ ਮੋਬਾਈਲਰ ਜੀ ਕਾ ਖਾਲਸਾ ਸਾਹਿਬ ਅੱਜ ਦੀ ਫਤਿਹ ਜੀ ਹਾਂ ਜੀ ਸਹਿਬ ਗੱਲ ਇਦਾਂ ਆਪਾਂ ਰਿਜ਼ਵਾਨ ਤਾਂ ਕੋਈ ਹੈ ਨਹੀਂਗੇ ਜੋ ਸਮਝਾਉਂਦਾ ਉਹ ਗੱਲ ਆਪਾਂ ਕਰਾਂਗੇ ਹਾਂ ਜੀ ਵਧੀਆ ਲੱਗਦੀ ਹੁੰਦੀ ਹੈ ਅੰਦੇ ਜਿਹੜਾ ਗੱਲ ਆਪਣੇ ਆਪਣੇ ਪ੍ਰੀਤ ਲੜੀ ਸਾਹਿਬ ਦੀ ਇੱਕ ਗੱਲ ਕੀਤੀ ਹੈਗੀ ਆ ਵੀ ਜਦੋਂ ਪਲਬ ਕਯੂਜ਼ ਹੋ ਜਾਂਦਾ ਆ ਤਾਂ ਉਹ ਪਲਬ ਜਗਣਾ ਹਟ ਜਾਂਦਾ ਮੇਰੀ ਸੋਚ ਇਹ ਕਹਿੰਦੀ ਆ ਵੀ ਦੇਖੋ ਇਹ ਜਦੋਂ ਦੀ ਆਪਾਂ ਉਦਾਹਰਨ ਲੈਂਦੇ ਆ ਜੇ ਸਾਡਾ ਹਾਰਟ ਜੇ ਫੇਲ ਹੁੰਦਾ ਸਾਡਾ ਕੋਈ ਅੰਗ ਵੱਡਿਆ ਜਾਂਦਾ ਸਾਡਾ ਖਾਰ ਰੁਕ ਜਾਂਦਾ ਜਾਂ ਦੂਜਾ ਕਿੰਨਾ ਕਿਸੇ ਨੂੰ ਹਾਰਟ ਅਟੈਕ ਹੁੰਦਾ ਆ ਉਹਨੂੰ ਡਾਕਟਰ ਜਿਹੜੇ ਆ ਦੁਬਾਰਾ ਰਿਵਾਈਵ ਕਰ ਲੈਂਦੇ ਆ ਉਹਨੂੰ ਦੁਬਾਰਾ ਜ਼ਿੰਦਗੀ ਮਿਲ ਜਾਂਦੀ ਆ ਜਾਨਕਿ ਜਿਹੜਾ ਇੱਕ ਔਰਨਾਮੈਂਟ ਹੈਗਾ ਆ ਉਹਦੇ ਨਾਲ ਸੰਬੰਧ ਨਹੀਂ ਹੈਗਾ ਇਹਦੇ ਵਿੱਚ ਗੱਡਾਂ ਇਹਨੂੰ ਆਤਮਾ ਕਹਿ ਲੋ ਕਈ ਜੱਜ ਕੋਈ ਆ ਅਨਰਜੀ ਕਹਿੰਦੇ ਕੋਈ ਕੁਛ ਕਹਿੰਦਾ ਕੋਈ ਨਾਂ ਕੋਈ ਨਾਂ ਦਿੰਦਾ ਬਿਲਕੁਲ ਇਹੋ ਕੋਈ ਉਸ ਕੁਦਰਤ ਸਾਕਣ ਵਾਲੇ ਦਾ ਕੋਈ ਅੰਗ ਹੈਗਾ ਆ ਉਹ ਕੋਈ ਉਹਦਾ ਹਿੱਸਾ ਹੈਗਾ ਆ ਜਿਹੜਾ ਸਾਡੇ ਵਿੱਚ ਮੌਜੂਦ ਹੁੰਦਾ ਜਿਹਨੂੰ ਅਸੀਂ ਪਰਮਾਤਮਾ ਰੱਬ ਕਹਿ ਲੈਨੇ ਆ ਉਹ ਉਹਦਾ ਇਹ ਅੰਸ਼ ਹੈਗਾ ਆ ਜਿਹਨੇ ਰ ਸਾਡੇ ਵਿੱਚ ਮੌਜੂਦ ਹੈਗਾ ਆ 19 ਦੇ ਰਜਿਤਾ ਵੀ ਬਲਬ 'ਚ ਬਿਜਲੀ ਹੋਵੇ ਤਾਂ ਬਲਬ ਜਗਦਾ ਨਾ ਕਿ ਬਲਬ ਦੀ ਮੌਜੂਦਗੀ ਜਿਹੜੀ ਆ ਬਲਬ ਦਾ ਜਿਹੜੀ ਹੁੰਦਾ ਬਲਬ ਨਹੀਂ ਜਗਾਉਂਦੀ ਬਲਕਿ ਉਹਦੇ ਵਿੱਚ ਜਦੋਂ એનર્ਜੀ ਆਉਂਦੀ ਹੈਗੀ ਆ ਉਹਦੇ ਵਿੱਚ ਕੋਈ ਚੀਜ਼ ਐਂਟਰ ਐਂਟਰ ਹੁੰਦੀ ਆ ਉਹਦੇ ਵਿੱਚ ਕੋਈ ਐਕਟੀਵਿਟੀ ਹੁੰਦੀ ਆ ਤੋਂ ਮੇਰਾ ਤਾਂ ਇਹੋ ਹੀ ਮੰਨਣਾ ਆ ਕਿ ਆਤਮਾ ਐ ਕੋਈ ਚੀਜ਼ ਉਹਦੇ ਕਰਕੇ ਸਭ ਕੁਝ ਹੈਗਾ ਆ ਤੇ ਜੇ ਅਸੀਂ ਇਸ ਗੱਲ ਨੂੰ ਮੰਨ ਲੈਂਦੇ ਆ ਪੀ ਇੱਕ ਦਿਨ ਮੌਤ ਹੋਣੀ ਆ ਤੇ ਜ਼ਿੰਦਗੀ ਬਹੁਤ ਸੌਖੀ ਚੱਲਦੀ ਆ ਜੇ ਅਸੀਂ ਇਸ ਗੱਲ ਦੀ ਚਿੰਤਾ ਕਰੀ ਜਾਵਾਂਗੇ ਜਿਹੜੀ ਡੈਫੀਨੇਟ ਗੱਲ ਆ ਡੈਫੀਨੇਟ ਨੂੰ ਮੰਨ ਲਓ ਤੇ ਜ਼ਿੰਦਗੀ ਸੌਖੀ ਆ ਜੇ ਸੱਚ ਨੂੰ ਆਪਾਂ ਚੁਟਲਾਈ ਜਾਈਏ ਤਾਂ ਅਖੀਰ ਜਿੱਥ ਸੱਚ ਦੀ ਹੋਣੀ ਆ ਉਹ ਤੋਂ ਡਰ ਡਰ ਕੇ ਹੀ ਦੇਵਾਂਗੇ ਉਹ ਰੋਟੀ ਖਾ ਉਹ ਉਹ ਜਿਹੜੇ ਜਿਹੜੇ ਫਤਿਹ ਜੀ ਅੱਛਾ ਇੱਕ ਨਰਕ ਸਵਰਗ ਵਾਲਾ ਚੱਕਰ ਪਾ ਆ ਕਈ ਸਵਰਗਤ ਜਾਣਾ ਨਰਕਤ ਜਾਣਾ ਇਹ ਤਾਂ ਇਹ ਚੀਜ਼ ਤੇ ਇਹ ਤਾਂ ਮੈਨੂੰ ਲੱਗਦਾ ਡਰਾਉਣ ਵਾਲੀ ਕਹਾਣੀ ਹੈ ਜਿਹੜਾ ਕਿਸ ਨੇ ਵੇਖਿਆ ਇੱਥੇ ਹੀ ਆ ਕਈ ਕੰਮ ਉਹ ਕਹਿੰਦਾ ਇੱਥੇ ਹੀ ਆ ਸਾਰਾ ਕੁਝ ਹੋਰ ਨਹੀਂ ਕਿਤੇ ਹੈ ਕੁਝ ਗ੍ਰੈਂਡ ਪਾਸ ਵੱਡੀ ਛੋਟੀ ਕੋਈ ਪਾਰਟੀ ਕਰਨੀ ਆ ਤਾਂ 84 ਤੇ 128 ਤੇ ਕੁਲਤਾਰ ਸਿੰਘ ਠਿਆੜਾ ਹਰਪਾਲ ਸਿੰਘ ਸੂਤ ਤੇ ਸੁਚਾ ਸਿੰਘ ਪੱਡਾ ਵਧੀਆ ਪਾਰਟੀ ਸੇਵਾ ਭਾਵਨਾ ਪੂਰੀ ਸਰੀ ਦਾ ਤਾਜ ਗ੍ਰੈਂਡ ਤਾਜ ਤੁਹਾਡੇ ਬਜਟ ਦੇ ਹਿਸਾਬ ਨਾਲ ਗੱਲਾਂ ਫਿੱਟ ਆਉਂਦੀਆਂ ਸਰੀ ਦਾ ਗ੍ਰੈਂਡ ਪਾਜ ਫਾਲਸਿੰਗ ਕੰਗਜੀ ਲਾਈਨ ਨੰਬਰ 4 ਸਤਿਕਾ ਜਲ ਸਾਹਿਬ ਸਤਿਕਾ ਬਾਈ ਜੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਮੈਂ ਵੀ ਸੋਚਦਾ ਬੰਦੇ ਨੂੰ ਸਿੱਧੇ ਪੌਣ ਲਈ ਹੈ ਜੋ ਵੀ ਡਰਾਵੇ ਹੈਗੇ ਕੁਛ ਵੀ ਹੈ ਕੋਈ ਸੌਂ ਮੰਨਦਾ ਕੋਈ ਨਹੀਂ ਮੰਨਦਾ ਪਰ ਮਨੁੱਖ ਨੂੰ ਸਿੱਧੇ ਰਾਹ ਤੇ ਪੌਣ ਲਈ ਹੈ ਇਹ ਚੀਜ਼ਾਂ ਵਧੀਆ ਨਹੀਂ ਤਾਂ ਬੰਦਾ ਇੱਥੇ ਨਾ ਕਰੇ ਇੰਨਾ ਜ਼ਾਲਮ ਹੋ ਜਾਏ ਕੁਝ ਵਨੋਂ ਸੇ ਵੀ ਰੱਬ ਦਾ ਭੋ ਹੈਗਾ ਤੇ ਆ ਕੀਤਾ ਤਾਂ ਮੇਰਾ ਇਦਾਂ ਹੋ ਜਾਣਾ ਪਤਾ ਨਹੀਂ ਮੇਰੀ ਕਿਹੜੀ ਜੁਨੇ ਪੈਣਾ ਜਾਂ ਕਿਦਾਂ ਹਾਲਾਂਕਿ ਦੇਖਿਆ ਕਿ ਇਹਨੇ ਵੀ ਕੁਝ ਨਹੀਂਗਾ ਤੇ ਮੈਂ ਇੱਕ ਮੜੀ ਜੀ ਗੱਲ ਤੇ ਘੰਟਾ ਘੰਟਾ ਵੇਟ ਕਰਨੀ ਪੈਂਦੀ ਗੱਲ ਸੱਚੀ ਹੈ ਉਹ ਭਾਈ ਸਾਹਿਬ ਗੱਲ ਵਧੀਆ ਵਧੀਆ ਕਰਕੇ ਗਏ ਉਹ ਗੱਲ ਤਾਂ ਮੈਨੂੰ ਲੱਗਦਾ 12 ਸਾਲਕ ਦਾ ਕੰਟਰੈਕਟ ਤੇ ਲਿਬਰਲ ਦਾ ਸਰਕਾਰ ਦਾ ਹੈਗਾ ਜਿਹੜਾ ਰਸੂਜੀਆਂ ਦਾ ਮੈਨੂੰ ਲੱਗਦਾ 4 ਕੁ ਮਹੀਨੇ ਹੋ ਮੈਨੂੰ ਲੱਗਦਾ ਵੀ ਸਰਕਾਰ ਇਸ ਇਹੋ ਜਿਹਾ ਹਾਲ ਰਿਹਾ ਤੇ ਹਾਲਾਤ ਬਹੁਤ ਮਾੜੇ ਆ ਬਿਲਕੁਲ ਜੇ ਇਸ ਬੰਦੇ ਨੂੰ ਮਿਲਦਾ 3000 ਉਹ ਵੀ ਵਾਦੀ ਵੀ ਤਾ ਉਹ ਮੈਂ ਤਾਂ ਹੈਰਾਨ ਆ ਤੇ ਇਹਨਾਂ ਦੀਆਂ ਔਰਤਾਂ ਵੀ ਇਹਨਾਂ ਨੂੰ ਸਮਝਾਉਂਦੀਆਂ ਨਹੀਂ ਇਹ ਬੱਚੇ ਪਾਲਣੇ ਕਿੱਦਾਂ ਪਰ ਪਾਲਣੇ ਕਿੱਦਾਂ ਗਵਰਨਮੈਂਟ ਦੇਈ ਜਾਂਦੀ ਪਾਲਣੇ ਹੀ ਇਹਨਾਂ ਨੇ ਇਹ ਗੱਲ ਲੋਕਾਂ ਨੂੰ ਸੋਚਣੀ ਪੈਣੀ ਤੁਸੀਂ ਇਹ ਦਿਸ਼ਾ ਲੈ ਕੇ ਜਾਂਦਾ ਮੈਂ ਸੌਰੀ ਮੈਂ ਉੱਧਰ ਵੀ ਚਲਾ ਗਿਆ ਪਰ ਉਹ ਗੱਲ ਕਰਨ ਵਾਲੇ ਹੀ ਤੁਸੀਂ ਤੇਨੂੰ ਸਲੂਟ ਹੈ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਕੈਨੇਡੀਅਨ ਨੂੰ ਸਮਝਣਾ ਪੈਣਾ ਗਵਰਨਮੈਂਟ ਨੂੰ ਸਮਝਣਾ ਪੈਣਾ ਕਿ ਐਵੇਂ ਆਵਾ ਗੋਣ ਆਪਾਂ ਆਪੇ ਦੇ ਰਹੇ ਆ ਗਵਰਨਮੈਂਟ ਦੇ ਰਹੀ ਆਪਾਂ ਹੀ ਦੇ ਰਹੇ ਆ ਲੋਕੀ ਪਰ ਅਸੀਂ ਤੰਗ ਹੋ ਕੇ ਕੰਨਾ ਜਿਹਰੇ ਬੋਸ ਆਂ ਪ੍ਰੋਗਰਾਮ ਧੰਨਵਾਦ ਜੀ ਹੋਵੇ ਰੋ ਜੀ ਤੁਹਾਜੀ ਜੈਰੀ ਬਰਾਡ 600 702 8889 ਬੈਸਟ ਡੀਲਰ ਬੈਸਟ ਸਟੇਸ ਸਾਰੇ ਬੀਸੀ ਚ ਮਾਰਗੇਜ ਦੀਆਂ ਸਬਾਮਾਂ ਜੈਰੀ ਬਰਾਡ ਮਾਰਗੇਜ ਜਨਾਬ ਬੈਂਕ ਦਵੇ ਜਾਂ ਕ੍ਰੈਡਿਟ ਯੂਨੀਅਨ ਨਾਮ ਬਜ਼ਨ ਚ ਜੈਰੀ ਬਰਾਡ ਉਹ ਫਿਰ ਹੀਲਾ ਕਰਕੇ ਦਿੰਦੇ ਆ ਕਿ ਤੁਹਾਨੂੰ ਪਰਸਨਲ ਮਾਰਗੇਜ ਲੈ ਕੇ ਦੇਣਗੇ ਪਰ ਮਹਿੰਗੀ ਨਹੀਂ ਹੋ 6047628889 ਲਾਲਜੋ ਸਿੰਘ ਜੀ ਦਾ ਨੰਬਰ 5 ਹਾਂਜੀ ਪ੍ਰਹਿਰਜੀ ਸਿੰਘ ਜੀ ਸਤਿਕਾਰ ਸਹਿਬ ਆਪ ਜੀ ਨੂੰ ਤੇ ਆਪ ਜੀ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਸਵਾਦ ਦੇਣ ਦਾ ਜੀ ਸਾਡੇ ਮੌਤ ਹਾਂਜੀ ਧੰਨਵਾਦ ਜੀ ਤੇ ਤੁਸੀਂ ਮੌਤ ਬਾਰੇ ਗੱਲ ਕਰਦੇ ਜਿਸ ਤਰ੍ਹਾਂ ਜਿਵੇਂ ਮੇਰਾ ਆਪਣਾ ਤਾਂ ਕੋਈ ਗਿਆਨ ਨਹੀਂਗਾ ਨਾ ਮੇਰੇ ਕੋਲ ਵੀ ਆਪਣੀ ਹੈਗੀ ਆ ਸਰਚ ਦੇਖੋ ਸਤਿਗੁਰੂ ਇਹ ਕਹਿੰਦਾ ਵੀ ਉਹ ਬੇਰਾਰੇ 부ਝੀਏ ਜਦ ਆਏ ਪਏ ਜੰਮ ਫੰਦ ਕਹਿੰਦੇ ਉਹ ਵੇਲਾ ਕਿਸੇ ਨੂੰ ਨਹੀਂ ਪਤਾ ਜਦੋਂ ਜੰਮ ਦਾ ਫੰਦਾ ਪੈ ਜਾਣਾ ਹੁਣ ਇਹ ਨਹੀਂ ਪਤਾ ਕਿ ਜਮ ਦਾ ਫੰਦਾ ਕੀ ਕਦੋਂ ਪੈਂਦਾ ਸਤਿਗੁਰੂ ਜਾਣੇ ਜਾਂ ਜਿਹਦੇ ਪੈਂਦਾ ਉਹ ਜਾਣੇ ਜਾਂ ਜਦੋਂ ਪਊਗਾ ਉਦੋਂ ਪਤਾ ਲੱਗੂਗਾ ਫਿਰ ਇਹ ਦੇਖੋ ਫਰੀਦ ਸਾਹਿਬ ਦਾ ਵਜਣ ਫਰੀਦਾ ਦਉ ਦੇਵੀ ਬਲੰਦਿਆ ਮਲਕ ਬੈਠਾ ਆਏ ਗੜ ਲੇਤਾ ਘਟ ਲੁੱਟਿਆ ਦੀਵੜੇ ਗਿਆ ਵਜਾਏ ਅੱਖਾਂ ਤੋਂ ਗੜਵੇਂ ਨੇ ਸਰੀਰ ਘਟਵੇਂ ਨੇ ਅੰਦਰ ਕਿਲਾ ਗੜਵੇਂ ਨੇ ਹੁੰਦਾ ਕਿਲਾ ਸਰੀਰ ਦਾ ਕਿਲਾ ਘਟ ਅੰਦਰੋਂ ਚੋਰ ਆਉਂਦਾ ਤੇ ਲੁੱਟ ਕੇ ਕੀ ਲੈ ਕੇ ਜਾਂਦਾ ਕੰਟਰੋਲ ਲੈ ਕੇ ਜਾਂਦਾ ਮੁੜ ਕੇ ਦੀਵੜੇ ਵਜਾ ਜਾਂਦਾ ਹੁਣ ਸਤਿਗੁਰੂ ਦੀ ਪਾਣੀ ਦੇ ਵਿੱਚ ਸਾਰਾ ਕੁਝ ਹੈ ਜਿੱਦਾਂ ਜਿੱਦਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਜਿੰਨੇ ਜਿੰਨੀ ਵੀ ਉਹ ਪੜੀਆ ਅਰਥ ਕੀਤੇ ਜਾਂ ਆਪਣੇ ਸਤਵੇਦਨ ਸ਼ੀਲ ਜਾਂ ਆਪਣੇ ਦੇ ਅਰਥ ਜਾਂ ਆਪਣੇ ਦਿਲੋਂ ਤੋਂ ਮਾਰਾ ਕੀਤੇ ਇਹਦੇ ਸਗੁਰ ਨੇ ਸੋਚ ਦਿੱਤੇ ਆ ਉਹਦੇ ਵਿੱਚ ਹਰੇਕ ਚੀਜ਼ ਲਿਖੀ ਹੋਈ ਆ ਕਿ ਜੇ ਬੰਦਾ ਆ ਕਰਦਾ ਆ ਆ ਹੋਊ ਜੇ ਆ ਕਰਦਾ ਆ ਹੋਊਗਾ ਜੇ ਉਹ ਚੰਗੇ ਮੰਦੇ ਨਰਕ ਸਵਰਗ ਜਾਂ ਪੁਰਸ ਲਾਤ ਹੁੰਦਾ ਵਾ ਦੋਸ਼ ਕਾ ਦੀ ਅੱਗ ਪੁਰਸ ਲਾਤ ਕਾ ਪੰਤ ਤੇ ਲਾਨਾ ਸੰਗ ਦਾ ਸਾਥੀ ਕਮਨ ਅਕੇਲਾ ਉਥੇ ਤੁਸੀਂ ਕੱਲਿਆਂ ਨੇ ਜਾਣਾ ਵਾ ਉਹ ਪੁਰਸ ਲਾਤ ਦੇ ਮਤਲਬ ਕਿ ਜਿਹੜੀ ਬਾਣੀ ਆ ਮੈਂ ਤਾਂ ਉਹਦੇ ਤੇ ਮੇਰਾ ਆਪਣਾ ਕੋਈ ਕਿਆ ਨਹੀਂ ਉਹਦੇ ਤੇ ਸਾਰਾ ਕੁਝ ਲਿਖਿਆ ਵਾ ਕਿ ਪੁਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਾ ਸਾਰਾ ਮਰਨਾ ਵਿਛੋੜਾ ਸਭ ਦਾ ਪੁਛੋ ਜਾਏ ਸਿਆਣਿਆ ਸੰਗੇ ਮਿਲਣ ਕੇ ਨਾ ਜੀ ਲਾਲੋ ਜੀ ਸਵਰਗ ਨਾਰਕ ਵੀ ਹੈ हां सतगुरु दी ਬਾਣੀ ਦੇ ਵਿੱਚ ਹੈਗਾ ਵਾ ਮੈਨੂੰ ਪੰਕਤੀਆਂ ਚੇਤੇ ਨਹੀਂ ਆਂ ਇੰਨੀਆਂ ਕਈ ਵਾਰ ਵਿਸਰ ਜਾਂਦੀਆਂ ਵਾ ਹੁਣ ਮੈਂ ਚੈੱਕ ਕਾਲ ਕਰਦਾ ਤੇ ਉਹਦੇ ਵਿੱਚ ਲਿਖਿਆ ਵਾ ਵੀ ਜਿਵੇਂ ਜਿਹੋ ਜੇ ਤੂੰ ਕਰਮ ਕਰਾਉਣੇ ਆ ਹੁਣ ਜੇ ਤਾਂ ਮੈਂ ਸਤਗੁਰੂ ਵਿੱਚ 84 ਲੱਖ ਜੂਨੋਂ ਪਾਈ ਹਾਂਜੀ ਹੁਣ ਇਹਦੇ ਮੈਂ ਕੀ ਅਰਥ ਕਰਾਵਾਂ ਰੱਜ ਕੇ ਸਭ ਹੂੰ ਕੋਟਾ ਹੁਣ ਜੇ 84 ਲੱਖ ਜੂਨੋਂ ਪਾਈ ਤੇ ਉਹ ਜੇ ਕਹਿੰਦਾ ਮੈਂ ਰਿਚ ਕੇ ਦਿੰਨਾ 84 ਲੱਖ ਨੂੰ ਹੁਣ ਮੈਨੂੰ ਕੋਈ ਹੋਰ ਅਰਥ ਕਰ ਦੇਵੇ ਨਾ ਕਰ ਦੇਵੇ ਮੇਰੇ ਮੇਰੇ ਤਾਂ ਜਦੋਂ ਤਮਾਕ ਦੇ ਅਰਥ ਭਾਈ ਹਰਜੀਤ ਸਿੰਘ ਜੀ ਉਹੀ ਆ ਵੀ 84 ਲੱਖ ਜੂਨ ਹੈਗੀ ਆ ਮਾਨਸ ਕੋ ਦੀ ਵਡਿਆਈ ਮਾਨਸੇ ਨੂੰ ਵਡਿਆਈ ਦਿੱਤੀ ਹੋਈ ਆ ਐ ਇਸ ਧਰਤੀ ਮੇ ਤੇਰੀ ਸਖਤਾਰੀ ਤੈਨੂੰ ਮੈਂ ਸਰਦਾਰ ਸਖਤਾਰੀ ਤੇਰਾ ਹੁਕਮ ਸਾਰੇ ਮੰਨਦੇ ਆ ਔਰ ਮੈਂ ਤੈਨੂੰ ਇੱਕ ਹੁਕਮਰਾਨ ਬਣਾ ਕੇ ਭੇਜਿਆ ਪਾਣੀ ਦੇ ਵਿੱਚ ਬਹੁਤ ਜਿੰਨੀ ਜਿੰਨੀ ਭਾਈ ਹਰਜੀਤ ਸਿੰਘ ਜੀ ਆਪ ਜੀ ਖੋਜ ਕਰੋਗੇ ਉਹਨਾਂ ਉਹਨਾਂ ਆਪ ਜੀ ਨੂੰ ਜਿੰਨਾ ਜਿੰਨਾ ਦੁੱਧ ਜਿਹੜਾ ਰੈੱਡ ਕੋں ਕੇ ਉਹਨਾਂ ਦਾ ਮੱਖਣ ਉਹਨਾਂ ਦਾ ਘਿਓ ਉਹਨਾਂ ਨੇ ਤੁਹਾਨੂੰ ਚੁੰਘਾਈ ਦੇ ਵਿੱਚ ਮੇਰੀ ਜਿਹੜੀ ਭਾਵਨਾ ਵਾ ਮੈਂ ਕਹਿੰਦਾ ਹਾਂ ਭਾਈ ਬਈ ਜਿਵੇਂ ਮੈਂ ਕਰਮ ਕਰਾਉਂਗਾ ਤੇ ਇਹ ਵੀ ਉਹਨੂੰ ਭੋਗਣੇ ਪੈਣਗੇ ਹਾਂਜੀ ਜੈਸਾ ਵੀ ਜੇ ਸੂਲ ਲੋਣੇ ਕਰਮਾਂ ਸੰਧ ਸਰੀਰ ਜੋ ਵੀ ਅੰਤ ਖਲੋ ਆਏ ਹੁਣੇ ਬਾਣੀ ਵਿੱਚ ਹੀ ਆ ਵੀ ਜਿਹੜਾ ਤੂੰ ਸਰੀਰ ਰੂਪੀ ਖੇਤ ਵਾ ਜਿੱਦਾ ਕਿਸਾਨ ਖੇਤ ਚ ਬੀਜਦਾ ਜੇ ਅੰਬੂਰ ਵਿੱਚੋਂ ਅੰਗੂਰ ਉਹਨੂੰ ਲੱਭਣਗੇ ਜੇ ਉਹ ਕਿਕਰਾਂ ਦੇ ਸੂਲਾਂ ਵਿੱਚੋਂ ਕਿਕਰਾਂ ਦੇ ਤੁੱਕੇ ਨਿਕਲਣਗੇ ਜੇ ਡਕੋਨੂ ਵਿੱਚੋਂ ਤ੍ਰਿਕਾ ਦੇ ਵੀ ਤੇ ਸਰੀਰ ਦੇ ਵਿੱਚ ਅੰਤ ਖਲੋਆ ਅੰਤ ਨੂੰ ਤੇਰੇ ਸਰੀਰ ਦੇ ਵਿੱਚੋਂ ਜੋ ਵੀ ਸੋ ਲਉਣਾ ਕਰਮਾਂ ਸੰਧ ਦਾ ਖੇਤ ਉਹ ਕਹਿੰਦੇ ਤੈਨੂੰ ਇਹ ਭੋਗਣਾ ਪੈਣਾ ਵਾ ਜੋ ਤੂੰ ਕਰੇਗਾ ਅੱਜ ਸਮਾਂ ਦੇਣ ਦਾ ਜੀ ਧੰਨਵਾਦ ਜੀ ਵਪਾਰ ਸਨ ਬਾਅਦ ਸਰਜੀਤ ਸਿੰਘ ਜੀ ਤੇ ਅਮਰਜੀਤ ਸਿੰਘ ਸਿੱਧੂ ਹੁਣੇ ਗੱਲ ਕਰਦੇ ਆਂ ਮੌਤ ਤੋਂ ਬਹੁਤ ਬੰਦੇ ਜ਼ਿਆਦਾਤਰ ਕਹਿੰਦੇ ਵੀ ਸੱਚ ਹੈ ਆਪਣੀ ਜ਼ਿੰਦਗੀ ਵਧੀਆ ਜੀਉ ਵਸੋ ਖੇਡੋ ਖਾਓ ਪੀਓ ਤੇ ਜਿਹੜਾ ਵੀ ਕੰਮ ਰੱਬ ਨੂੰ ਧਿਆਉਣਾ ਰੱਬ ਨੂੰ ਧਿਆਓ ਜਿਹੜੀ ਵੀ ਚੀਜ਼ ਨੂੰ ਜੀ ਕਰਦਾ ਉਹ ਕਰੋ ਹਾਂ ਪਰ ਤੱਕਾ ਨਹੀਂ ਕਰਨਾ ਕਿਸੇ ਨਾਲ ਕਿਸੇ ਦਾ ਹੱਕ ਨਹੀਂ ਖੋਣਾ ਸਿੱਧੀ ਜ਼ਿੰਦਗੀ ਇਹਦਾ ਇਹ ਵੀ ਨਹੀਂ ਮਤਵੇ ਜਿਹੜੀ ਮੌਤ ਪੱਕੀ ਆ ਤੇ ਮਰਜੀ ਕਰ ਲਓ ਪਰ ਮੌਤ ਨੂੰ ਇਸ ਤਰ੍ਹਾਂ ਵੀ ਨਹੀਂ ਸੋਚਿਆ ਜਾ ਸਕਦਾ ਕਿ ਇਹ ਵਿੱਚੋਂ ਡਰ ਹੈ ਕਿਉਂਕਿ ਡਰ ਕੀਤਾ ਕੱਖ ਨਹੀਂ ਹੋਣੀ ਕਹਾਣੀ ਜਿਹੜਾ ਸੱਚ ਆ ਉਹ ਤਾਂ ਹੋਣਾ ਹੀ ਹੋਣਾ ਜਾਣਾ ਹੀ ਜਾਣਾ ਹਾਂ ਪਰ ਇਹ ਇਥੋਂ ਛੱਡਣਾ ਔਖਾ ਲੱਗਦਾ ਆਪਣੀਆਂ ਜੱਫੀਆਂ ਬਹੁਤ ਵੱਡੀਆਂ ਇੱਕ ਡੈਸਟੀਨੇਸ਼ਨ ਦਾ ਨਹੀਂ ਪਤਾ ਇੱਕ ਬੰਦਾ ਕਹਿੰਦਾ ਮਰਨ ਨੂੰ ਤਾਂ ਕਹਿੰਦਾ ਮੈਂ ਤਿਆਰ ਆ ਪਰ ਬਾਈ ਜੀ ਡੈਸਟੀਨੇਸ਼ਨ ਦਾ ਨਹੀਂ ਪਤਾ ਜਾਣਾ ਕਿੱਥੇ ਐ ਮੈਂ ਵੈ ਵੀ ਬਾਈ ਜੀ ਤਾਂ ਹੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਸਰ ਤੁਹਾਡੇ ਅੱਜ ਦੋਨੇ ਜਿਹੜੇ ਤੁਸੀਂ ਵਿਸ਼ੇ ਟੱਚ ਕੀਤੇ ਬਹੁਤ ਵਧੀਆ ਸੀ ਇੱਕ ਤਾਂ ਤੁਹਾਡਾ ਲੋਕਲ ਵਿਸ਼ਾ ਸੀਗਾ ਉਹ ਵੀ ਧਿਆਨ ਮੰਗਦਾ ਕਿਉਂਕਿ ਕਿਸੇ ਨੇ ਕਿਸੇ ਹੱਦ ਤੱਕ ਇਹ ਨੈਸ਼ਨਲ ਵੀ ਹੈਗਾ ਬਹੁਤ ਹੋਰ ਥਾਵਾਂ ਤੇ ਵੀ ਐਸਸੀ ਦੀ ਸਮੱਸਿਆ ਹੈ ਪਰ ਜਿਵੇਂ ਕੁਝ ਦਿਨਾਂ ਤੋਂ ਤੁਹਾਡਾ ਪ੍ਰੋਗਰਾਮ ਸੁਣਿਆ ਤੁਹਾਡੇ ਲੋਕਲ ਇੱਥੇ ਇਸ ਚੀਜ਼ ਦਾ ਕਾਫੀ ਮੁੱਦਾ ਜ਼ਰੂਰੀ ਸੀਗਾ ਗੱਲ ਕਰਨਾ ਔਰ ਤੁਸੀਂ ਕੀਤੀ ਵੀ ਦੂਸਰੀ ਗੱਲ ਜਿਹੜੀ ਤੁਸੀਂ ਮੌਤ ਦੀ ਗੱਲ ਕੀਤੀ ਹੈ ਨਾ ਮੈਂ ਉਹਨੂੰ ਕਈ ਵਾਰਾਂ ਇਸ ਮੈਂ ਵੀ ਵਿਚਾਰਦਾ ਹੁੰਦਾ ਜਿਹੜਾ ਅੱਜ ਤੁਸੀਂ ਲੈ ਨਾ ਬਿਲਕੁਲ ਟੌਪਿਕ ਤੇ ਬਹੁਤ ਵਾਰੀ ਅਕਸਰ ਜਦੋਂ ਮੈਂ ਕੱਢਾ ਬੈਠਾ ਮੈਂ ਉਹਦੇ ਮਨ ਚੀਜ਼ ਸੋਚਦਾ ਹਾਂ ਕਿ ਅਸੀਂ ਆਏ ਕਿੱਥੋਂ ਆਏ ਅਸੀਂ ਜਾਣਾ ਕਿੱਥੇ ਹੈ ਪੁੱਛ ਵੀ ਨਹੀਂ ਪਤਾ ਹੂੰ ਕਿ ਜੇ ਕਿਹਾ ਜਾਂਦਾ ਹੈ ਜੇ ਆਪਾਂ ਵੱਖ-ਵੱਖ ਧਰਮਾਂ ਦੇ ਵਿੱਚ ਇਹ ਗੱਲ ਕੀਤੀ ਮੁਤਾਬਿਕ ਜਿਹੜੇ ਸਾਡੇ ਟੀਚਰ ਹੈਗੇ ਆ ਜਦੋਂ ਮੈਂ ਉਹਨਾਂ ਦੀ ਗੱਲ ਸੁਣਦਾ ਨਰਕਾਂ ਚ ਜਾਣਾ ਪਊ ਤੁਹਾਨੂੰ ਐਂ ਜਾਣਾ ਪਊਗਾ ਪਰ ਉਹ ਨਰਕ ਦੇਖੀ ਕਿਨੇ ਅੱਜ ਤੱਕ ਕੁਝ ਪਤਾ ਨਹੀਂ ਲੱਗਦਾ ਉੱਥੇ ਜਾ ਕੇ ਮੈਨੂੰ ਲੱਗਦਾ ਕੰਮ ਉਹ ਬਿਲਕੁਲ ਜੀ ਮੈਂ ਇਹੀ ਗੱਲ ਉੱਥੇ ਲੈ ਕੇ ਆਉਣ ਲੱਗਾ ਹਾਂ ਵੀ ਮੈਂ ਉਹਨਾਂ ਚੀਜ਼ਾਂ ਤੋਂ ਨਾ ਬਹੁਤ ਵਾਰੀ ਨਿਚੋੜ ਕਰਦਾ ਹੁੰਦਾ ਹੈ ਵੀ ਇਨਸਾਨ ਨੂੰ ਜੋ ਜ਼ਿੰਦਗੀ ਮਿਲੀ ਹੈ ਨਾ ਉਹਨੂੰ ਰੱਜ ਕੇ ਸੋਹਣਾ ਇੰਜੋਏ ਕਰਨਾ ਚਾਹੀਦਾ ਪਰ ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਜੇਕਰ ਮੈਂ ਰਿਸਪੈਕਟ ਤੇ ਮੈਂ ਆਪਦੇ ਜਿਉਣ ਦਾ ਢੰਗ ਚ ਉਹਨਾਂ ਮੈਨੂੰ ਐਹੋ ਜਿਹਾ ਮਿਲਣਾ ਚਾਹੀਦਾ ਤੇ ਮੈਨੂੰ ਇਹ ਖਿਆਲ ਚ ਜ਼ਿੰਦਗੀ 'ਚ ਕਰਨਾ ਚਾਹੀਦਾ ਵੀ ਮੈਂ ਉਹੋ ਜਿਹਾ ਕੰਮ ਨਾ ਕਰਾਂ ਜਿਹੜਾ ਕਿਸੇ ਦੀ ਵੀ ਉਹ ਚੀਜ਼ ਭੰਗ ਹੋਵੇ ਹਰ ਬੰਦੇ ਨੂੰ ਮੈਂ ਜਿਉਣ ਦਾ ਹੱਕ ਦੇਵਾਂ ਪਰ ਮੈਨੂੰ ਜਿਵੇਂ ਮੈਂ ਚਾਹਣਾ ਜ਼ਿੰਦਗੀ 'ਚ ਉਹ ਖੁਸ਼ ਕਰੋ ਹਰ ਕੁ ਟੜਕੇ 5 ਵਜੇ ਆਪਣੇ ਆਪ ਬਜ਼ੁਰਗ ਜਾਂ ਕੋਈ ਵੀ ਹੈ ਸਵੇਰੇ ਮੈਡੀਟੇਸ਼ਨ ਕਰਦੇ ਆ ਮੈਂ 5 ਵਜੇ ਕੰਮ ਸ਼ੁਰੂ ਕਰਦਾ ਮੇਰੇ ਨਾਲ ਗੋਰਾ ਇੱਕ ਉਹ ਕਈ ਵਾਰ ਟੜਕੇ ਨਾ ਦੇ ਗੀਤ ਲਾਈ ਬੈਠਾ ਤੇ ਮੈਂ ਉਹਨੂੰ ਸਵਾਲ ਕਰਦਾ ਵੀ ਤੂੰ ਕੀ ਉਹ ਕਹਿੰਦਾ ਮੀਮੀ ਉਹਦੇ ਚ 뮤직 ਜਿਹੜਾ ਨਿਕਲਦਾ ਚੰਗਾ ਲੱਗਦਾ ਮੈਂ ਹੈਰਾਨੀ ਨਾਲ ਸਵਾਲ ਕਰਦਾ ਕਿ ਯਾਰ ਇਹ ਬੰਦਾ ਕਿਹੜੀ ਚੀਜ਼ ਤੇ ਲੁੱਕ ਫਲੈਸ਼ ਸਵੇਰੇ ਸਵੇਰੇ ਉੱਠ ਕੇ ਹਨਾ ਵਜੇ ਮਦਰ ਇਹ ਸਵਾਲ ਮੇਰੇ ਮਨ ਚ ਆਉਂਦੇ ਮੈਂ ਉਸੇ ਕਨਕਲੂਜਿਜ਼ਮ ਤੇਰਾ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਹੁਣ ਦੇਖੋ ਸੱਪ ਦੀ ਕੰਝ ਹੁੰਦੀ ਨਾ ਉਹ ਸੱਪ ਨਿਕਲ ਜਾਂਦਾ ਵਿੱਚੋਂ ਕੰਝ ਤੇ ਆਪਾਂ ਉਹਨੂੰ ਰੀਅਲ ਸੱਪ ਦਾ ਭਲੇਖਾ ਪਾਉਂਦਾ ਪਰ ਵਿੱਚੋਂ ਚੀਜ਼ ਨਿਕਲ ਜਾ ਚੁੱਕੀ ਹੈ ਲੇਕਿਨ ਉਹ ਚੀਜ਼ ਵਜੂਦ ਕਿਤੇ ਨਾ ਕਿਤੇ ਸੱਪ ਤਾਂ ਹੈ ਲੇਕਿਨ ਜਦੋਂ ਆਪਾਂ ਮਰ ਜਿੰਦੇ ਆਪਣਾ ਸਰੀਰ ਉਹਵੇਂ ਬਿਲਕੁਲ ਖੂਬ ਹੋ ਸਰਜੀਤ ਸਿੰਘ ਦਾ ਸਰੀਰ ਪਿਆ ਉਹਵੇਂ ਪਿਆ ਪਰ ਵਿੱਚੋਂ ਜਿਹੜੀ ਚੀਜ਼ ਨਿਕਲ ਗਈ ਕਿੱਥੇ ਉਹ ਡੈਸਟੀਨੇਸ਼ਨ ਅਜੇ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਤੇ ਇਸੇ ਗੱਲ ਕਰਕੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਜੀ ਹਾਂ ਮੌਤ ਤਾਂ ਆਉਣੀ ਹੈ ਲੇਕਿਨ ਇੱਕ એનર્ਜੀ ਹੈ ਜਿੰਨਾ ਚਿਰ ਤੁਹਾਡੇ ਵਿੱਚ ਹੈ ਵਰਕ ਕਰਦੀ ਏ ਚੀਜ਼ ਜਿਸ ਤੁਹਾਡੀ ਉਸ ਤੋਂ ਬਾਅਦ ਇਹ ਚੀਜ਼ ਇੱਕ ਕਰਬੂਤ ਰਹਿ ਜਾਣਾ ਹੈ ਆਪਣੀ ਆਪ ਮਿਕਸ ਹੋ ਜਾਣੀ ਜਿੱਥੇ ਵੀ ਹੈ ਕਿਉਂਕਿ ਅੱਜ ਤੱਕ ਕੋਈ ਇਹ ਦੱਸ ਨਹੀਂ ਸਕਿਆ ਅਸੀਂ ਕਿੱਥੋਂ ਆਏ ਹਾਂ ਦੇਖੋ ਇੱਕ ਹੋਰ ਗੱਲ ਹੈ ਜੇ 84 ਲੱਖ ਜੀਵ ਆ ਨਾ ਤੇ ਆਪਾਂ ਕਹਿੰਦੇ ਆ ਕਿ ਮਨੁੱਖਾ ਸਰੀਰ ਸਭ ਤੋਂ ਉੱਤਮ ਹੈ ਜਿਹੜਾ ਵੀ ਜੀਵ ਆ ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰੋ ਬਚਣ ਦੀ ਕੋਸ਼ਿਸ਼ ਕਰਦਾ ਹਰ ਇੱਕ ਨੂੰ ਆਦਾ ਜਨਮ ਪਿਆਰਾ ਹੈ ਹਰ ਇੱਕ ਜੀਵ ਨੂੰ ਆਪਦਾ ਜਨਮ ਪਿਆਰਾ ਹੈ ਲੇਕਿਨ ਸਰਕਲ ਕਿਵੇਂ ਤੇ ਕਿੰਨਾ ਬਲੀਵ ਕਰੋ ਹਰ ਬੰਦੇ ਦਾ ਆਪ ਕੋ ਆਪਣਾ ਵੱਖਰਾ ਵਿਚਾਰ ਹੋ ਸਕਦਾ ਪਰ ਹਾਂ ਜ਼ਿੰਦਗੀ ਜਿਵੇਂ ਜਿਸ ਢੰਗ ਨਾਲ ਮਰਜੀ ਜਿਵੇਂ ਜੋ ਮਰਜੀ ਸੁਣੋ ਪਰ ਤੁਹਾਡੇ ਕਰਮ ਤੇ ਸੁਣ ਦੇ ਨਾਲ ਕਿਸੇ ਦੂਜੀ ਆਤਮਾ ਨੂੰ ਦੁੱਖ ਨਾ ਪਹੁੰਚੇ ਇਸ ਗੱਲ ਦਾ ਧਿਆਨ ਰੱਖੋ ਹੁਣ ਬਾਦਲ ਆ ਬਾਦਲ ਸਾਹਿਬ ਨੇ ਬਹੁਤ ਸੋਹਣੀ ਪੈਸਾ ਸਭ ਕੁਝ ਹੈ ਪਰ ਅਖੀਰ ਤੇ ਜਿਹੜਾ ਜਿੰਦਰੀਆ ਉਹਦੇ ਕੋਲੇ ਆਉਣੀ ਨਾ ਤਾਂ ਆਪਾਂ ਨੂੰ ਸਭ ਨੂੰ ਪਤਾ ਉਹਦਾ ਹਾਲਾਤ ਕੀ ਬਣਨੇ ਆ ਉਹ ਦੋ ਗੋਲੀਆਂ نیند ਦੀਆਂ ਲੈ ਕੇ ਫੇਰ ਸੌਂਦਾ ਹੋਊਗਾ نیند ਨਹੀਂ ਆਉਂਦੀ ਇਹਨੂੰ ਨਰਕ ਸਵਰਗ ਕਹਿੰਦੇ ਜਿਹੜਾ ਤੁਹਾਡੇ ਕਰਮਾਂ ਜੋ ਤੁਸੀਂ ਕਰਦੇ ਆ ਉਹ ਤੁਹਾਨੂੰ ਆਪਣੇ ਆਪ ਹੀ ਭੋਗਣਾ ਪੈਂਦਾ ਇਹੀ ਨਰਕ ਤੇ ਹੀ ਸਵਰਗ ਹੈ ਧੰਨਵਾਦ ਭਾਈ ਜੀ ਬਿਲਕੁਲ ਹਰ ਇੱਕ ਕਿਉਂਕਿ ਜਿਹੜੀ ਰੂਹ ਜੇ ਕਲਬੂਤ ਚਾ ਉਹਨੂੰ ਉਹ ਵਧੀਆ ਲੱਗਦੀ ਹੈ ਜਦ ਪਤਾ ਬੇ ਕੁਹਾੜੀ ਚੱਕੀ ਫਿਰਦਾ ਮੁਰਗਾ ਤਾਂ ਹੀ ਤਾਂ ਭੱਜਦਾ ਰੂੜੀਆਂ ਟੱਪਦਾ ਉਹ ਕਹਿੰਦਾ ਮੇਰਾ ਕੰਮ ਹੋ ਮਰਨਾ ਕੋਈ ਨਹੀਂ ਚਾਹੁੰਦਾ ਮਨੁੱਖਾ ਦੇਹੀ ਉੱਤਮਤਾ ਕਹਿੰਦੇ ਆ ਵੀ ਤੇਰੇ ਕੋਲ ਸੋਚਣ ਸਮਝਣ ਦੀ ਸ਼ਕਤੀ ਬਾਕੀ એનર્ਜੀ ਹੋਈ ਐ ਮੈਨੂੰ ਲੱਗਦਾ ਜਦੋਂ ਸੈੱਲ ਮੁੱਕ ਗਏ એનર્ਜੀ એનર્ਜੀ ਜਾ ਵਰਦੀ ਐ ਤੇ ਬਸ ਅਮਰਜੀਤ ਸਿੰਘ ਸਿੱਧੂ ਲਾਈਨ ਨੰਬਰ 4 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਅ ਜੀ ਮੈਂ ਪਹਿਲਾਂ ਤਾਂ ਗੱਲ ਕਰਨੀ ਸੀ ਜਿਹੜੇ ਰਫਿਊਜੀਆ ਬਾਰੇ ਕਿਉਂਕਿ ਮੈਂ ਲਬਨਾਨ ਦੇ ਵਿੱਚ 1 ਸਾਲ ਰਹਿ ਕੇ ਆਇਆ ਤੇ ਇਹ ਸੀਰੀਆ ਦੇ ਜਿਹੜੇ ਵੀ ਲੋਕ ਨੇ ਉੱਥੇ ਚੌਂਕਾਂ ਦੇ ਵਿੱਚ ਖੜਦੇ ਆ ਕੇ ਵੀ ਤੁਹਾਨੂੰ ਕੰਮ ਤੇ ਲੈ ਚ ਹਾਂ ਚੌਂਕ ਦੇ ਵਿੱਚ ਆ ਕੇ ਖੜ ਜਾਂਦੇ ਆ ਕੰਮ ਤੇ ਲੈ ਕੇ ਪੰਜਾਬੀ ਬੰਦੇ ਐਡਾ ਵੀ ਹੈਗਾ ਵੀ ਜੇ ਕੰਮ ਤੇ ਜਾ ਰਹੇ ਆ ਨਾ ਰਾਹ ਚ ਉਤਰਨਾ ਪੈ ਸੁਰਗ ਵਾਲਾ ਮੈਂ ਤਾਂ ਐਡਾ ਹੀ ਸੁਣਿਆ ਕਹਿੰਦੇ ਵੀ ਨਰਕਾਂ ਵਾਲਿਆਂ ਦਾ ਕਿਤੇ ਦਰਵਾਜ਼ਾ ਖੁੱਲਣਾ ਰਹਿ ਗਿਆ ਤੇ ਬੰਦਾ ਭੱਜ ਕੇ ਸੁਰਗਾਂ ਵਾਲੀ ਸਾਈਡ ਨੂੰ ਜਾਣ ਲੱਗਿਆ ਉਹਨਾਂ ਨੇ ਚੰਗਾ ਕਟਿਆ ਤੇ ਕਟਣ ਤੋਂ ਬਾਅਦ ਕਪੜੇ ਜੇ ਝਾੜ ਕੇ ਕਹਿੰਦਾ ਤਾਂ ਹੀ ਤਾਂ ਤੁਹਾਡੇ ਆਉਂਦਾ ਨਹੀਂ ਕੋਈ ਤਾਂ ਕੀ ਕਰ ਤੇ ਇਹ ਠੀਕ ਹੈ ਇੱਕ ਲਿਸਨਰ ਨੇ ਨੌਨੀ ਮੈਂ ਦੱਸਣਾ ਚਾਹੁੰਦਾ ਉਹ ਕਹਿੰਦੇ ਮੇਰੇ ਆ ਫਾਦਰ 2006 ਦੇ ਵਿੱਚ ਪੂਰੇ ਹੋਏ 2010 ਦੇ ਵਿੱਚ ਮੇਰੇ ਬੇਟੇ ਦੇ ਰੂਪ ਚ ਉਹਨਾਂ ਨੇ ਮੇਰੇ ਘਰ ਦੇ ਵਿੱਚ ਜਨਮ ਫੇਰ ਲਿਆ ਦੇਖੋ ਇਹ ਵੀ ਕਹਾਣੀ ਹੈ ਵਪਾਰਕ ਸੰਦੇਸ਼ ਏਸੀ ਜੀ ਅੱਜ ਦਾ ਪ੍ਰੋਗਰਾਮ ਧੰਨਵਾਦ ਤੁਸੀਂ ਹਿੱਸਾ ਪਾਇਆ ਜੇ ਪਸੰਦ ਕੀਤਾ ਇਸ ਨੂੰ ਸੇਵ ਕਰਕੇ ਖਬਰਨਾਮਾ YouTube ਦਾ ਚੈਨਲ ਹੈ ਉਹਦੇ ਤੇ ਆਪਾਂ ਆਉਨੇ ਹੁਣ ਲੋਕ ਸੱਤ ਤੇ ਫਿਰ ਮਾਰਚ ਦੇ ਪਹਿਲੇ ਹਫਤੇ ਪਾਉਣਾ ਸ਼ੁਰੂ ਕਰਾਂਗੇ ਤੇ ਧੰਨਵਾਦ ਤੁਸੀਂ ਹਿੱਸਾ ਪਾਉਨੇ ਹੋ ਕੱਲ ਨੂੰ 11 ਵਜੇ ਫੇਰ ਮਿਲਦੇ ਆਂ ਜੀ ਕਹਾਣੀ ਦਾ ਦਿਨ ਹੈ ਰਾਤ